ਹਰ ਸਤ ਨੰਨਜਨ ਅਮਰ ਹੈ ਦੇਖੋ ਹਰ ਲਫਜ਼ ਵੀ ਪਹਿਲਾਂ ਪ੍ਰਚਲਿਤ ਵੀ ਲਫਜ਼ ਸਤ ਪਰਮੇਸ਼ਰ ਆਇਆ ਹੈ ਲੰਡਰ ਵਾਸਤੇ ਆਇਆ ਹੈ ਮਾਇਆ ਰਹਿਤ ਪਰਬਾਦ ਦੇ ਵਿੱਚ ਆ ਕੇ ਜਦੋਂ ਅਸੀਂ ਨਾਨਕ ਕਹਿਣ ਲੱਗੇ ਆਪਣੇ ਜਿਹੜੇ ਆਗੂ ਸੀ ਵੱਡੇ ਸੀ ਉਹਨਾਂ ਨਾਲ ਇਹ ਉਹਨਾਂ ਨੇ ਲੱਭ ਜੂਗੇ ਜਿਵੇਂ ਬਿਸ਼ਨੂ ਨਾਲ ਜੋੜ ਲਿਆ ਇਹਨਾਂ ਨੇ ਹਰ ਲਵ ਹਰ ਲਵ ਫਿਰ ਕ੍ਰਿਸ਼ਨ ਨਾਲ ਜੋੜ ਲਿਆ ਹਰ ਦੇਤਾ ਜਿਹੜਾ ਜੋ ਦੇਤਾ ਹੀ ਨਾ ਰਿਹਾ ਹਰ ਜੋ ਰਹਦਾ ਜਿਹੜਾ ਜੰਮੜਵਰਨ ਦੇ ਵਿੱਚ ਨਹੀਂ ਆਉਂਦਾ ਉਹ ਹਰ ਜਿਹੜਾ ਦਾ ਸਾਬਤ ਸੂਰਤ ਇੱਕ ਇੱਕ ਹੈ ਜਿਹੜਾ ਤਾਂ ਜਮਨ ਮਰ ਨਹੀਂ ਆਉਂਦਾ ਉਹ ਤਾਂ ਹੋਏ ਸੱਚਾ ਰਹਿੰਦਾ ਉਹ ਤਾਂ ਉਹਦਾ ਤਾਂ ਮਤਲਬ ਹੀ ਨਹੀਂ ਹੈ ਬਾਰਡਰ ਪਾਰ ਕਰਨਾ ਹੁਣ ਜਿਹੜਾ ਇੱਥੇ ਹੈ ਜਮਨ ਮਰ ਜਿੰਨੇ ਉਹ ਅੱਧਾ ਅੱਧਾ ਅਸੀਂ ਹਰ ਅੱਧਾ ਕਹਾਂਗੇ ਅੱਧਾ ਹੀ ਕਹਾਂਗੇ ਹਰ ਵੀ ਇਹ ਤਾਂ ਭਗਤ ਵੀ ਹੁੰਦਾ ਤੂੰ ਭਗਤਾਂ ਕਾ ਤੇ ਤੂੰ ਭਗਤਾਂ ਕਾ ਮਾਨ ਭਗਤਾਂ ਦੇ ਬਾਸਾ ਭਗਤ ਤਾਂ ਹੀ ਹੋਇਆ ਉਹ ਪੂਰਾ ਕਿਵੇਂ ਹੋਵੇ ਇੱਕ ਭਗਤ ਮੇਰੇ ਹਿਰਦੇ ਅੱਦਾ ਇਹ ਫਿਰ ਪੂਰਾ ਕਰੇ ਪੂਰਾ ਕਰੇ ਅੰਦਰਲਾ ਭਗਤ ਹੈ ਬਾਹਰਲਾ ਜਿਹੜਾ ਹੈਗਾ ਜਗਤ ਹੈ ਜਿਹੜਾ ਜਗਤ ਜੰਤ ਪਸ਼ੂ ਅਹੰਕਾਰ ਕਸਾਈ ਇਹ ਪਸ਼ੂ ਹੈ ਬਾਹਰਲਾ ਜਗਤ ਹੈ ਜਿਹੜਾ ਸਰੀਰ ਨਾਲ ਜੁੜਿਆ ਹੋਇਆ ਹੈ ਜਿਹੜਾ ਆਪ ਦਾ ਸਰੀਰ ਨਾਲ ਜੁੜਿਆ ਉਹ ਜਗਤ ਹੈ ਜਗਤ ਪਸ਼ੂ ਜਿਹੜਾ ਸਰੀਰ ਨਾਲ ਜੁੜਿਆ ਪਸ਼ੂ ਅਹੰਕਾਰ ਉਹ ਅਹੰਕਾਰ ਹੈ ਜਿਹੜਾ ਉਹੀ ਉਹਦਾ ਕਾਲ ਹੈ अहम जो है वही उसका काल है अहम कार्य अहम काल शब्द होता है अहम जो है उधर ज्योति हम में वही उसका काल है उसी वास्ते हम में का वास्ते hmm. ही समाबद्ध शरीर में पहनने का मतलब है हम में दूर करने वास्ते ही ਵੇੜਾ ਸਰੀਰ ਨਾਲ ਜੁੜਿਆ ਹੋਇਆ ਪਸ਼ੂ ਹੈ ਹਮ ਜੋ ਹੈ ਉਹਦੇ ਵਾਸਤੇ ਖਾਲ ਹੈ ਮੇਰਾ ਹਮ ਮੇਰਾ ਮੇਰੇ ਕਾਲ ਹੈ ਹੰਕਾਰ ਕੇ ਵਾਇਰ ਜੁੜਿਆ ਹੋਇਆ ਜਿੱਦਾਂ ਮਾਇਆ ਨਾਲ ਟੁੱਟ ਜਾਣਾ ਜਿੱਦਾਂ ਤੇ ਜੁੜਿਆ ਹੋਇਆ ਤੁਲਾ ਇੱਕ ਜ਼ਿੰਦਗੀ ਹੈ ਜਦੋਂ ਸਰੀਰ ਨਾਲ ਅਲੱਗ ਹੋ ਜਾਣਾ ਖੁਸ਼ ਹੋ ਬਸ ਉਨ ਲਈ ਕਜੜਾ ਮਨ ਉਹਦੀ ਹੋਂਦ ਮਿਟ ਜਾਂਦੀ ਖਤਮ ਹੋ ਜਾਂਦੀ ਜੀਵ ਦੀ ਹੋਂਦ ਨਹੀਂ ਰਹਿੰਦੀ ਜੀਵ ਬਗਲੇ ਦੀ ਹੋਂਦ ਨਹੀਂ ਰਹਦੀ ਜਿਹੜਾ ਹੰਸ ਦੀ ਉਹਦੀ ਹੋਂਦ ਨਹੀਂ ਇਹ ਬਗਲਾ ਹੰਸ ਵਿੱਚੋਂ ਪੈਦਾ ਹੋ ਰਿਹਾ ਹੈ ਹੰਤਾ ਹੰਤਾ ਬਗਲਾ ਹੰਸ ਦਾ ਮਾਨ ਹੈ ਹੰਸ ਦਾ ਮਾਨ ਹੈ ਬਹੁਤ ਅੱਡ ਹੋ ਗਿਆ ਤੋ ਉਖਰਾਹ ਅੱਡ ਹੋ ਕੇ ਮਾਇਰ ਜੁੜਿਆ ਹੋਇਆ ਸਰੀਰ ਨਾਲ ਜੁੜਿਆ ਹੋਇਆ ਸਰੀਰ ਦੇ ਆ ਲੋੜਾਂ ਨੂੰ ਆਪਣੀਆਂ ਲੋੜਾਂ ਬਣਦਾ ਸਰੀਰ ਦੀ ਪਿਆਸ ਇਹਦੀ ਆਪਣੀ ਪਿਆਸ ਹੈ ਸਰੀਰ ਦੀ ਭੁੱਖ ਇਹਦੀ ਆਪਣੀ ਭੁੱਖ ਹੈ ਸਰੀਰ ਦਾ ਦੁੱਖ ਇਹਦਾ ਆਪਣਾ ਦੁੱਖ ਹੈ ਬੰਦਾ ਦੁੱਖ ਹੈ ਸਰੀਰ ਦੀ ਚਿੰਤਾ ਇਹਦੀ ਪਰ ਸਰੀਰ ਤੇ ਚੜ ਸਰੀਰ ਨੂੰ ਬਚਾਉਣ ਵਾਸਤੇ ਮਨ ਕੋਲ ਚੇਤਨਾ ਹੋ ਹੈ ਸਰੀਰ ਨੂੰ ਸੰਭਲ ਬਚਾਉਣ ਵਾਸਤੇ ਸਰੀਰ ਚ ਪਾਣੀ ਨਾ ਘਟ ਜਾ ਸਾਡੀ ਘਟ ਗਿਆ ਸਰੀਰ ਤੱਕ ਨੂੰ ਜੂ ਬਚਾ ਲੋ ਤੁਮ ਇਹੋ ਗੱਡੀ ਤੇ ਮੀਟਰ ਲਗਾਏ ਅੰਦਰ ਡਰਾਈਵਰ ਕੋਲ ਕਿੰਨੀ ਕਰ ਬਹੁਤ ਇਹ ਡਰਾਈਵਰ ਨਾ ਦੇਖੇ ਗੱਡੀ ਖਤਮ ਹੋ ਜੂ ਜਾਂ ਮੀਟਰ ਨਾ ਹੋ ਚੇਤਨਤਾ ਹੀ ਹੈ ਹੁਣ ਹਰਸ ਵਿੱਚੋਂ ਬਗਲਾ ਪੈਦਾ ਹੋਇਆ ਕਲ ਹੋਇਆ ਦੁਪਰ ਚ ਜੇ ਸਰੀਰ ਜੁੜਿਆ ਉਹ ਦੁਤੀਆ ਅਰਧੋ ਅਰਧ ਸਮਾਨ ਦੁਪਰ ਕਿਹਾ ਕੀ ਅੱਧਾ ਸਮਾ ਗਿਆ ਮਾਇਆ ਚ ਅਧਰ ਹੈ ਅੱਧਾ ਜਿਹੜਾ ਸਾਹ ਲੈ ਰਿਹਾ ਉਹ ਭਗਤ ਹੈ ਓਹੀ ਹਰ ਹੈ ਹਰ ਜਿਉ ਕੋ ਭਾਂਦਨ ਲੱਗਿਆ ਹਰ ਲੱਗੋਗਾ ਜਿਉ ਲੱਗੋਗਾ ਹਰ ਨੇ ਆਪਣਾ ਜਿਉ ਆਪਣਾ ਮਨ ਜਿਉ ਦਾ ਹੁੰਦਾ ਆਪਣਾ ਮਨ ਮੇਰਾ ਜੀ ਨਹੀਂ ਕਰਦਾ ਮੇਰਾ ਮਨ ਨਹੀਂ ਕਰਦਾ ਕੋਈ ਵਲ ਸਸ ਥੋੜਾ ਨੇ ਇਹ ਬਲਕਾ ਦੇੜ ਕੇ ਸਾਰੀਆਂ ਜੀਓ ਜਿਹੜਾ ਅੰਦਰ ਚਿੱਤ ਦੇ ਇਮਾਨਦਾਰੋਂ ਜੀਓ ਹੈ ਬਰਦ ਅਵੇ ਜੀ ਨਹੀਂ ਕਰਦਾ ਜੀਓ ਕੌਣ ਹੋਇਆ ਹੈ ਜੀਓ ਬਣ ਹੋਇਆ ਨਾ ਹੁਣ ਤੇ ਗੈ ਮੇਰਾ ਚਿੱਤ ਨਾ ਮਨ ਕੋ ਪੰਗ ਬਣ ਪਿਓ ਪੰਗ ਇਹਦਾ ਮੈਂ ਚਾਹਦਾ ਚਿੱਤ ਸੀ ਇਹਦਾ ਮਤਲਬ ਚਿੱਤ ਪਹਿਲਾਂ ਹੀ ਨਹੀਂ ਚੱਲਦਾ ਇਹਦਾ ਕੀ ਚਿੱਤ ਨਾ ਚੱਲਦਾ ਮਨ ਜਿਹੜਾ ਰੋਕਦਾਨੀ ਸੀ ਹੁਣ ਉਹ ਕੰਗ ਹੋ ਗਿਆ ਨਾ ਨਾ ਉਹ ਵੀ ਕੰਗ ਹੋ ਗਿਆ ਹੁਣ ਕੋਰੋਹ ਵੀ ਨਹੀਂ ਚੱਲਦਾ ਉਹਦੇ ਹੱਥ ਪੈਰ ਖਤਮ ਹੋ ਗਏ ਉਹਦੇ ਭਜਣ ਨੱਠਣ ਵਾਲੀਆਂ ਤਾਂ ਇਹ ਤਾਂ ਹੱਥ ਪੈਰੇ ਤੋੜਦੇ ਪੰਗੂ ਪੰਗੂ ਲਫ਼ਜ਼ ਹੈ ਪੰਗੂ ਅਪੰਗਲਾਫ਼ਜ਼ ਅਸੀਂ ਆਪਣੇ ਭਾਸ਼ਾ ਚ ਕਹਿੰਦੇ ਆ ਅਪੰਗਲਾਫ਼ਜ਼ ਨਹੀਂ ਪੰਗੂ ਲਫ਼ਜ਼ ਗੱਦੇ ਥੱਲੇ ਉਂਕਰੇ ਜਿਹੜਾ ਹੱਥ ਪੈਰ ਹੀ ਤੇ ਕੰਮ ਨਾ ਪਿੰਗਲਾ ਹੋ ਜਾਈ ਜਿਹਨੂੰ ਕਹਿੰਦੇ ਪਿੰਗਲਾ ਪਿੰਗਲਾ ਮਨ ਪਹਿਲਾਂ ਹੀ ਹੋਣਾ ਨੀ ਪਿੰਗਲਾ ਆ શરીર ਕਰਕੇ ਤੋਂ ਇਹ ਇਹ શરીર ਨੂੰ ਅਡਡ ਕਰਦਾ ਹੋਵੇ ਕੰਮ ਇਹ ਕਾਟ ਹੋਇਆ ਤਾਂ ਕੰਗਈ ਆ ਮੈਂ ਜੀ ਇਹ ਐ ਦਿਮਾਗ ਦੇ ਚਰਖੇ ਨਾਲੇ ਦੌੜਦਾ ਹਰ ਜੀਓ ਗੁਫਾ ਉਂਦਰ जीयो गुफा गुफा, गुफा गुफा अंदर रख के पाजा पबड़ मजा पबड़दा बज जावे गुफाओं ते जितु है के गुफा है कि नुं गुफा है जीयो नुं गुफा अंदर रखया जीयो तिरकुटी च रखया गुफा के अंदर तिरकुटी गुफां जिथे तन्ने ओ मिलदियां ने मिल कुटी ਜਿੱਥੇ ਤਿੰਨੇ ਤਰਵੈਣੀ ਮਿਲਦੀ ਉਹ ਤੇ ਉੱਥੇ ਹੀ ਤਾਂ ਹੈ ਫੁੱਟੀਆਂ ਬਣਾਈ ਪਰ ਕਬੀਰ ਕਹਿੰਦਾ ਮੈਂ ਕਿਤੇ ਹੋਰ ਬਣਾਈ ਆ ਇਹ ਤਾਂ ਉੱਥੇ ਬਣਾਉਂਦੇ ਨੇ ਜਿੱਥੇ ਤਰਵੈਣੀ ਹੈ ਉਹ ਤਾਂ ਉਹ ਤਾਂ ਤ੍ਰਿਕੁਟੀ ਹੈ ਉਹ ਤਾਂ ਦਿਮਾਗ じゃ ਇੱਥੇ ਤਾਂ ਹੀ ਬੰਦ ਨੇ ਦਿਮਾਗ ਨੂੰ ਦਸੰਦਾਰ ਰੱਖੇ ਐਵੇਂ ਥੋੜੀ ਬੰਦ ਉਤੇ ਬੰਦੇ ਨੇ ਜੀਵ ਦੀ ਰਹਿ ਸੀ ਜਦੋਂ ਇੱਥੋਂ ਥੱਲੇ ਆਉਂਦਾ ਫਿਰ ਤਾਂ ਡੈੱਡ ਆਏ ਜਦੋਂ ਇੱਥੋਂ ਥੱਲੇ ਆ ਜਾਂਦਾ ਜੀਵ ਇੱਥੇ ਆਉਂਦਾ ਡੈੱਡ ਹੋ ਜਾਂਦਾ ਇੱਥੋਂ ਤੇ ਥੱਲੇ ਬਹਿ ਹੋ ਜਾਂਨ ਪਤਾ ਨਹੀਂ ਕਿੱਥੇ ਗਿਆ ਇੱਥੇ ਹੀ ਇਹਦਾ ਗਿਆ ਬਸ ਇਹਦਾ ਉਹ ਲੈ ਇੱਥੇ ਰੱਖਿਆ ਹੋਇਆ ਹੈ ਹਮ ਯਾ ਜਾਂਦੇ ਆ ਇੱਥੇ ਤੱਕ ਤਾਂ ਤੁਹਾਨੂੰ ਪਤਾ ਲੱਗਦਾ ਉਹ ਦੇਦਾ ਅੰਜ ਤੱਕ ਅਮੀਚ ਦਾ ਅੱਖਾਂ ਵਿੱਚ ਦਾ ਇੱਥੇ ਵੀ ਥੱਕਦਾ ਪਤਾ ਲੱਗਦਾ ਇੱਥੋਂ ਜਾਂ ਥੱਲੇ ਨੂੰ ਉਤਰਨਾ ਇੱਥੇ ਇੱਥੇ ਉਹਦੇ ਉਹਦੇ ਖਤਮ ਨਾ ਕਰ। ਸੋ ਜਾਂਦਾ। ਉਹਦਾ ਜੋ ਟੀਗੈ ਦਾ ਸ੍ਰੀ ਗੀਤਾ ਹੈ। ਹਾਂ? ਟੀਗੈ ਸ੍ਰੀ ਗੀਤਾ ਕੀਤਾ ਹੋਇਆ। ਟੀਗੈ ਸ੍ਰੀਰ ਗੀਤਾ ਅਰਥ ਗੁਫਾ। ਜਿਹੜੀ ਅਭੀ ਹਰਨੇ ਹਰ ਹਰਨੇ ਰੱਖਿਆ ਜੀਓ ਗੁਫਾ ਦੇ ਅੰਦਰ। ਬਾਜਾ ਕਾਣ ਹੋ ਜਾ। ਹਰ ਕਾਣ ਹੈ। ਹਰ ਕੋਈ ਬਾਹਰ ਹੈ ਫਿਰ। ਆਪ ਕੋ ਤੁਮੜਾ ਬੰਦ ਰਿਹਾ। ਹਰ ਹਰ ਹਰ ਗੁਰ ਗੁਰ ਗੁਰ ਗੁਰ ਹਰ ਹਰ ਹੁਣ ਤਾਂ ਸੰਗੀਤ ਹੋ ਗਿਆ ਤੇ ਪਰਵਾਰੀ ਦੀ ਭਗਤੀ ਹਰ ਹਰ ਗੁਰ ਗੁਰ ਗੁਰ ਗੁਰ ਹਰ ਹਰ ਹਰ ਹਰ ਮੁਰਤ ਬਰਾਬਰ ਹੈ ਕੋਈ ਹਰ ਅੱਧਾ ਉਹ ਬੰਦੇ ਸਿਆਣੇ ਸੀ ਜਿਹੜੇ ਆਪੈ ਨੂੰ Hindu ਤੇ ਉਹਨਾਂ ਨੇ ਕ੍ਰਿਸ਼ਨ ਨੂੰ ਕੋਹਾਨ ਜ਼ਰੂਰ ਕਿਹਾ ਭਗਵਾਨ ਅਰਥ 파ਰਵਰਮ ਦੇ ਨਹੀਂ ਕਦੇ ਪਾਰ ਪਰਮੇਸ਼ਰ ਕਹੇ ਭਵਾਨ ਨੇ ਕਿਹਾ ਇਹ ਇਸਰ ਗਾਂਦਨ বিষ্ণੂ ਨੂੰ ਇਤੇ ਪਰਮੇਸ਼ਵਰ ਹੈ ਬਿਸ਼ੂ ਤੋਂ ਬਟਾ ਲੱਗ ਬਲਗ ਵਰਤੇ ਹਨ ਉਹ ਬੜੇ ਸਿਆਣੇ ਸੀਗੇ ਐਡਨੀ ਨੁਕਸ ਨਹੀਂ ਆ ਉਹ ਧਰਮ ਦੇ ਵਿੱਚ ਜਿਹੜਾ ਤੁਸੀਂ ਸਮਝਦੇ ਹੋ ਸਾਨੂੰ ਨਹੀਂ ਪਤਾ ਕੱਖ ਨਹੀਂ ਇਹਨਾਂ ਨੁਕਸ ਨਹੀਂ ਆਗਾ ਉੱਥੇ ਉੱਥੇ ਬਹੁਤ ਥੋੜਾ ਹੀ ਨੁਕਸ ਆ ਤੋਂ ਅਰਥਾ ਸਮਝਦੇ ਫਰਕ ਪਿਆ ਹੋਇਆ ਹੈ ਪਰ ਭਗਵਾਨ ਪਰਮੇਸ਼ਰ ਦੀ ਹੈ ਭਾਗਵਾਨ ਹੈ ਤੇ ਕਿ ਜੇ ਭਾਗ ਮਥਨ ਜਿਹਨੂੰ ਕਹਿੰਦੇ ਮਾਸਕੇ ਭਾਰਮਾ ਕੋਈ ਭਗਵਾਨ ਹੈ ਭਾਗਵਾਨ ਉਹ ਵਤਲਾ ਵੀ ਪਰਮੇਸ਼ਰ ਵਧੀਆ ਤੋਂ ਭਗਵਾਨ ਬਣੇ ਭਗਵਾਨ ਅਕਵੇਲਾ ਪਕੇ ਚਲੀ ਆ ਵੰਤਮਣੇ ਜਿਹੜਾ ਪਾਸ ਹੋ ਗਿਆ ਇੱਥੋਂ ਹਾਂ ਆਪਣੇ ਕੰਮ ਆਇਆ ਸੀ ਜਿਹੜਾ ਪੂਰਾ ਹੋ ਗਿਆ ਪਾਸ ਹੋ ਭਗਵੰਤ ਉੱਥੇ ਉੱਚੇ ਤੇ ਉੱਚਾ ਭਗਵੰਤ ਜਿਹੜਾ ਇੱਕ ਹੈ ਇੱਥੇ ਪਾਸ ਹੋ ਗਿਆ ਸੰਸਾਰ 'ਚ ਕੋਈ ਵੀ ਕਿੱਡਾ ਉੱਚਾ ਹੋਵੇ ਉਹ ਤੋਂ ਉੱਚਾ ਹੈ ਉੱਚੇ ਸੰਸਾਰ ਉਥੇ ਤਾਂ ਉੱਚਦੀ ਵਹੀ ਨਹੀਂ ਕੋਈ ਭਾਈ ਹਾਂ ਉਹ 102 ਆ ਫੇਰ ਘਾ ਤਾਂ ਉੱਚਦੀ ਵਹੀ ਨਹੀਂ ਤੁਸੀਂ ਅਸਲ ਦੇ ਵਿੱਚ ਇੱਥੇ ਦੀ ਗੱਲ ਉਧਰ ਲਾ ਦਿੰਦੇ ਹੋ ਉਧਰ ਦੀ ਗੱਲ ਇੱਥੇ ਲਾਉਂਦੇ ਕੋਈ ਉੱਚਾ ਨਹੀਂ ਵਧਾਇਥੇ ਉਹ ਜੋ ਗੱਲ ਇਹਦੀ ਇੱਕ ਪੂਰਾ ਵੀ ਹੈ ਹਰ ਇੱਕ ਅਧੂਰਾ ਵੀ ਹੈ ਜਿਹੜਾ ਦਾ ਅਧੂਰੇ ਦੀ ਜਲਦੀ ਹੈ ਜਿਹੜਾ ਹੁਣ ਦਵਾਈ ਲੈ ਉਹ ਹਵੀ ਹਾਰਾ ਹੈ ਜਿਹੜਾ ਇੱਕਾ ਉਹ ਵੀ ਹਾਰਾ ਉਹ ਵੀ ਹਾਰਾ ਇਹਦਾ ਉਹ ਵੀ ਐ ਪਰ ਕਿਤੇ ਕਿਤੇ ਜੋਤ ਐ ਦੋਈ ਪਾਸੀ ਕਿਤੇ ਕਿਤੇ ਗੱਲ ਚੱਲਦੀ ਐ ਹਰਦੀ ਹਰਦਾ ਮਤਲਬ ਹੁੰਦਾ ਜੋਤ ਮਨ ਵੀ ਕਹਤੂ ਜੋਤ ਸਰੂਪ ਫਰਕ ਕਿਤੇ ਵੇ ਫਰਕ ਦਾ ਸਿੱਧ ਜਿੱਤੇ ਥੀ ਗਾਣੇ ਵਾਲਾ ਮੋਟਾ ਰਹਿ ਗਿਆ ਤਾਂ ਹੁਣ ਪਾਸ਼ਾ ਨੇ ਖੜਿਆ ਦਸ ਹੁੰਦੀ ਵਾਲੇ ਨੇ ਖੜਿਆ ਫਿਰ ਫਰਕ ਪੂਰਨ ਜੋਤ ਜਗ੍ਹਾ ਘਟ ਮੈਂ ਪੂਰਨ ਜੋਤ ਨਹੀਂ ਪੂਰਨ ਜੋਤ ਹੈ ਫਿਰ ਹਰ ਸਾਬਤ ਹੈ ਹੂੰ ਪੂਰਨ ਜੋਤ ਜਗ੍ਹਾ ਘਟਨਾ ਨਾਲ ਪੂਰਨ ਲਾਤਾ ਜੋਤ ਜੋਤਾ ਮਲਵੀ ਹੈ ਪੰਤੂ ਜੋਤ ਦਾ ਰੂਪ ਜੋਤਾ ਜੀ ਵੀ ਹੈ ਫੂਟੋਂਡਾ ਭਰਮ ਕਾ ਜੋਤੇ ਹੈ ਕੀ ਹੈ ਜਿਹੜੀ ਨਿਕਲਦੀ ਹੈ ਵਿੱਚੋਂ ਮਰਦਾ ਉਹ ਵੀ ਜੋਤੇ ਹੈ ਅਕੇ ਹਸਾ ਕੇ ਲਹਸ ਵੀ ਜੋਤੇ ਹੈ ਹਰ ਦਾ ਮਨ ਮੈਲਾ ਬਲੋਠੀ ਠੀਕ ਹੈ ਮਨ ਮੈਲਾ ਕਰਕੇ ਹੀ ਸੱਚਖਣ ਚੋਂ ਇਹਨੂੰ ਕੱਢਿਆ ਗਿਆ ਇਹ ਕੱਢਿਆ ਤੂੰ ਠੀਕ ਹੈ ਮਨ ਮੈਲਾ ਸੀ ਕਾਕੜੇ ਨੇ ਤੇ ਇਹ ਪਿਆ ਔਰ ਪਹਿਲਪੁਰੀ ਇਹ ਤਾਂ ਪੌਂਡਰ ਕੋ ਪਾਣਾ ਸੀ ਤਾਂ ਤੇ ਹੰਸਾ ਸਗਲੇ ਜਾਣਾ ਸਗਲੇ ਜਾਣਾ ਸੀ ਹੁਣ ਹੰਸਦਾ ਮਨ ਮਹਿਲਾ ਹੋ ਗਿਆ ਮਲੀਨ ਮੈਂ ਆ ਗਈ ਕਹਿੰਦੇ ਮੈਂ ਮਹਿਦੂਦ ਲਖਾਇਆ ਖਸਮੇ ਕੇ ਦਰ ਜਾਏ ਜਿਨ੍ਹਾਂ ਦੇ ਅੰਦਰ ਮੈਂ ਸੀ ਸਾਰੇ ਭੇਜਤੇ ਪ੍ਰੈਸਰਡ ਸਾਰੇ ਆਂਡੇ ਬਣਾਤੇ ਮਹਿਦੂਦ ਕਰ ਤਰਸ ਵਰ ਕੋ ਸਾਰੇ ਮਹਿਦੂਦ ਕਰ अंडे बनाते चलो एथे चलते कोह हर हर अनरूप धर्म हर एथे उथे हर कोई नहीं है उधर पर इत्तेदार कोई नहीं है हर जो है ए माया के में उथे की है उथे विशरूप है उथे कुछ भी नहीं होता है तैसे विशरूप ते भूत भूत प्रकट होए ਤਾ ਹੀ ਤੇ ਕੁਝ ਸਭ ਤਾਂ ਹੀ ਨਸਬ ਉਹਦਾ ਨਾ ਵਿਸ਼ਵ ਰੂਪ ਹੈ ਉਹਦਾ ਨਾ ਖਜ਼ਾਨਾ ਉਹਦਾ ਨਾ ਉਹਦਾ ਸਮੁੰਦਰ ਹੈ ਪਤਾ ਨਾ ਇੱਕ ਨਹੀਂ ਹੈ ਇੱਕ ਉਸ ਯੂਨਿਟੀ ਦਾ ਨਾ ਜਿਹੜੀ ਸੰਸਾਰ ਚ ਸੰਸਾਰ ਇਹ ਜੀਪ ਤੋਂ ਕੀ ਹੈ ਤੋਂ ਕੀ ਸੀ ਹੁਣ ਕੀ ਹੋ ਗਿਆ ਕਿਉਂ ਹੋ ਗਿਆ ਕਿਵੇਂ ਹੋ ਗਿਆ ਹੁਣ ਤੂੰ ਉਸ ਅਤੀਤ ਵਾਲੀ ਅਵਸਥਾ ਚ ਕਿਵੇਂ ਜਾਏਗਾ ਆ ਸਾਰਾ ਗੁਰਬਾਣੀ ਦਾ ਗਿਆਨ ਇਹਦੇ ਵਾਸਤੇ ਸੱਚਖੰਡ ਵਾਲਿਆਂ ਨੂੰ ਕੋਈ ਗਿਆਨ ਹੀ ਨਹੀਂ ਲੋੜੇ ਨੇ ਉਹਨਾਂ ਤਾਂ ਗਿਆਨ ਦੀ ਲੋੜ ਨਹੀਂ ਫਿਰ ਉਹਨਾਂ ਨੂੰ ਵਿਚ ਘੋੜ ਲੈਣੇ ਸੀ ਉਹਨਾਂ ਨੂੰ ਘਮ ਕੁਸੀੜ ਕੇ ਲੈ ਆਉਣਾ ਸੀ ਵਿਚ ਕੱਲ ਸਿਰਫ ਗੁਰਬਾਣੀ ਤੇ ਨਿਰੋਖ ਦੀ ਕਬੀਰ ਨੇ ਪਹਿਲੇ ਕਹਿਤਾ ਬਾਵਰ ਅੱਛਰ ਲੋਕ ਤਰ ਸਭ ਕੁਝ ਹੀ ਨਹੀਂ ਭਾਈ ਚੌਥੇ ਲੋਕ ਦੀ ਗੱਲ ਕਢੀਸ ਕੇ ਕਿਵੇਂ ਲਿਆਉਂਦੇ ਆ ਵਿੱਚ ਜਾਂ ਹੈ ਹੀ ਨਹੀਂ ਕਿ ਲੋਕ ਦੀ ਗੱਲ ਤੇ ਉਥੇ ਲੋਕ ਦਾ ਮਤਲਬ ਨਹੀਂ ਕੋਈ ਨਹੀਂ ਚੌਥੇ ਲੋਕ ਦਾ ਸੀ ਜਾਣਾ ਜਿੱਥੇ ਜਾਣਾ ਹੈ ਉਥੇ ਸੁਭਾਅ ਸਾਨੂੰ ਬਣਾਉਣਾ ਪੈਣਾ ਉਥੇ ਤਾਂ ਸੁਆਗ ਸਾਡਾ ਬਦਲਿਆ ਜਾ ਰਿਹਾ ਵੀ ਆ ਮੈਸੇਜ ਹੈ ਉਥੇ ਦਾ ਇਹੋ ਜਿਹਾ ਸੁਭਾਅ ਜਿਹਦਾ ਬੰਦੇ ਦਾ ਜੇ ਉਥੇ ਰਹਿਣੇ ਜੀ ਜਾਣਾ ਕਿਸੇ ਨੂੰ ਨਹੀਂ ਬਾਰਡਰ ਨਹੀਂ ਪਾਰ ਕਰਦੇ ਉਹ ਤੁਹਾਨੂੰ ਕਿਸੇ ਇਹ ਤਾਂ ਗਿਆਨ ਹੈ ਉੱਥੇ ਦਾ ਉੱਥੋਂ ਆਇਆ ਗਿਆਨ ਹੈ ਇੱਥੇ ਵਾਲਿਆਂ ਨੂੰ ਕੀ ਪਤਾ ਉੱਥੇ ਕੀ ਹੈ ਉੱਥੇ ਤਾਂ ਕਾਨੂੰਨ ਕੀ ਹੈ ਇਹ ਪਤਾ ਵੀਜ਼ਾ ਦਾ ਅਮਰੀਕਾ ਦਾ ਲੌੜ ਜਾਓ ਅਮਰੀਕਾ 10 ਵਾਰਤ ਖਲੇ ਜਾਓਗੇ ਅਰ ਬਤੇ ਜਣੀ ਜਾ ਸਕਦਾ ਇਸ ਵੀ ਉਹ ਮੋਹ ਲੈ ਜਾਓ ਵੀ ਚਲੇ ਜਾਓ ਅਮਰੀਕਾ ਕਹਿੰਦੇ ਉਹਨਾਂ ਦੇ ਚਲੇਗਾ ਅਸਲੀ ਗੱਲ ਦੂਆ ਕਦੇ ਜਾਣਦੇ ਦੂਦੂਏ ਦੇਸ਼ ਸੱਚਖੰਡ ਦੇ ਜੇ ਜਾਣਾ ਕਿਸੇ ਨੇ ਸੱਚਖੰਡ ਦੇ ਨਿਯਮਾਂ ਦੇ ਅਨੁਸਾਰ ਤੁਹਾਨੂੰ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ਤਾਂ ਐਂਟਰੀ ਮਿਲੂਗੀ। ਬਸ ਇਹ ਸ਼ਰਤਾਂ ਨੇ ਹੋਰ ਕੀ? ਬਰਬਾੜੀ ਸ਼ਰਤਾਂ ਨੇ। ਇਹ ਕੁਝ ਹੋਰ ਵੀ ਦੇ ਸ਼ਰਤਾਂ ਦੇ ਆ। ਸ਼ਰਤਾਂ ਹੀ ਨੇ। ਆਹ ਤੋਂ ਦੱਸਿਆ ਇਹਦਾ। ਸੱਚਖੰਡ ਦਾ ਸਾਰਾ ਸਾਰੀਆਂ ਸ਼ਰਤਾਂ ਨੇ ਵੀ ਇਹ ਲੀਮ ਰਹੇ ਅਪਰੋੜੇ ਜੇ ਤੁਸੀਂ ਜਾ ਸਕਦੇ ਹੋ। ਬੰਦਾ ਨਹੀਂ ਜਾ ਸਕਦਾ। ਪਰ ਸਿੱਖਾਂ ਨੂੰ ਇਹ ਲੋੜ ਨਹੀਂ ਹੋ ਜਾਣਦੀ ਉੱਥੇ। ਨਾ ਕਿਸੇ ਨੂੰ ਪਤਾ ਵੀ ਇਹ ਕਿਉਂ ਵਾਰ ਵਾਰ ਸਿੱਖਾਂ ਸਾਥੇ ਕੰਡੂਰੀ ਬਣਾ ਲਿਆ ਉੱਥੇ ਜਾਂਦੇ ਨਹੀਂ। ਨਹੀਂ। ਤਾਂ ਹੀ ਨਹੀਂ ਲੋੜ। ਤਾਂ ਹੀ ਲੋੜ ਤਾਂ ਹੀ ਇੱਥੇ ਬਣਾ ਲਿਆ। ਨਾ ਇਹ ਵਿਸ਼ਾ। ਸਾਡਾ ਵਿਸ਼ਾ ਕਿੱਥੇ ਹੈ? ਨਾ ਸਾਨੂੰ ਇਹ ਪਤਾ ਬਾਣੀ ਦਾ ਬੇਸ਼ਕੀ ਹੈ। ਕਿਉਂ ਬਾਣੀ ਦੀ ਲੋੜ ਹੈ? ਹੋਰ ਕਿਸੇ ਗ੍ਰੰਥ ਦਾ ਇਹ ਬੇਸ਼ਾ ਨਹੀਂ। ਸੱਚ ਘੜਾ ਬਚਾਉਣਾ। ਯਾ ਸੱਚ ਉਹ ਵੀ ਟਰਕੀ ਬਣੀ ਐ ਬੜੀ ਇੱਥੇ ਹੀ ਹੈ ਨਹੀਂ ਨੀ ਉਹ ਉੱਥੇ ਦੇ ਲੋਕੇ ਬਣਾਉਣਗੇ ਉੱਥੇ ਦੀ ਪਾਰਲੀਮੈਂਟ ਦਾ ਨਹੀਂ ਬਣਾਇਆ ਹੈ ਸੰਗਤ ਉੱਥੇ ਉਹਨੂੰ ਕਿਹਾ ਸਤ ਸੰਗਤ ਉੱਥੇ ਉਹ ਸਤ ਸੰਗਤ ਉਹਨਾਂ ਨੂੰ ਸੱਚਖੰਡ ਦੇ ਜੇ ਵਾਸੀ ਰੇ ਉਹਨਾਂ ਦੀ ਸਤ ਸੰਗਤ ਦੀ ਗੱਲ ਹੈ ਇੱਥੇ ਝੂਠ ਦੀ ਦੁਨੀਆ ਦਾ ਸੰਗਤ ਕਿਵੇਂ ਹੋਊ ਇੱਥੇ ਇੱਥੇ ਤਾਂ ਸਾਰਾ ਕੂੜਾ ਜਾਂ ਕੂੜ ਪ੍ਰਜਾ ਕੂੜ ਸਭ ਸੰਸਾਰ ਇੱਥੇ ਸੱਚਖੰਡ ਬਣਾ ਦੇ ਇਹ ਸਤ ਸੰਗਤ ਦੇ ਭੜ ਦੇ ਸਤ ਸੰਗਤ ਕਿਵੇਂ ਹੋ ਜੂਗੀ ਇੱਥੋਂ ਕਿੱਥੋਂ ਲਿਆਉਂਗੇ ਸਤ ਸੰਗਤ ਤੁਸੀਂ ਇੱਥੇ ਜੇ ਸਤ ਸੰਗਤ ਬੜੂਗੀ ਤਾਂ ਮੰਦੇ ਵਿੱਚ ਗਣੂਗੀ ਜਿੱਦਾਂ ਮਨ ਸਚਿਆਰਾ ਹੋ ਤਾਂ ਬੜੀ ਬਾਹਰ ਤਾਂ ਲਵਦਾ ਫਰਦਾਣਾ ਨੂੰ ਬੜਦੀ ਨਹੀਂ ਬਾਹਰ ਤਾਂ ਲਵਦੇ ਰਹੇ ਜੇ ਬਾਹਰ ਬੜਦੀ ਆ ਤਾਂ ਦੋ ਸਤ ਇਕੱਠੇ ਹੋ ਜਾਂਦੇ ਨੇ ਇਕੱਠੇ ਬੈਠ ਜਾਂਦੇ ਨੇ ਲੇਕਿਨ ਸੰਗਤ ਉਹ ਨਹੀਂ ਦਿੰਦੀ ਅੰਦਰੋਂ ਮਿਲੇ ਹੋਏ ਨੇ ਬਾਹਰੋਂ ਨਹੀਂ ਮਿਲੇ ਬਾਹਰੋਂ ਡੋਟ ਨਹੀਂ ਕਹੋ ਮਾੜੇ ਵੀ ਡੋਟ ਨੇ ਭੱਲੇ ਆ ਡੋਟ ਨੇ ਭੱਲੇ ਆ ਨੰਬਰ ਤੋਂ ਚਾਰ ਤਾਰਾ ਕਰਕੇ ਮੇਰੇ ਹੀ ਹੈ ਵਿਚਾਰ ਤਾਂ ਰਹੀ ਹੈ ਨੇ ਸਰੀਰ ਤਾਂ ਦਸਾ ਗੁਰੂ ਸਾਹਿਬ ਸਰੀਰ ਵੀ ਐਡੋ ਅਡਰ ਹੈ ਹਿਰਦੇ ਵੀ ਐਡੋ ਅਡਰ ਨੇ ਮਹਲ ਸ ਬਾਲਾ ਸ਼ਰੀਰ ਮਹਿਲ ਨਹੀਂ ਹੁੰਦਾ ਬਾਲਾ ਸ਼ਰੀਰ ਨੂੰ ਕਹਾ ਕਾਚੀ ਗਾਗਰ ਸਰ ਸਰ ਕਾਚੀ ਗਾਗਰ ਇਹਦਾ ਫੁੱਟਣੋ ਰਿਸ਼ਤੇ ਦਾ ਡੈਫੀਨਿਟ ਅੰਦਰਲਾ ਨਹੀਂ ਫੁੱਟਦਾ ਇਹ ਪੱਕਾ ਹੋ ਜਾਂਦਾ ਨਾ ਮਹਿਲ ਹੋ ਜਾਂਦਾ ਫਿਰ ਨਹੀਂ ਜੁਦਾ ਕੱਚਾ ਅੰਦਰਲਾ ਵੀ ਟਹਿ ਉਹਨਾਂ ਜਰ ਖਪਰੇ ਹਰ ਸੱਤ ਨਰੰਜਨ ਅਮਰ ਹੈ ਹਰ ਜਿਹੜਾ ਹੈਗਾ ਚਾਹੇ ਅੱਦਾ ਕੀੜਾ ਚਾਹੇ ਅੱਦਾ ਪਰ ਕੋਲ ਤਾਂ ਹੀਰੇ ਵਾਲੇ ਸਾਰੇ ਨੇ ਉਹਦੇ 'ਚ ਕੀ ਫਰਕ ਪਿਆ ਜਾਂਦਾ ਹੋ ਨੂੰ ਕੱਟ ਲਈਏ ਤਾਂ ਕਰ ਲਈਏ ਤੇ ਘੋੜ ਦਾ ਹੀਰੇ ਵਾਲੇ ਹੈਗੇ ਉਹਦੇ 'ਚ ਕੋਈ ਫਰਕ ਨਹੀਂ ਪੈਂਦਾ ਜੇ ਮਨ ਕਰਕੇ ਮਨੋ ਨੇ ਅਡਵਿਤਾ ਕਰਤਾਪਨ ਹੂੰ ਬੰਦੇ ਖਿਲਾਫ ਵੀ ਤਾਂ ਹੋਇਆ ਆ ਬਹਿਣਾ ਹੈ ਜਿਹੜਾ ਆਦਮੀ ਮਨ ਨੂੰ ਸਮਝਾ ਰਿਹਾ ਆਪਣੇ ਅਸਤਿਵਨ ਦੇ ਖਿਲਾਫ ਹੋਇਆ ਹੋ ਕੇ ਸਮਝਾਉਂਦਾ ਹੈ ਜੇ ਮਨ ਤੇ ਖਿਲਾਫ ਹੋਇਆ ਹੋਇਆ ਤਾਂ ਸੱਚ ਦੇ ਧੜੇ ਜੇ ਬੇਰਾ ਧੜਾ ਹਰ ਹਰ ਸੋਹ ਸਾਥਿਰ ਹਰਦਨ ਆਉਂਦਾ ਜੇ ਬੰਦ ਤੋਂ ਖਲਾਫ ਆਪਣੇ ਨੂੰ ਜੇ ਮੰਦੇ ਨਾਲ ਲੜਾਈ ਹੈ ਬੰਦੇ ਨਾਲੇ ਸਾਥ ਹੈ ਬੰਦੇ ਦੇ ਖਲਾਫ ਹੈ ਖਾਲਸਾ ਸੋ ਕਰੇ ਨੇ ਕਿਹਦੇ ਨਾਲ ਆਪਣੇ ਨਾਲ ਹੁਣ ਅੰਮ੍ਰਿਤ ਆਪ ਆਪਸੋ ਲੜਾਇਆ ਥਕੇ ਆਪ ਆਪਸੋ ਮਤੇ نتیਜਾਂ ਗੈਰਤਾ ਉਥੇ ਆਪ ਆਪਸੋ ਹੁਕਮ ਸਮਝਾਤਾ ਨਾ ਕਿ ਜਗ ਕਿਹਦੇ ਨਾਲ પણ જે ઓ ਇਸ પંક્તિ અર ઓસ પંક્તિ નું ઉઠ્ઠા કરકે ન દેખયા તા આ અર્થ ઓર કર લે ખારસા સો જો ચડે તરંગ લોભ લહેર છડકે નામ દી તરંગ દે સવારી કરે લોભ લહેર એ તરંગ છે તરંગ હોנדיયા નિરાકારી સવારી લહેર હોנדי કે પડી ਮਹਿਰ ਪਾਣੀ ਦੀ ਹੈ ਮਾਇਆ ਦੀ ਹੈ ਮਾਇਆ ਤੋਂ ਪ੍ਰਭਾਵ ਦੇ ਅੱਛੇ ਜਿਹੜੀ ਤਰੰਗ ਬਣ ਚੁਟਦੀ ਹੈ ਤਰੰਗਾ ਤੇ ਨਰੰਗਾ ਤੇ ਉੱਪਰ ਹੋ ਜਾਣਾ ਜੋ ਮਾਇਆ ਚੜੇ ਉੱਪਰ ਸਤੋ ਗੁਣਾ ਤੇ ਉੱਪਰ ਉੱਠ ਜੀ ਖਾਲਸਾ ਸੋ ਜੋ ਚੜੇ ਤਰੰਗ ਤਿੰਨੇ ਰੰਗ ਰੇ ਜਿਹੜੇ ਮਾਇਆ ਦੇ ਰੇਜੋਤਮ ਉਸ ਤੋਂ ਤੇਨੇ ਗੋਲਡੇਨਾ ਤੇ ਉੱਪਰ ਉੱਠ ਗਿਆ ਤੇ ਉੱਤੇ ਸੈਠੀ ਗਿਆ ਉੱਪਰ ਸਵਾਰੀ ਕਰ ਟਰੈਗੋੜ ਮੇਟਾ ਖਈਏ ਸਾਰ ਫਿਰ ਸਾਰ ਖਾਸ ਦਾਸ ਫਿਰ ਸਾਰ ਤੱਕ ਹੋਰ ਚਲ ਪਤ్రੰਗਦਾਰ ਤੇ ਘੋੜਾ ਕਰ ਲਿਆ ਦੱਸੋ ਕੀ ਕਰੀਏ ਤਰੰਗਦਾਰ ਘੋੜਾ ਨਹੀਂ ਤੁਰੇ ਲਾਗ ਹੈ ਤੁਰੇ ਪਲਾਣੇ ਪੌਣ ਦੇ ਉੱਤਰਾ ਹੁੰਦਾ ਤਰੰਗਰੀ ਹਰ ਸੱਤ ਨਰੰਜਣ ਅਮਰ ਹੈ ਨਿਰਪੋ ਅਜੋ ਸੱਤ ਨਰੰਜਣ ਹੈ ਸੱਤ ਹੁੰਦਾ ਵੇਸ਼ਾਂ ਵਾਲਾ ਨਰੰਜਣ ਰਮਾਇਤ ਉਹ ਤਾਂ ਪਾਈਓ ਵਰ ਮਰਪੋ ਦੇ ਵਿੱਚ ਅਸਲ ਦੇ ਵਿੱਚ ਜਿਹੜਾ ਜੀਵ ਹੈ ਵਰ जीव ਦਾ ਅਰਥ यो ਹੁੰਦਾ ਜੀਵ ਦਾ ਲਫ਼ਜ਼ੀ ਮਤਲਬ मतलब है, जो हमेशा ਰਹਤਾ रहता है, ਜਿਸ ਕਾਰਨ ਸਰੀਰ ਜੀਵਤ ਹੈ ਸਰੀਰ ਆਪ शरीर, ਆਪ ਤੇ ਆਪ ਸਰੀਰ ਦਾ ਜੀਵਨ ਹੈ ਜੀਵ ਸਰੀਰ ਦਾ ਜੀਵਨ ਹੈ ਜਿੱਨਾਂ ਚ है, शरीर ਨਾਲ आप आप आप है, ਹੈ ਸਰੀਰ ਜੀਵਤ ਹੈ ਸਰੀਰ ਆ ਪਤਾ ਸੰਗ ਅਬ ਇਹ ਤਾਂ ਹੁਣ ਵਰਗਿਆ ਪਾਈ ਡੈਡ ਬੋਡੀ ਹੋ ਗਈ ਹੁਣ ਜੀਵਨ ਕੀ ਹੈ ਜੀ ਕੇ ਜੀਵਨ ਹਾਂ ਜੀ ਕੇ ਜੀਵਨ ਉਹ ਇਹਦਾ ਉਹਦਾ ਵੀ ਜੀਵਨ ਕੋਈ ਜਿੱਥੋਂ ਉਹ ਪੈਦਾ ਓ ਗਿਆ ਪ੍ਰਭ ਜੀ ਤੂੰ ਮੇਰੇ ਪ੍ਰਾਣਾ ਦਾ ਆਹ ਪ੍ਰਭ ਜੀ ਤੂੰ ਮੇਰੇ ਪ੍ਰਾਣਾ ਦਾ ਉਹ ਜਿੰਨਾ ਚਿਰ ਉਹਨੂੰ ਬਾਹਰ ਕੱਢਿਆ ਹੋਇਆ ਸਰੀਰ ਦਾ ਜੀਵਨਾ ਕਾ ਜੀਗਾ ਕੀਤਾ ਸਾਰੇ ਡੀਕੇ ਪੜ ਲੇਗਾ ਤਾਂ ਮੈਨੂੰ ਤਾਂ ਬੜਿਆ ਨਹੀਂ ਤੁਹਾਨੂੰ ਕਦੇ ਬਲੇ ਹਮੇਂ ਕਹਿੰਦੇ ਕਿ ਕਿਤੇ ਡਿਸਕਸ ਕੀਤਾ ਹੋਵੇ ਕਿ ਸਰੀਰ ਦਾ ਜੀਵਨ ਇਹ ਐਨੀ ਵਿਆਖਿਆ ਕੀਤੀ ਹੋਵੇ ਕਿਸੇ ਮਹਾਨ ਕੋਈ ਚਿਆ ਹੋਰ ਕਿਤੇ ਕਿ ਸਰੀਰ ਦਾ ਜੀਵਨ ਹੈ ਜੀਵ ਦਾ ਅਰਥ ਹੈ ਮਾਇਆ ਵਿੱਚ ਜੀਵਨ ਸੈਲਜ ਵਿੱਚ ਮਾਇਆ ਦੇ ਮਰਦੇ ਨੇ ਜਬ ਨੇ ਜਿਵੇਂ ਉਹ ਬਹੁਤ سارے ਲੋਕ ਐ ਤੇ ਰਿਵੀਤ ਵਿੱਚ ਸੈਲ ਡੈੱਡ ਹੋ ਜਾਂਦੇ ਨੇ ਨਵੇਂ ਬਣਦੇ ਨੇ ਉਹ ਉਹਦੇ ਕਰਕੇ ਬਣਦੇ ਨੇ ਚੇਤਨ ਕਰਕੇ ਇਹਦਾ ਇਹਦਾ ਜੀਵਨ ਹੈ ਜਦੋਂ ਨਿਕਲ ਜਾਂਦਾ ਉਹ ਤਾਂ ਫਿਰ ਵੀ ਵਿੱਚ ਹੀ ਹੁੰਦੇ ਨੇ ਸੈਲ ਤਾਂ ਵਿੱਚ ਹੀ ਫਿਰ ਨਾ ਜਾਂਦੇ ਨੇ ਨਾ ਮਰਦੇ ਨੇ ਸਾਰੇ ਮਰ ਜਾਂਦੇ ਨੇ ਉਹ ਜੀਵ ਹੈ ਉਹਦੀ ਵਜਾ ਨਾਲ ਦਲਤੜਦਾ ਜਿਹੜਾ ਪਿੱਛੇ ਹੈ ਨਰਿੰਜਨ ਉਹ ਜਿਹੜਾ ਜੀਵ ਹੈ ਉਹਦੇ ਵਿੱਚੋਂ ਨਿਕਲਿਆ ਹੋਇਆ ਉਹਨੇ ਆਪਣੇ ਵਿੱਚੋਂ ਇੱਕ ਐਸੀ ਸ਼ਕਤੀ ਗੱਡੀ ਜਿਹੜੀ ਮਾਇਆ ਨੂੰ ਜੀਵਨ ਦਾਣ ਦੇ ਸਕਦੀ ਵਿੱਚ ਸ਼ਕਤੀ ਹੈ ਜਗ जीवन ਨੂੰ ਕਹਿਆ ਉਹ ਹੀ ਜਗ ਜੀਵ ਉਹ ਜਗ ਜੀਵ ਬਿਲਕੁਲ ਜਗ ਦਾ जीवन ਉਹ ਹੈ ਜਿਹੜੀ जीवन ਲਾਈਟ ਨਿਕਲੀ ਹੈ ਜਾਨੀ ਜੀਵ ਹੈ ਜਿਹੜਾ ਉਹੀ ਜਗ ਦਾ ਜੀਵਨ ਜਿਹਦੇ ਵਿੱਚੋਂ ਜੀਤੇ ਵਿੱਚੋਂ ਲਾਈਟ ਨਿਕਲੀ ਉਹ ਜਗ ਜੀਵ ਹੈ ਅੱਛਾ ਇਹ ਜੀਵ ਹੈ ਸਰੀਰ ਬਣਾਇਆ ਤੇ ਫਿਰ ਜਗ ਜੀਵਨ ਉਹ ਹੋਇਆ ਨਾ ਉਹੀ ਤੇਜ ਨਾਲ ਉਹਨੇ ਆਪਣਾ ਛੱਡਿਆ ਉਹੀ ਤੇਜ ਕਰਕੇ ਸਰੀਰ ਉਹੀ ਤੇਜ ਵਿੱਚ ਲਿਆ ਸਿੱਧ ਤੇਜ ਹੋ ਗਿਆ ਤੇਜ ਜਬਲੀ ਨਾ ਉਹ ਜਿਹੜਾ ਤੇਜ ਜੀਵ ਬਾਹਰ ਛੱਡਿਆ ਲਾਈਟ ਜਿਹੜੀ ਕੱਢੀ ਟਾਰਚ ਨੇ ਬਾਹਰ ਆਪਣੇ ਸੈੱਲ ਤੋਂ ਨਿਕਲੀ ਨਾ ਲਾਈਟ ਜਿੰਨਾ ਚਿਰ ਸੈੱਲ ਲਾਈਟ ਦਿੱਤੀ ਬਾਹਰ ਸਾਨੂੰ ਉਹ ਚਾਰ ਨੂੰ ਰਿਹਾ ਅੱਖਾਂ ਦੇ ਵਿੱਚ ਰੋਸ਼ਨੀ ਨਹੀਂ ਰਹੀ ਕਰਨਾ ਦੇ ਸੁਣਦੇ ਰਹੇ ਜਦ ਉਹਨੇ ਵਾਪਸ ਕਰ ਲਿਆ ਤਾਂ ਅੱਖਾਂ ਦੇ ਵਿੱਚ ਲਾਈਟ ਕਿੱਥੋਂ ਹੋ ਗਈ ਸੀ ਸੁਣਨਾ ਕਿਨੇ ਸੀ ਉਹ ਲਾਈਟ ਤ੍ਰਿਕੁਟੀ ਚ ਜਾਂਦੀ ਹੈ ਸਿਰਫ ਸਿੱਧੀ ਅੱਛਾ ਇਸ ਕਰਕੇ ਉਹ ਲਾਈਟ ਜੇ ਵਾਹ ਰੋਟ ਕੋਲ ਵੜਾ ਨਹੀਂ ਬਾ ਵੜਦੇ ਆਦਮੀ ਜਿਉਂਦਾ ਰਹਿੰਦਾ ਲੱਤ ਵੜਦੇ ਆਦਮੀ ਜਿਉਂਦਾ ਰਹਿੰਦਾ ਦੋਏ ਲੱਤਾਂ ਵੱਡੀਆਂ ਜਾਨ ਆਦਮੀ ਜਿਉਂਦੇ ਦੇਖੇ ਨੇ ਦੋਏ ਬਾਹਾਂ ਵੀ ਵੱਡੇ ਜਾਨ ਆਦਮੀ ਜਿਉਂਦੇ ਗੱਲ ਵੱਡੇ ਤੇ ਬਾਜ਼ ਆਦਮੀ ਜਿਉਦਾ ਨਹੀਂ ਜੀਵਨ ਨਮਾਜ਼ ਸੰਸਾਰ ਨਾਲੋਂ ਸਾਰੇ ਗਿਆਨ ਅੰਦਰੇ ਖਤਮ ਹੋ ਜਾਂਦੇ ਪਰ ਪਰ ਗਿਆਨ ਅੰਦਰੇ ਤੁਹਾਨੂੰ ਸੰਸਾਰ ਨਾਲ ਜੋੜਦੇ ਨੇ ਬ੍ਰੇਨ ਹੈ ਨਹੀਂ ਜੇ ਤਾਂ ਜੀਵ ਬਾਹਰ ਨਿਕਲੇ ਨਹੀਂ ਸਕਦਾ। ਦਵਾ ਪਰਚ ਬ੍ਰੇਨ ਨਹੀਂ ਬਣਾ। ਠੀਕਾ ਹੋਇਆ ਅਗੀ ਗੁਫਾ ਉਹੀ ਹੈ। ਉਹੀ ਗੁਫਾ ਅੰਦਰ ਆ ਕੇ ਉਹ ਸਿੱਧੀ ਗੱਲ ਆ ਗਈ ਲੈ ਗੁਫਾ। ਗੁਫਾ ਨੂੰ ਦਸੂਮਦਵਾਰ ਕਹਣਾ। ਗੁਫਾ ਉਹ ਹੁੰਦੀ ਹੈ ਜਿਹਦਾ ਬਾਹਰ ਕੋਈ ਰਸਤਾ ਨਾ ਹੋਵੇ। ਬਾਹਰ ਕੋਈ ਰਸਤਾ ਨਹੀਂ। ਜੇ ਬਾਹਰ ਕੋਈ ਰਸਤਾ ਨਹੀਂ ਹੈ। ਯਾਨੀ ਕਿ ਹਿਰਦੇ ਦੀ ਲਾਈਟ ਅੰਦਰ ਗੁਫਾ ਚ ਜਾਂਦੀ ਹੈ ਹਰ ਹਿਰਦੇ ਚ ਹਿਰਦੇ ਚੋਂ ਹੀ ਜਿੰਨ ਕੇ ਵੀ ਲਾਈਟ ਖੁੱਲਦਾ ਹੈ ਮਾਇਆ ਵਾਲ ਨੂੰ ਖੁੱਲਦਾ ਹੈ ਖੋਲ ਕਪਟ ਵੀ ਹੈ ਮਹਿਲ ਕਿਨਾਂ ਪਾਹੀ ਕੋਲਕਬੜ ਮਹਿਲ ਕਿਨਾਂ ਪਾਹੀ ਮੈਂ ਕਿਉਂ ਨਹੀਂ ਵੜ ਜਾਂਦਾ ਕੋਲਕਬੜ ਉਹ ਤਾਂ ਮਹਿਲ ਦਾ ਦਰਵਾਜ਼ਾ ਹੈ ਕਿਹੜਾ ਦੱਸੂ ਦਰਵਾਜ਼ਾ ਮਹਿਲ ਦਾ ਦਰ ਹੈ ਉਹ ਦਰਵਾਜ਼ਾ ਖੁੱਲ ਕੇ ਉਹ ਗੇਟ ਕਾ ਲੱਗਿਆ ਹੋਇਆ ਉੱਥੇ ਗੇਟ ਕਾ ਲੱਗਿਆ ਗੇਟ ਉਹ ਤਾਂ ਦਾ ਹੋਰ ਕੁਝ ਨਹੀਂ ਪਰ ਹੁੰਦਾ ਹੀ ਗੇਟ ਹੈ ਉੱਥੇ ਕਿਸੇ ਬਜਰ ਤਾਂ ਹੀ ਉਹਨਾਂ ਨੂੰ ਬਜਰ ਕਹਿੰਦੇ ਬਜਰ ਕਪਾਟ ਬਜਰ ਬਜਰ ਬਜਰ ਕੀ ਹੁੰਦਾ ਜਿਹਨੂੰ ਜਰਾ ਰੋਗ ਨਾ ਹੋਵੇ ਦੋ ਚੀਜ਼ਾਂ ਨੂੰ ਜਰਾ ਰੋਗ ਨਹੀਂ ਹੈ ਸੰਸਾਰ ਦੇ ਵਿੱਚ ਕਹੋ ਕਬੀਰ ਅਖਰਦੋ ਉਪਰ ਅਖਰਦੋ ਉਪਰ ਕੋਈ ਖਸਮ ਕਲਾਇ ਨਾ ਰੋਗ ਦੋਹੇ ਚੀਜ਼ਾਂ ਅਖਰਨੇ ਬਜਰ ਨੇ ਬਜਰ ਹਰ ਬਜਾ ਲੂਆ ਕਹਿੰਦਾ ਨਹੀਂ ਜਿਹੜਾ ਖਰਦਾ ਨਹੀਂ ਕਰਦਾ ਇੱਕ ਤਾਂ ਪਰਮ ਗਿਆਨ ਨਹੀਂ ਖਰਦਾ ਇੱਕ ਪਰਮ ਨਹੀਂ ਕਰਦਾ ਪਰਮ ਨਹੀਂ ਕਰਦਾ ਪਰ ਆਪਣੇ ਆਪੇ ਖਰਚਵੇਂ ਫਿਰਦਾ ਖਰਦਾ ਪਰਮ ਨਹੀਂ ਹੈ ਜਿੰਨਾ ਚਿਰ ਸੂਰਜ ਦੀ ਲਾਈਟ ਹੈ ਨੇਰਾ ਨਹੀਂ ਹੈ ਸੂਰਜ ਨੂੰ ਗਾਇਬ ਕਰੋ ਉੱਥੇ ਖੜਾ ਅੰਦਰ ਉਹ ਜੂ ਕਹਿੰਦਾ ਸਾਲ ਸੂਰਜ ਚੜਾਏ ਰਹੇ ਇੱਥੇ 100 ਸਾਲ ਨੇਰਾ ਗੁਪਤਰ ਹੋਊ ਇਹ ਕਸ਼ਕੰਟ ਵਾਸਤੇ ਸੂਰਜ ਆਵੇ ਨਹੀਂ ਰਹੋ ਤੇ ਹੋ। ਦੋਏ ਬਜਰ ਦੇ ਇੱਕ ਚੀਜ਼ ਨਹੀਂ ਹੈ। ਪਰਮ ਪ੍ਰਾਣਾ ਹੋ ਗਿਆ ਆਪੇ ਖਤਮ ਹੋ ਜਵੇ ਨਹੀਂ। ਤੇ ਟਾਈਮ ਨਾਲ ਖਤਮ ਹੋ ਜਵੇ। ਨਾ ਪੁਰਾਣਾ ਹੋਏ ਦਾ ਵਧੀਆ ਹੁੰਦਾ ਮਜ਼ਬੂਤ ਹੁੰਦਾ ਨਾ ਪੁਰਾਣਾ ਹੋ ਕਮਜ਼ੋਰ ਹੁੰਦਾ ਕੋਈ ਅਸਰ ਨਹੀਂ ਨਾ ਟਾਈਮ ਨਾਲ ਮਜ਼ਬੂਤ ਹੁੰਦਾ ਨਾ ਟਾਈਮ ਨਾਲ ਕਮਜ਼ੋਰ ਪਰ ਐਵੇਂ ਜੋ ਬ੍ਰह्म ਗਿਆਨ ਹੈ ਉਹ ਵੀ ਸਮੇਂ ਤੇ ਪਰੇ ਹੈ ਸਮੇਂ ਦਾ ਕੋਈ ਅਸਰ ਨਹੀਂ ਤੇ ਪਰ ਉਹ ਤੇ ਸਮੇਂ ਦਾ ਕੋਈ ਅਸਰ ਨਹੀਂਦਾ ਇੱਕ ਚੜ੍ਹਾਸੀ ਤੇ ਵਾ ਦੂਜਾ ਚੜ੍ਹਾਸੀ ਫੇਰ ਆ ਅਸ ਸਮੇਂ ਨਾਲ ਚਾਰ ਜਰਸੀ ਨਾਲ ਉਹ ਭਰਮ ਨਹੀਂ ਕੀਤਾ ਜਾਂਦਾ ਹਾਂ ਸਵੇਰੋਂ ਥੋੜੀ ਪ੍ਰਾਣੋਂ ਆ ਜਾਂਦਾ ਇਹ ਗੱਲ ਦੀ ਵੀ ਤੁਹਾਡੀ ਕੋਈ ਵਿਆਖਿਆ ਨਹੀਂ ਇਹ ਹੈ ਕਿ ਦੋ ਚੀਜ਼ਾਂ ਦੇ ਬਰਾਬਰ ਦੀਆਂ ਪਰ ਹਾਜ਼ਰੀ ਜਦੋਂ ਮੁਕਾਬਲਾ ਹੁੰਦਾ ਦੋ ਜਵਾਨ ਨੇ ਮੁਕਾਬਲੇ ਦੇ ਉੱਤੇ ਕੁਝ ਪਰ ਹਮੇਸ਼ਾ ਚਾਨਣ ਹਾਵੀ ਰਹਿੰਦਾ। ਰੋਸ਼ਨੀ ਵਿੱਚ ਭਜਣਾ ਹਨੇਰੇ ਨੂੰ ਪੈਂਦਾ ਰੋਸ਼ਨੀ ਦਾ ਪੂਰੇ ਮੂਹਰੇ। ਖਤਮ ਨਹੀਂ ਕਰਦਾ। ਖਾਤਾ ਵੀ ਕੀਤਾ ਜਾ ਸਕਦਾ ਹਨੇਰੇ ਨੂੰ। ਪਹਾਇਆ ਜਾ ਸਕਦਾ। ਦੂਰ ਕੀਤਾ ਜਾ ਸਕਦਾ। ਮੇਰਾ ਭਰਮ ਗਿਆਈ ਹੈ। ਆਜੂਗਾ ਫੇਰ। ਜਾ ਸੂਰਜ ਚਲੇਗਾ ਫੇਰਾ ਜੂ ਗਿਆ ਪਾਓ ਤਾਂਗਾ ਫੇਰਾ ਜੂਗਾ ਅਜੇ ਅਗਧਾਨੀਆ ਜੇ ਪਰਮਾ ਜੂ ਪਾਉਣ ਵਾਲੇ ਆ ਜੂ ਲੈ ਨਾਲੇ ਆ ਜੂ ਨਾਸ ਨਹੀਂ ਕਿਸੇ ਦਾ ਹੋਇਆ ਹਾਂਜੀ ਸੋਇਗਾ ਕਸਮ ਤੋਂ ਦਾ ਇਹ ਤਾਂ ਬਚਾ ਲੂਗਾ ਉਹ ਤਾਂ ਹੈ ਉਹ ਵੀ ਪਰ ਅਫਰ ਦਾ ਇੱਕ ਹਸਮਦੇ ਪਰ ਖਸਮ ਦੇ ਹਾਜ਼ਰੀ ਚ ਨੇੜੇ ਨਹੀਂ ਹੁੰਦੇ ਸਿੰਧ ਸਰ ਸ਼ਰਲ ਕੱਤ ਜਾਈਏ ਜੰਪਕ ਜੰਪਕ ਕੌਣ ਹੈ ਜਮੁਗਨੈਰਾ ਜੰਪਕ ਜਮੁਗਦੜ ਨੂੰ ਹੈ ਡੇੜਾ ਡੇੜਾ ਖੇਰ ਕੌਣ ਚਾਣਣਾ ਜਿੰਨਾ ਚਾਣਣਾ ਭਜੀ ਜੋ ਨੇ ਰੌਣੇ ਬੁਰੇ ਬੁਰੇ ਦਾ ਨਾ ਗਰ ਖਾਣੇ ਵੀਰ ਚੱਲਣ ਨੇ ਵਧਾਉਣੀ ਆਪਣੀ ਉਦੋਂ ਵੱਧ ਨਹੀਂ ਭਾਈ ਦਾ ਜਿੰਨਾ ਵੀ ਤੁਸੀਂ ਮੋਟਰਸਾਈਕਲ ਨਾ ਉੱਥੇ ਡਿੱਗ ਜਾਂਦਾ ਐਨਾ ਡਰਦਾ ਵੀ ਹੈ ਤੇ ਨਹੀਂ ਕਹਿੰਦਾ ਤੁਸੀਂ ਹਾਂ ਆਹ ਬੜਾਟੇ ਜਿੰਨਾ ਬੱਜੀ ਤੇੜਕਾ ਵਾ ਦਲੇਰਾ ਉਹਨੂੰ ਪਤਾ ਮੈਨੂੰ ਵਧਦਾ ਸਕਦਾ ਹੀ ਨਹੀਂ ਉਹਨੂੰ ਮੈਨੂੰ ਸਕਦਾ ਮੋਰਨਿੰਗ ਆ। ਹੌਣੀਓ ਦੂਰ ਲੈਣੀ। ਨਾ ਆ ਜਾ ਫੜ ਲੈ। ਉਹਨੂੰ ਪਤਾ ਵੀ ਇਹ ਕਿੱਥੇ ਭਜਲੂ ਕਰ। ਹੈ ਕਿ ਨਹੀਂ ਠੀਕ ਜਾਂਦੀ। ਗੱਲ ਤਾਂ ਨਹੀਂ ਕਰਨਾ। ਬਿਲਕੁਲ। ਵੇ। ਹਰ ਸਾਤਨ ਰੰਜਿਨਾ ਅਮਰ ਹੈ। ਨਿਰਭਉ ਨਿਰਵੈਰ। ਸਾਤਨ ਰੰਜਿਨਾ ਅਮਰ ਹੈ। ਇਹ ਗੱਲਾਂ ਗੁਰਬਾਣੀ ਦੇ ਵਿੱਚ ਵਿਆਖਿਆ ਤੋਂ ਕੱਚੀਆਂ ਰਹਿੀਆਂ ਹੋਈਆਂ ਨੇ ਇਹ ਨਵੀਆਂ ਗੱਲਾਂ ਨੇ ਬਾਕੀ ਧਰਮਾਂ 'ਚ ਗੱਲਾਂ ਨਹੀਂ ਹਨ ਹਾਂ ਬਾਕੀ ਕੀ ਹੈ ਨਹੀਂ ਬਾਕੀ ਧਰਮਾਂ 'ਚ ਗੱਲ ਇਹ ਦੇਖਣ ਦੀ ਕਿਉਂ ਧਰਮ ਨਵਾਂ ਸਾਡਾ ਨਹੀਂ ਤਾਂ ਨਵਾਂ ਕੀ ਹੈ ਤੁਹਾਡੇ ਕੋਲ ਹੁਣ ਲੱਗਦਾ ਨਹੀਂ ਨਵਾਂ ਜਿਹੜੀ ਵਿਆਖਿਆ ਕਰੀਓ ਕੋਈ ਨਵਾਂ ਉਹ ਤਾਂ ਉਹ ਕੋ ਪ੍ਰਾਣਾਈ ਮਾਰ ਆ ਰਹੇ ਜਿੱਥੇ ਹੁਣ ਗਾਇਆ ਹੁੰਦਾ ਉੱਥੇ ਹੋਰ ਸੜ ਦੁੰਦੇ ਦੇ ਪ੍ਰਾਣਾਈ ਕਿਉਂਕਿ ਦਸ਼ਾ ਤਾਂ ਹੋਏ ਹੋਏ ਨੇ دیکھا یہ روندے تے سوال کھڑے ہون گے کپراણા وال ہور ڑٹ کے جھوٹیاں چٹیاں ساکھیاں بنا کے اونوں ٹانکا جلا کے پھرا دیں اندر ملدا جلدا جا کر کے ہر سَت نرانجن امر ہے امر ہے سَت نرانجن ہے اے بہت تو کال تو اوپر ہے جوت دا کال نہیں ہوندا جو سمے دا جوت تے ਮਾਇਆ ਦੇ ਤੇ ਆਸਰੇ ਮਾਇਆ ਤੋਂ ਨਾਪਿਆ ਜਾਂਦਾ ਸਮਾਂ ਜਦੋਂ ਮਾਇਆ ਨਹੀਂ ਹੁੰਦੀ ਉਦੋਂ ਸਮਾਂ ਨਹੀਂ ਹੁੰਦਾ ਸਮਾਂ ਤਾਂ ਹੁੰਦਾ ਪਰ ਜੇ ਨਾਪਣ ਵਾਲਾ ਕੋਈ ਹਥਿਆਰ ਹੀ ਨਹੀਂ ਹੈ ਤਾਂ ਉਹਦਾ ਸਮੇ ਦਾ ਨਾਪਾਂਗੇ ਕਿੰਦਿ ਜਿਹੜੀ ਚੀਜ਼ ਨਾਪ ਨਹੀਂ ਸਕਦੇ ਹੈ ਆਕਾਸ਼ ਨੂੰ ਨਾਪਾਂਗੇ ਆਪ ਕੋਈ ਨਾਪਦਾ ਆਕਾਸ਼ ਕਿੱਡਾ ਇਹਦਾ ਨਾਪਦਾ ਕਾਇ ਹੀ ਕੋਈ ਨਾਪਦਾ हां प्लेनेट नावले चंद्रमहीने दूर है ठीक है सूरज है नी दूर है धरती तो चंद्रमंतू सूरज है नी दूर है मंगल ग्रह है नी दूर है फला नगर है तो फला नगर है नी दूर है अब देना पर आकाश में कोई ना कलर मैं आए काय तो आकाश है नी दूर है कोई ना ਇਸ ਕਰਕੇ ਆਕਾਸ਼ ਉੱਤੇ ਸਮਝ ਦਾ ਕੋਈ ਅਸਰ ਨਹੀਂ ਪਰਣਾ ਆਕਾਸ਼ ਨੂੰ ਸੱਚਾ ਕਿਹਾ ਹੋਇਆ ਹੈ ਸੱਚੇ ਤੇ ਆਕਾਸ਼ ਨਹੀਂ ਪਰਣਾ ਹੋਇਆ ਇਹਗਾ ਸੱਚਾ ਸੱਚਾ ਹੋਇਆ ਜਿੱਦ ਸਮਝਦਾ ਸਮਝਦਾ ਉਧਰ ਉਹ ਮਨ ਸੱਚਾ ਜਿਹੜਾ ਚਿੱਤ ਜਿਵਨ ਬਹਲਾ ਮਨ ਵੀ ਸੱਚਾ ਹੋ ਗਿਆ ਮੁਖ ਸੱਚਾ ਸੋਏ ਉਹ ਮੁਖ ਦੇ ਵਿੱਚੋਂ ਸੱਚ ਬਾਣੀ ਨਿਕਲੀ ਦੀ ਉਸਤਤੀ ਨਿਕਲਦੀ ਹੈ ਸੋ ਸੋ ਸੋਏ ਨਿਕਲਦੀ ਨਿਕਲਦੀ ਅਵਰ ਨਾ ਜਾਣਾ ਇੱਕ ਅਸਮਨ ਅਸੀ ਦੇ ਬੋਲ ਕੋ ਜਾਣਦੇ ਤੇ ਅੱਕ ਦੀ ਗੱਲ ਨਹੀਂ ਕਰਦੇ ਗੱਲਾਂ ਹੋਰ ਹੋਰ ਕਰਦੇ ਅਸੀਂ ਤਾਂ ਕਦੀ ਗੱਲੇ ਨਹੀਂ ਕਰਦੇ ਬਿਆਖਿਆ ਚ ਹੋਰ ਕਰਦੇ ਸਾਰੀਆਂ ਇੱਕ ਵੀ ਗੱਲ ਨਹੀਂ ਕਿਸੇ ਭਾਈ ਗੁਰਦਾਸ ਨੇ ਇੱਕ ਦੀ ਗੱਲ ਨਹੀਂ ਕਰੀ ਵੀ ਕੀਤੀ ਐ ਦੱਸੋ ਕਿੱਥੇ ਕੀਤੀ ਇਹਨੂੰ ਕੋਈ ਵੀ ਕਿ ਅਵਰ ਨੂੰ ਜਾਣਿਆ ਕੋਈ ਹੋਰ ਤੋਂ ਜਾਣਦਾ ਹੀ ਨਹੀਂ ਵੇਖਾ ਚਲੋ ਵੇਖ ਕੇ ਦੇਖ ਲਈ ਨੀ ਇਹ ਤਾਂ ਹੋਰ ਵੀ ਜਿਆਦਾ ਬਵੰਦੀ ਲਾਤੀ ਦੇਖ ਲੈਣੀ ਹੋ ਉਹ ਤਾਂ ਚੂੜੀ ਦਾ ਉਹ ਕੁੱਤੀ ਦਾ ਵਾਸ ਪਤਾ ਨਹੀਂ ਕਹਦਾ ਲੰਗਲ ਉਹ ਤਾਂ ਹੋਰੇ ਹੁਣ ਕੀ ਦੇਖ ਉਹ ਤਾਂ ਕਹਿੰਦਾ ਨજર ਲੱਗ ਜਾਂਦੀ ਕਿ ਪੱਥਰ ਪਾੜ ਦਿੰਦੀ ਹੈ ਨજર ਉਹ ਤਾਂ ਝੂੜੇ ਤਾਂ ਬੜਾ ਉਹਦਾ ਨਾਇਆ ਖੇਤ ਕਰਨ ਦੀ ਨਜ਼ਰ ਪੈ ਗਿਆ ਮੰਦੀ ਨੂੰ ਮੰਦਾ ਹੋ ਜਾਂਦਾ ਹੋ ਜਾਂਦਾ ਹਾਂ ਕੀ ਪ੍ਰਚਾਰ ਕਰਦਾ ਚਲੋ ਉਦੋਂ ਤਾਂ ਗੱਲ ਥੋੜੀ ਸੀ ਪਰ ਹੁਣ ਤਾਂ ਸਾਰੀ ਗੱਲ ਤਾਂ ਪਤਾ ਲੱਗ ਗਿਆ 96 95 ਤਾਂ ਗੱਲਾਂ ਸ਼ੁਰੂ ਦੇ ਵਿੱਚ ਸ਼ੁਰੂ ਹੋਏ تھے ਅਸੀਂ ਥੋੜਾ ਜਿਹਾ ਵੀ ਗੱਲ ਹੋਰ ਹੈ ਤੁਸੀਂ ਸਾਰੀ ਗੱਲ ਪੜਦੇ ਚੱਕਿਆ ਜੀ अवर्ण पेखाए ਏ बिन कोई कदे बिन हुन को देख रही एक की है किवें देखना अंतर बाहर एको जानो ਏਕ सृष्ट सबाई एक अहंकार अवर नहीं ਇੱਕ ਸਮਾਈ ਕਿੰਨੇ ਸ਼ਬਦ ਵਿੱਚ ਸਬੋਲ ਇੱਕ ਤੋਂ ਪਹਿਲਾ ਸ਼ਬਦ ਵਿੱਚ ਵੀ ਸੁਭਾਇਆ ਜਾਣਾ ਇੱਕ ਹੋ ਕੇ ਬਰਸ਼ਣਾ ਵ੍ਰਿਸ਼ ਰੂਪ ਕਿੱਲੇ ਵਲ ਹੈ ਇੱਕ ਹੋ ਕੇ ਸਮਾਇਆ ਜਾਣਾ ਇੱਕ ਤੋਂ ਪਹਿਲਾ ਨਹੀਂ ਸੁਭਾਇਆ ਅੱਧਾ ਸੁਭਾਇਆ ਬਸ ਤਦੇ ਨਾਨਕ ਇੱਕ ਸਮਾਈ ਇੱਕ ਸਮਾਈ ਨਹੀਂ ਹੈ ਲਫ਼ਜ਼ ਇੱਕ ਸਮਾਈ ਹੈ ਸਸਾਇਦਾਂ ਸਮਾਈ ਵਲ ਇੱਕ ਆਟਾ ਇੱਕ ਨੇ ਸਮੋਣਾ ਹਾਂ ਇੱਕ ਦੇ ਵਿੱਚ ਨਹੀਂ ਸਮੋਣਾ ਇੱਕ ਦੇ ਵਿੱਚ ਨਹੀਂ ਸਮੋਣਾ ਇੱਕ ਦੇ ਵਿੱਚ ਨਹੀਂ ਸਮਾਇਆ ਜਾਂਦਾ ਹੁੰਦਾ ਇੱਕ ਹੋ ਕੇ ਸਮਾਇਆ ਜਾਊਗਾ ਕਿੱਡਾ بڑا ਫਰਕ ਹੈ ਬਹੁਤ ਫਰਕ ਹੈ ਇੱਕ ਵਿੱਚ ਕੁਝ ਵੀ ਨਹੀਂ ਸਮਾ ਸਮਾਊਗਾ ਵਾਜੂਗਾ ਇੱਕ ਇੱਕ ਇੱਕ ਰਹਿਣਾ ਉਹ ਤਾਂ ਹੋ ਜਾਊ ਡੋਡਾ ਹੋ ਹੋ ਜਾਣਗੇ ਦੋ ਹੋ ਜਾਣਗੇ 10 ਹੋ ਜਾਣਗੇ 20 ਫਿਰ ਗਿਣਤੀ ਚੱਲੂ ਤੇ ਭਗਤ ਜੀ ਆਦੇ ਕਿਥੋਂ ਸਮਾਏ ਨੇ ਨਾ ਨਿਕਣ ਸੀ ਇੱਕ ਨਹੀਂ ਨਾ ਨਹੀਂ ਕਹੀਦੀ ਫਿਰ ਤਾਂ ਅੰਤਰ ਬਾਹਰ ਇੱਕੋ ਜਾਣੋ ਜੋ ਹੰਸ ਸੀ ਖਸਰੇ ਆਪਣਾ ਮਨ ਜੋ ਰੱਖਿਆ ਸੀ ਜੀਵ ਗੁਫਾ ਦੇ ਅੰਦਰ ਤਿਰਕੁਟੀ ਇੱਕ ਹੋ ਜਾਣ ਤਾਂ ਹੈ ਨਾ ਇੱਕ ਤਾਂ ਕਰਨ ਤਾਂ ਹੈ ਨਾ ਸੁਣਾ ਕਰਨ ਤਾਂ ਹੈ ਨਾ ਮਨ ਮੰਨ ਜਵੇ ਕੋਲ ਨੂੰ ਤਾਂ ਹੈ ਨਾ ਮਨ ਹੁਕਮ ਚ ਰਹਿਣ ਨੂੰ ਮਨ ਤਾਂ ਹੈ ਨਾ ਹੈਂ ਧੋਏ ਕੋਈ ਨਾਲ ਪ੍ਰਭ ਜਨ ਇੱਕੋ ਕੀ ਕੀ ਤੋ ਹੱਥਿਕਤ ਬਾਤ ਕੱਟ ਕਿਸੇ ਚ ਨਹੀਂ ਹਾਂ ਸੁੱਤਾ ਪਿਆ ਜ਼ਿਆਦਾ ਜਾਗਦਾ ਥੋੜਾ ਸੁੱਤਾ ਕਿੰਨਾ ਪਿਆ ਜਾਗਦਾ ਕਿੰਨਾ ਕੀ ਫਰਕ ਹੈ ਕਿਸੇ ਦੇ ਗੱਲੇ ਚ ਪੈਸੇ ਕਨੇ ਨੇ ਇਨਵੈਸਟ ਕਰਨੇ ਹੋਏ ਹਾਂ ਹੈ 100-100 ਰੁਪਏ ਸਾਰੇ ਆਪ ਕੋਈਸੇ ਦੇ ਕਰ ਭਈਆ ਗੱਲੇ ਜੇ 99 ਇਨਵੈਸਟ ਹੋਏ ਨੇ ਨਾ ਸੌਦਾ ਪੈ ਰਿਹਾ ਕੋਣ ਕਹਿੰਦੇ 99 ਗੱਲੇ ਚ ਨਿਕਦਾ ਸੌਦਾ ਤੇ ਗੱਲ ਸਹੀ ਹੈ ਸੋਈ ਦਾਰੇ ਕੋ ਬਦ ਘਟ ਕੇ ਸੇ ਕੋਲ ਗਿਆ ਕਹਿੰਦੇ ਬਾਹਰ ਭੀਤਰ ਇੱਕੋ ਜਾਣਾ ਇੱਕੋ ਜਾਣੋ ਬਾਹਰ ਔਰ ਭੀਤਰ ਨੂੰ ਜੋ ਅੱਖਾਂ ਨਹੀਂ ਦੇਖਦਾ ਕੰਨਾਂ થી ਸੁਣਦਾ ਬਾਹਰ ਗੱਲ ਕਰਦਾ ਦੁਨੀਆ ਚ ਵਿਚਰਦਾ ਗਿਆਨ ਹਾਸਲ ਕਰਦਾ ਬੁੱਧੀ ਅਕਲ ਤੋਂ ਕੰਮ ਲੈਂਦਾ ਗੱਲਾਂ ਕਰਦਾ ਔਰ ਅੰਦਰ ਜਿਹੜਾ ਹਾਲ ਹੈ ਇਨੂੰ ਇੱਕੋ ਹੀ ਸਮਝੋ ਇਹਨੂੰ ਇੱਕ ਮੰਨੋ ਦੋਏ ਇੱਕ ਦੀ ਭੀਤਰ ਵਾਲਾ ਬਾਹਰ ਦਾ ਅਦਾ ਤਾ ਲੋ ਅਦਾ ਸੁਣਾਇਆ ਹੋਇਆ ਮਾਇਆ ਦੇ ਵਿੱਚ ਇਹਨੂੰ ਇੱਕ ਦੋ ਜਿਹੜੇ ਦੋ ਥਾਂ ਨੇ ਇਹ ਕਹਿਰ ਦਵਾਰ ਕਿਸ ਬੰਨਾ ਕੀ ਐਸੇ ਨੂੰ ਇੱਕ ਮੰਨ ਲਿਓ ਹੋਰ ਇੱਕ ਕਿਤੇ ਨਹੀਂ ਮਿਲਣਾ ਤੁਹਾਨੂੰ ਐਸੇ ਨੂੰ ਇੱਕ ਜਾਣ ਲਿਓ आत्म राम लेहो परवान कहि गया सी कबीर कबीर ने बहुत कुछ कहता होते बाबलखरीज सारा पेदे बाबलखरीज बोलता था जिन्ना अगर तू अपने आप नु राम नहीं बनदा तेरे हे परो नहीं राम चौथे चंचल मन को गहो काम क्रोध सम बहो जल थल रहया आपे आप आपे जपो आपड़ा जात जप दिया ਆਪੇ ਕੋਈ ਧਰਮ ਇਹ ਗੱਲ ਕਹਿਦਾ ਹੋਵੇ ਤੁਸੀਂ ਸਿੱਖ ਵੀ ਨਹੀਂ ਕਹਿੰਦੇ ਇਹ ਗੱਲ ਤਾਂ ਸਿੱਖ ਵੀ ਨਹੀਂ ਕਹਿੰਦੇ ਗੱਲ ਤੁਹਾਰੋਂ ਮੰਜਰੇ ਨਹੀਂ ਪਲੀ ਸਮਝੇ ਨਹੀਂ ਆਈ ਭਾਈ ਧਰਮ ਆ ਪੜਦੇ ਨੇ ਸੌਦਾ ਕਿਤੇ ਹੋਲ ਲਈ ਬੈਠੇ ਦਿਮਾਗ ਇਸ ਬੈਲ ਨੂੰ ਖੋੜ ਫਸਿਆ ਆਪੇ ਜਪੋ ਆਪਣਾ ਜਾਪ ਆਤਮ ਰਾਮ ਲਿਖੋ ਪ੍ਰਵਾਣ ਤੂੰ ਹੀ ਰਾਮ ਹੈ ਤਾਹੀ ਰਾਮ ਦਾ ਜਾਪ ਆਤਮ ਜਾਪ ਕੋ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਗਾਇ ਹਰ ਸਤਿਗੁਰਾਂ ਦੇ ਆਤਮ ਨੂੰ ਜਾਣਣਾ ਅੱਤੇ ਵੀ ਜਾਣਣਾ ਅੱਤੇ ਵੀ ਜਾਣਣਾ ਆਤਮ ਨੂੰ ਜਾਣਣਾ ਤਾਂ ਮਨ ਨੂੰ ਦੇਖ ਲੈਣਾ ਅੱਧਾ ਹੀ ਜਾਣ ਅੱਧਾ ਕੰਮ ਪੂਰਾ ਨਹੀਂ ਹੈ ਪਰ ਅੱਧਾ ਆਪਣੀ ਕਿਸ ਨੇ ਕੀਤਾ ਨਾਦਮੁਨੀ ਸ਼ਾਰਦੁ muni ਸੇਖਾ ਤੈਨ ਪੀ ਤਨੂ ਮਨ ਮੇਰੀ ਪੀਖਾ ਇਹ ਇਹ ਪੈਰ ਵੀ ਨਹੀਂ ਪਟਿਆ ਇਧਰੋਂ ਤਾਂ ਕਿਸੇ ਕੋ ਕਿਸੇ ਧਰਮ ਇੱਕ ਕਦਮ ਵੀ ਮਨ ਕੀ ਉਹ ਤਰ ਤਾਂ ਹੀ ਲੋਗੋ ਨੇ ਕਿ ਬਗੰਨ ਫੋੜ ਆਤਮ ਚੀਨ ਪ੍ਰਾਥਮ ਚੀਨੋ ਫਿਰ ਜਿਹਦੇ ਵਿੱਚੋਂ ਮਨ ਪੈਦਾ ਹੋਇਆ ਜਿਹਦਾ ਮਨ ਉਹ ਵੀ ਚੀਜ਼ ਫੇਰ ਪਰ ਉਹਨੂੰ ਦੇਖੋ ਅਧਾ ਹੋ ਗਿਆ ਉਹ ਵੀ ਪ੍ਰਮਾਤਮਾ ਨੇ ਕਿਹਾ ਪ੍ਰਾਤਮਕੇ ਪ੍ਰਾਤਮ ਹੈ ਉਹ ਫੁੱਲ ਨੂੰ ਵੀ ਖੋਜ ਲਿਆ ਆਤਮ ਨੂੰ ਵੀ ਖੋਜ ਲਿਆ ਦੋਏ ਇੱਕ ਫੇਰ ਬੁੱਧੀ ਨੇ ਦੋ ਕੰਮ ਕਰਕੇ ਤਾਂ ਕਿਹਾ ਦੋਏ ਕਰ ਜੋੜ ਕਰੋ ਅਰਦਾਸ ਫੇਰ ਅਰਦਾਸ ਕੀਤੀ ਪ੍ਰਾਤਮ ਵਾਲਾ ਹੱਥ ਚਿਤ ਆਤਮਾ ਦਾ ਹੱਥ ਮਨ ਧੋਏ ਇਕੱਠੇ ਕਰ ਲਈ ਇੱਕ ਹੋ ਗਏ ਫਿਰ ਅਰਦਾਸ ਕੀਤੀ ਉਹ ਹੈ ਜਨ ਕੀ ਅਰਦਾਸ ਫਿਰ ਜਨ ਕੀ ਅਰਦਾਸ ਦੋਏ ਕਰ ਜੋੜ ਕਰੂੰ ਅਰਦਾਸ ਫਿਰ ਉਹ ਨਹੀਂ ਗਰੰਟੀ ਵੀ ਪੂਰੀ ਹੋ ਜਾਏ ਜੇ ਤੈਨੂੰ ਭਾਵੇ ਤਾਂ ਤੇਨੂੰ ਜੇ ਤੂੰ ਕਹਿ ਰਵੇ ਵੀ ਹਾਂ ਠੀਕ ਆ ਮਨਜੀਤ ਸਹੀ ਜੋੜੇ ਨੇ ਤਾਂ ਕੋਈ ਇਹ ਜੇ ਡਿਫੈਕਟ ਨਹੀਂ ਹੈ ਬਈ ਠੀਕ ਜੁੜ ਗਏ ਤੂੰ ਉਹਨੂੰ ਓਕੇ ਕਰ ਦਵੇਂ ਫੇਰ ਹੋਊਗੀ ਜੇ ਕਹਿ ਰਵੇ ਇਹ ਤਾਂ ਡਿਫੈਕਟ ਆ ਹੱਥ ਤਾਂ ਇੱਕ ਥੱਲੇ ਆਏ ਪੁੱਤੇ ਸਹੀ ਜੁੜੇ ਹੀ ਨਹੀਂ ਹਨ ਬਿਨਾਂ ਜੋੜਲੇ ਜੇ ਕਹੇ ਕਹੇ ਆ ਕਰਾ ਮੈਂ ਜੋੜ ਗਏ ਜੁੜੇ ਹੋਏ ਇੱਕ ਦੂਆ ਪਾਸੇ ਲੱਕ ਦੂਆ ਪਾਸੇ ਨੂੰ ਐ ਜੁੜੇ ਹੋਏ ਸਾਡੇ ਚਤਰ ਪਰੋ ਬਸ ਐ ਇੱਕ ਤਾਂ ਉਹ ਦੂਰ ਬੈਕਾ ਦੂਰ ਬੈ ਮਾਨ ਕਹਿੰਦਾ ਮੇਰੇ ਪਿੱਛੇ ਰਹਿ ਮੈਂ ਗੁਣਾ ਕਹਿੰਦਾ ਇਧਰ ਇਸ ਕਰਕੇ ਪੁੱਠਾ ਕਰਨੇ ਬੰਨੂ ਐ ਜੀ ਪਲਟਣ ਦੀ ਗੱਲ ਕੀਤੀ ਬੰਨੇ ਪਲਟ ਮਾਇਆ ਬਸ ਨਹੀਂ ਕਿਤਾ ਉਹ ਤਾਂ ਇਹ ਨਹੀਂ ਤੋ ਉਹੀ ਪਲਟਿਆ ਮੈਂ ਹਾਂ ਜੀ ਫੁਰ ਆਤਮ ਚੀਨ ਪ੍ਰਾਤਮ ਚੀਨ ਹੋ ਜਾਂਦਾ ਹੋ ਗਿਆ ਤਾਂ ਪੂਰਾ ਪੂਰਾ ਆਪਣਾ ਪੂਰਾ ਪੂਰਾ ਆਪਣਾ ਹੋ ਜਾਂਦਾ ਤੇ ਆਤਮ ਇਹ ਸਾਰੀ ਜਿੰਨੇ ਆਤਮ ਜਾਣ ਪਰਮ ਆਤਮ ਸੋਈ ਪਰਮ ਆਤਮਾ ਸਰਵ ਸ੍ਰੇਸ਼ਟ ਆਤਮਾ ਇਹਦਾ ਬਤਨ ਪਰਮੇਸ਼ਰ ਆਰ ਪਰਮਾਤਮਾ ਚ ਫਰਕ ਹੈ ਪਰ ਸਿੱਖ ਖਾਲੂਣੀ ਬਤਾਇਆ ਇਸ ਤਰ੍ਹਾਂ ਠੀਕ ਹੈ ਕਰੂਣੀ ਬਤਾਇਆ ਇਸ ਤਰ੍ਹਾਂ ਕੋਕ ਉੱਥੇ ਸਾਨੂੰ ਪਰਮਾਤਮਾ ਆਰ ਪਰਮੇਸ਼ਰ ਇੱਕੋ ਮੰਨੇ ਹਰੇ ਨਾ ਨਾ ਮਰਬਾਣੀ ਦੋ ਬੰਦੇ ਤਾਈ ਲਫ ਜਦੋਂ ਪਰਮਾਤਮਾ ਆਰ ਪਰਮੇਸ਼ਰ ਪਰਮ ਆਤਮਾ ਪਰਮਾਤਮਾ ਦਾ ਹੈ ਉਹ ਨਹੀਂ ਪਰਮ ਆਤਮਾ ਪਰਮਾਤਮਾ ਨ ਨੀ ਨਹੀਂ ਹੈ ਉਹ ਮੈਂ ਪਰਮ ਆਦੀ ਪਰਮਾਤਮ ਪਰਮ ਆਤਮ ਪਰਮਾਤਮ ਆਤਮ ਸਰਬਸ਼੍ਰੇਸ਼ਟ ਫਾਰਮ ਆਫ ਆਤਮ ਪਰਮ ਆਤਮ ਪਰਮ ਸਰਬਸ਼੍ਰੇਸ਼ਟ ਆਤਮ ਇਹ ਤੋਂ ਉੱਚੀ ਕੋਈ ਅਵਸਥਾ ਨਹੀਂ ਆਤਮ ਦੀ ਹੁਣ ਇਹ ਅਵਸਥਾ ਉਹ ਹੈ ਜਿਹਨੂੰ ਨਾਮ ਕਾ ਬੀਜ ਪੂਰਾ ਹੋਇਆ ਹੈ ਸੂਰਤ ਦਸਤਾਰ ਜਿਹਨੂੰ ਕਹਿੰਦੇ ਸਬਤ ਸੂਰਤ ਦਸਤਾਰ ਸਿਰ ਇਹ ਉਹ 부ਜੀਸ਼ਨਾਤਮਾ ਦੀ ਅਸਾਜੀ ਕਿਨ ਦਾ ਜੋਗਣ ਹੈ ਜੇ ਕੇ ਪਰਮੇਸ਼ਰ ਰੂਪ ਬਣ ਜਾ ਲੀਨ ਹੋਣ ਸ਼ਬਦ ਵਿੱਚ ਇਹਦੇ ਅੰਦਰੋਂ ਹੀ ਸ਼ਬਦ ਪੈਦਾ ਹੋਣਾ ਸੁਣ ਕੇ ਨੇ ਸ਼ਬਦ ਵਿੱਚ ਲੀਨ ਹੋ ਜਾਣਾ ਸ਼ਬਦ ਰੂਪ ਹੋ ਜਾਣਾ ਫੋਰਮ ਰੂਪ ਹੋ ਜਾਵਾਂਗੇ ਜਾ ਹਾਂਜੀ ਹਰ ਸਤਿਨੰਨ ਅਨੰਦ ਅਮਰ ਹੈ ਨਿਰਭਉ ਨਿਰਵੈਰ ਨਿਰੰਕਾਰ ਨਿਰਭਉ ਨਿਰਵੈਰ ਨਿਰੰਕਾਰ ਇਹ ਇਹਦੇ ਕੋਲ ਨਿਰਭਉ ਹੈ ਜੋਤ ਨੂੰ ਕੋਈ ਭੈ ਨਹੀਂ ਪੈ ਸਰੀਰ ਕਰਕੇ ਜਿੰਨਾ ਜਿੰਨਾ ਅਸੀਂ ਸਰੀਰ ਨੂੰ ਮੈਂ ਕਹਿੰਦੇ ਹਾਂ ਨਿਰਭੈ ਖਤਰਾ ਸਰੀਰ ਨੂੰ ਹੋ ਸਕਦਾ ਜੋਤ ਨੂੰ ਕਿਸੇ ਤੋਂ ਕੋਈ ਖਤਰਾ ਨਹੀਂ ਜੋਤ ਨੂੰ ਇਹਦੇ ਕੋਲ ਫੜ ਕੇ ਦਿਖਾਓ ਜੋ ਸਾਡੇ ਸਾਹਮਣੇ ਮਰ ਜਾਂਦਾ ਫੜ ਕੇ ਤਾਂ ਦਿਖਾਵੇ ਕੋ ਕਰਕੇ ਦਿਖਾਵੇ ਅਗ ਜਾਲ ਨਹੀਂ ਸਕਦੀ ਤੇ ਪਾਣੀ ਰੋੜ ਨਹੀਂ ਸਕਦਾ ਇਹ ਕਿੱਥੇ ਵੜਿਆ ਨਹੀਂ ਜਾ ਸਕਦਾ ਫੜਿਆ ਨਹੀਂ ਜਾ ਸਕਦਾ ਸਾਰੇ ਕੰਮ ਹੋ ਸਕਦੇ ਸਰੀਰ ਦੇ ਸਾਰੇ ਕੰਮ ਹੋ ਸਕਦੇ ਸਰੀਰ ਦੇ ਖਤਿਆ ਰੂਹ ਸੀ ਆਪਣੇ ਖਤਰੇ ਲੰਮੀ ਬੈਠੇ ਹੱਥ ਮੋੜੇ ਸੱਜੇ ਜੀ ਜਿਹਨਾਂ ਨੂੰ ਇਹ ਗੱਲ ਦੀ ਸਮਝ ਆ ਜਾਂਦੀ ਹੈ ਉਹ ਦਤੀਆਂ ਤਵੀਆਂ ਤੇ ਬਹਿ ਕੇ ਉਹਨਾਂ ਨੂੰ ਪਰਵਾਹ ਨਹੀਂ ਤੁਹਾਨੂੰ ਪਤਾ ਵੀ ਸਰੀਰ ਜਲਦਾ ਜਿਹੜੀ ਹੈ ਪਾਣੀ ਜਲਦਾ ਦੁੱਧ ਨੂੰ ਕੁਝ ਨਹੀਂ ਹੁੰਦਾ ਆ ਵਟ ਨੂੰ ਦੁੱਧ ਕੋ ਖਪਨ ਨਾ ਦੁੱਧ ਕੋ ਖਪਨ ਅਸਲ ਜੇ ਹੀ ਗੱਲ ਕਹੀ ਤੀ ਉਹ ਤੇ ਜੋਤ ਦੀ ਅਸਲੀ ਦੀ ਗੱਲ ਹੋਰ ਕੀ ਕਹੀ ਸੀ ਹੋਰ ਕੀ ਦੀ ਕਹੀ ਸੀ ਕਹੀ ਤਾਂ ਐਸੀ ਹੈ ਅਸਲ ਤਾਂ ਹੋਈ ਹੈ ਆ ਰ ਅੱਗੇ ਬਦਲ ਪ੍ਰਸਾਰ ਹਾਂ ਸ਼ਰੀਰ ਹੀ ਹੋਇਆ ਗੋਰੀਲੇ ਕੁਕਰਾਂ ਨੂੰ ਹਾਂ ਜਿਨ ਜਪਿਆ ਇੱਕ ਮਨ ਇੱਕ ਚਿੱਤ ਜਿਨ ਜਪਿਆ ਇੱਕ ਮਨ ਇੱਕ ਚਿੱਤ ਤੈਨੂੰ ਰੱਥਾ ਹੋਵੇਂ ਪਾਰ ਜੀਨੇ ਇੱਕ ਮਨ ਇੱਕ ਚਿੱਤ ਸਮਝ ਲਿਆ ਇੱਕ ਮਨ ਇੱਕ ਚਿੱਤ ਸਮਝ ਲਿਆ ਇੱਕ ਵਾਰ ਇੱਕ ਚਿੱਤ ਹੋ ਕੇ ਸਮਝ ਲਿਆ ਤੈਨੂੰ ਰੱਥਾ ਹੋਵੇਂ ਪਾਰ ਜੀਨੇ ਇੱਕ ਵਾਰ ਇੱਕ ਚਿੱਤ ਹੋ ਕੇ ਸਮਝਿਆ ਉਹ ਆਪ ਇੱਕ ਹੋ ਗਿਆ ਅਵੇ ਕ ਜਦੋਂ ਅਸੀਂ ਇੱਕ ਮਾਨੇ ਕਿਤਿਤ ਹੋ ਗਏ ਸਮਝਦੇ ਹਾਂ ਅਸੀਂ ਆਪ ਇੱਕ ਹੋਦੇ ਹਾਂ ਜਿਨ੍ਹਾਂ ਹਰ ਜਪਿਆ ਸੇ ਹਰ ਹੋਏ ਇੱਕ ਦਾ ਕੱਡ ਜਵਾਬ ਹੈ ਗੁਰਬਾਣੀ ਜਿੱਦੋਂ ਤੁਹਾਨੂੰ ਇਸ ਤਰ੍ਹਾਂ ਗਿਆਨ ਹੋ ਕਿਵੇਂ ਹੂੰ ਕਰ ਹੂੰ ਕਿੱਥੋਂ ਹੂੰ ਇਹ ਸਵਾਲ ਦਾ ਜਵਾਬ ਹੈ ਜਿਦੋਂ ਆਪ ਆ ਰਹੇ ਆ ਆਪੇ ਕੋ ਕਹਦੇ प्रथमे त्यागी fome prit fome prit ਤੈਗ ਹੁਣ ਕਿਆ ਲੋ ਪੈਰੀ ਵਿੱਚ ਸਮਾਨੇ ਤੁਰਿਆ ਗੁਰੂ ਉਹ ਹੋਰ ਪੰਕਤੀ ਹੈ ਹੈਗਾ अ प्रथमे अर्ध समान एक रहया ता एक हो आप एक हो गया ता पता लग जाए चलो आप एक हो के, रह एक, हो के एक रहया ਕਿ ਤੂੰ ਆ ਗਏ ਕੋ ਹੋ ਕੇ ਰਹਿ ਗਿਆ ਫਿਰ ਪਤਾ ਲੱਗਾ ਕਿ ਵੱਲੋਂ ਇਤਨਾ ਕਿਤੋਂ ਦੀ ਬਦਲ ਕੋਈ ਟ੍ਰਿਕ ਕਰ ਸਿੱਧੇ ਪੁਂਕੀ ਇੱਕ ਰਹਾ ਕਿ ਤੂੰ ਹੀ ਕੋ ਹੋ ਕੇ ਰਹਿ ਗਿਆ ਆਪ ਸੁਬੇਸ਼ਾਬਾਦ ਕੀ ਕੋ ਕਰ ਆਦਮ ਚੇਰ ਪਰ ਆਦਮ ਚੀਰੋ ਜਾਂ ਚੀਰ ਜਾ ਦੋਏ ਕਰ ਜੋੜ ਲੈ। ਕਿ ਅਡੋਲ ਹੋ ਗਿਆ ਮਨ। ਨਿਰਪੈ ਹੋ ਗਿਆ ਮਨ। ਪਤਾ ਲੱਗਿਆ ਵੀ ਤੂੰ ਆ ਬੇ ਇੱਕ ਹੋਤੀ। ਉਸ ਵੇਲੇ ਕਹਿ ਰਿਹਾ ਕ੍ਰਿਸ਼ਨ ਨਾਮ। ਅਸ਼ਟਕਾ ਬਕਰ। ਜਨਕ ਨੂੰ ਜੇ ਜਨਕ ਮੁਹਦਰੋ ਗੁਰੂ ਦਾ ਅਡੋਲ ਕਰਨ ਤੂੰ ਨਾ ਤੋਮ ਸੋਮ ਤੂੰ ਵੀ ਬ੍ਰਹਮ ਹੈ ਤੂੰ ਤੂੰ ਅਡੋਲ ਬੈਠਾ ਤੂੰ ਹੀ ਇੱਕ ਹੈ ਤੂੰ ਆਗੈ ਇੱਕ ਹੈ ਬ੍ਰਹਮ ਤੇ ਤੂੰ ਅਡੋਲ ਕਹਿੰਦਾ ਮੇਰਾ ਮਨ ਜਿਹੜਾ ਮੇਰਾ ਮਨ ਕਹਿੰਦਾ ਹੋ ਬ੍ਰਹਮ ਜਿਹੜਾ ਕਹਿੰਦਾ ਨਾ ਮੇਰਾ ਮਨ ਲੋਚੇ ਗੁਰਦਾਰਸ਼ਣ ਤਲੀ ਉਹ ਬ੍ਰਹਮੇ ਬੋਲਦਾ ਹੁੰਦਾ ਹੈ ਬਨੂ ਦਾ ਫੁਰਬਲ ਕਿਦਾਂ ਫੁਰਦਾ ਸੁਬੀਰ ਫੁਰਦਾ ਹੋਰ ਕੀ ਦਾ ਬੰਦਾ ਪਹਿਲਾਂ ਲੋਜਦਾ ਨਹੀਂ ਸੀ ਦਰਸ਼ਨਾ ਨੂੰ ਹੁਣ ਲੋਜਦਾ ਉਹ ਲੋਜਦਾ ਪਹਿਲਾਂ ਨਹੀਂ ਸੀ ਲੋਜਦਾ ਪਹਿਲਾਂ ਲੋਜਦਾ ਸੀ ਬਰੇਆਈਆਂ ਫਰਨ ਫਰਨ ਮੇਰਾ ਬਸ ਨਹੀਂ ਸੀ ਮਾਈ ਮਨ ਮੇਰਾ ਬਸਣਾ ਹੈ ਉਹ ਵੀ ਬਸਤਾ ਸੀ ਉਹ ਵੀ ਤਾਂ ਬਸਤਾ ਸੀ ਜਦ ਪਰੇਸ਼ਾਨ ਕਰਦਾ ਸੀ ਮਨ ਮਨ ਪਾਪੀ ਬਨਵੰਦਾ ਅਜੋ ਬੁਕਾਰ ਨ ਛੋੜੀ ਪਾਪੀ ਬੁਕਾਰ ਨ ਛੋੜੀ ਪਾਪੀ ਬਨਵੰਦਾ ਉਹ ਉਦੋਂ ਵੀ ਬੰਦ ਸੀ ਮੇਰਾ ਉਹਦੋਂ ਹੀ ਛਡਾਉਂਦਾ ਸੀ ਬ੍ਰਹਮ ਉਹ ਛਡਦਾ ਨਹੀਂ ਸੀ ਜਿਹੜਾ ਉਹ ਬੋਲਦਾ ਉਹੀ ਬ੍ਰਹਮ ਤਾਂ ਇਹ ਕਹਿੰਦਾ ਕਹਿੰਦਾ ਖੁਦਾ ਤੇ ਤੋ ਬਖਲੇ ਤੇਰੀ ਦੇਖਣ ਵਾਲੀ ਅੱਖ ਨਹੀਂ ਹੂੰ ਪਰ ਉਹਨੇ ਦੱਸਿਆ ਨਹੀਂ ਵਾਕ ਕਿਹਦੀ ਕੌਣ ਹੈ ਐ ਨਹੀਂਗਾ ਤੂੰ ਤੇ ਤੋ ਵੱਖਰੀ ਕਹਿੰਦਾ ਇਹਦਾ ਮਤਲਬ ਤੇ ਤੋ ਵੱਖਰੀ ਹੋਰ ਐ ਕੋਈ ਹੋਰ ਤੇ ਤੋ ਹੋਰ ਕਹਿੰਦਾ ਤੇ ਤੋ ਵੱਖਰੀ ਦੋ ਬਣਾਤੇ ਉਹ ਜਿਹੜਾ ਕਹਿੰਦਾ ਤੂੰ ਹੀ ਬ੍ਰਹਮ ਹੈ ਉਹ ਵੀ ਗਲਤ ਕਹੀ ਬ੍ਰਹਮ ਤਾਂ ਅੰਦਾ ਬ੍ਰਹਮ ਤਾਂ ਅੰਦਾ ਇੱਥੇ ਗੁਰਬਾਣੀ ਨੇ ਸੰਸ਼ੋਧਨ ਪਤਾ ਕੀ ਦਿੱਤਾ ਹੈ ਕਿ ਤੂੰ ਹੀ ਇੱਕ ਹੈ ਇੱਕ ਰਹਿਆ ਤਾਂ ਦੇਖੋ ਜਾਨ ਤੂੰ ਇੱਕ ਨਾਲ ਪ੍ਰਭ ਜੀ ਜਿਨ ਜਪਿਆ ਇੱਕ ਮਨ ਇੱਕ ਜਿਤ ਤੈਨੂੰ ਇੱਕ ਮਨ ਮਨ ਔਰ ਇੱਕ ਜਿਤ ਜੀਨੇ ਸਮਝ ਲਿਆ ਜਾਣ ਲੈ ਤੈਨੂੰ ਲੱਥਾ ਤੇ ਤੋਏ ਜਾ ਰਿਹਾ ਦੋਏ ਸਮਝ ਪਾਰ ਤੇਨੂੰ ਲੱਥਾ ਹਮੇ ਪਾਰ ਉਹਨਾਂ ਦਾ ਹਮੇ ਪਦਾ ਪਾਲ ਲਾਤ ਕਿਉਂਕਿ ਜਾਣਿਆ ਨਹੀਂ ਜਾਣਦਾ ਉਹ ਇਕੱਠੇ ਮਿਲੋ ਜਦੋਂ ਕੋਈ ਆਦਮੀ ਇਕੱਠੇ ਕੰਮ ਕਰਦੇ ਨੇ ਜਿਹੜੇ ਬੌਲਦ ਵੀ ਇਕੱਠੇ ਚੱਲਦੇ ਹੋਰ ਚਾਹੇ ਅਡਡਡ ਲੈਂਦੇ ਹੋਰ ਹੂੰ 5 7 10 ਸਾਲ ਚੱਲ ਜਾਣ ਉਹਨਾਂ ਦਾ ਸੁੱਚੀ ਪ੍ਰੇਮ ਹੋ ਜਾਂਦਾ ਇੱਕ ਵੇਜ ਦੀ ਹੈ ਉਹ ਇੱਥੇ ਨਹੀਂ ਪੱਠੇ ਖਾਂਦਾ ਉਹ ਉੱਥੇ ਜਾ ਕੇ ਨਹੀਂ ਪੱਠੇ ਖਾਂਦਾ ਜਾਨਵਰਾਂ ਜੀ ਹੋ ਜਾਂਦਾ ਇੱਕ ਤਾਂ ਉਹ ਕੁਰਸੀ ਤੇ ਕੋਈ ਕੰਮ ਕਰਨ ਲੱਗਿਆਂ ਨੂੰ 10 ਸਾਲ ਬੱਤੇ ਉਹਨਾਂ ਦਾ ਘਰ ਵਰਗਾ ਭਾਈ ਵਰਗਾ ਪ੍ਰੇਮ ਹੋ ਜਾਂਦਾ। ਅਜੇ ਭਾਈ ਭਾਈ ਲਾਡ ਪਿੰਡ ਦਾ ਦੋਸਤ ਹੋਣਾ ਵਰਗਾ ਪ੍ਰੇਮ ਹੋ ਜਾਂਦਾ। ਹੂੰ। ਦੋਸਤਾਂ ਨਾਲ ਵੀ ਪ੍ਰੇਮ ਹੀ ਹੁੰਦਾ। ਉਹਨਾਂ ਦਾ ਹੋ ਜਾਂਦਾ ਹੋ ਜਾਂਦਾ ਸਗੇ ਭਾਈਆਂ ਦਾ। ਚਾਹ ਕਦ ਸੰਜੀ ਹੋਵੇ। ਯਾਨੀ ਜਦੋਂ ਮਾਨਰ ਚਿੱਤ ਇਕੱਠੇ ਹੋ ਕੇ ਕੰਮ ਕਰਨ। ਇਕੱਠੇ ਹੋ ਕੇ ਕੰਮ ਦੇ ਵਿੱਚ ਕੋਈ ਕਾਮਯਾਬੀ ਹਾਸਲ ਕਰ ਲੈਣ। ਕਾਮਯਾਬੀ ਇੱਕ ਸੁਰ ਹੋਏ ਤੇ ਬਿਨੋਂ ਕਦੇ ਨਹੀਂ करो ਕਿਸੇ ਕੰਮ ਨੂੰ ਤੁਸੀਂ ਕਰੋ ਜੇ ਇੱਕ ਸੁਰ ਹੋ ਕੇ ਨਹੀਂ कर लो ਕਾਮਯਾਬੀ ਨਹੀਂ ਹੋਣੀ ਤੁਹਾਡੀ ਵਿਚਾਰਸ ਕਰ ਲੋ ਜੇ ਮਨ ਚ ਫਰਕ ਨਹੀਂ ਹੋ ਕਾਮਯਾਬੀ ਨਹੀਂ ਹੋਣੀ ਜਦੋਂ ਧੋਏ ਇਸਤਰੀ ਕੇ ਨਾਲ ਕੰਮ ਕਰਦੇ ਨੇ ਜੁੜੀ ਆਪੀ ਗੱਲ ਗੁਰਬਾਣੀ ਨੇ ਗੱਲ ਰੱਦ ਕਰ ਦਿੱਤੀ ਸਮਝਿਆ ਕਿ ਉਹ ਕਰਨ ਆ ਗੱਲ ਦੀ ਹੋਰ ਸਮਝਾਈ ਮਤਲਬ ਹੈ ਕੰਮ ਜੇ ਕਰਨ ਵੇਲੇ ਬੇਈਮਾਨੀ ਕਿਤੇ ਸੀ ਉਹ ਚਾਲਿਆ ਆਪੀ ਨਹੀਂ ਹੋ ਸਕੀ ਤਾਂ ਦੂਜੇ ਵਈ ਮੰਨੇ ਆ ਬਈ ਸਿਰ ਵਾਲੇ ਨਾਲ ਨੂੰ ਲਾਉਣੇ ਆ ਆਪਾਂ ਪੂਜ ਬਲ ਲੱਗਣਾ ਕਿਵੇਂ ਲੋੜ ਵਈ ਮੰਦੀ ਦਾ ਉੱਥੇ ਸਟਾਡ ਆਵੇਂ ਅੱਭੀ ਕਿਵੇਂ ਦਾ ਸਾਰਾ ਬੇਸ ਹੈ ਵਈ ਦਾ ਸਾਰਾ ਘਰ ਨਹੀਂ ਖੜਾ ਬਾਹਰੋਂ ਕੀ ਘਟਣਾ ਨਹੀਂ ਜਿਹਨਾਂ ਦੀ ਖੋਟੀ ਫਿਰੋ ਅੰਦਰੋਂ ਕੀ ਘਟਣਾ ਬਾਹਰੋਂ ਨਹੀਂ ਘਟਦਾ ਬਾਹਰੋਂ ਨਹੀਂ ਘਟਦਾ ਸਭ ਗੱਲ ਬਿਜ਼ਨਸ ਸਭ ਤੇ ਉਦੋਂ ਸੰਖ ਨਿਕਲੇ ਉਸ ਮੁੰਦਰ ਕਿਉਂ ਤੇ ਜਿੰਨੇ ਮਰਜੀ ਲੈ ਲਉ ਬਾਜ਼ਾਰ ਚ ਬਈਆ ਬੇਰ ਬਈ ਨੂੰ ਸੱਜ ਮਿਲਦੇ ਨਾ ਕਾਂ ਢੋਲ ਦੇ ਮਰਜੀ ਲੈ ਫਾਰ ਮਿਲਦੇ ਨਹੀਂ ਤੇ ਬਾਗਤੀ ਘਾੜ ਤਨ ਇਹ ਕਹਿ ਸਕਦੇ ਆ ਤੀਰ ਬਣਾਏ ਪਹਿਲੀ ਵਾਰ ਆਦਮੀ ਨੇ ਤਾਨੇ ਬਣਾਇਆ ਪਹਿਲੀ ਵਾਰ ਆਦਮੀ ਨੇ ਇਹ ਤਾਂ ਕਹਿ ਸਕਦੇ ਉਹਨਾਂ ਨੇ ਕਿਹਾ 14 ਰਤਨ ਹੋਰੇ ਬਣਾਤੇ 14 ਰਤਨ ਗਲਬੋ ਸ਼ੋਰ ਸੀ ਰੜਕਿਆ ਕੋਈ ਰਾਜਾ ਕਹਿੰਦਾ ਤੁਸੀਂ ਇਹ ਕਹਿ ਲਓ ਇਹ ਤਾਂ ਇਹ ਤਾਂ ਹੋ ਸਕਦਾ ਗਾਂ ਨੂੰ ਕਿਸੇ ਜਾਨਵਰ ਤੋਂ ਡਿਵੈਲਪ ਕਰਕੇ ਕਰਾਸ ਬ੍ਰੀਡ ਬਣਾ ਕੇ ਗਾਂ ਬਣਾਈ ਹੋਵੇ ਦੁੱਧ ਵਾਸਤੇ ਇਹ ਵੀ ਹੋ ਸਕਦਾ ਹੁਣ ਕਰਾਸ ਬ੍ਰੀਡਾਂ ਹੀ ਨੇ ਕੁੱਤੇ ਬਣਾ ਲਏ ਇਹਨਾਂ ਨੇ ਭੇਡੀਆਂ ਤੇ ਹਰ ਹੋਰੇ ਤੋਂ ਲੈ ਕੇ ਬਣਾਉਂਦੇ ਹੀ ਨੇ ਇਹੋ ਜਿਹਾ ਕੰਮ ਤਾਂ ਹੋ ਸਕਦੀ ਵਿਡਵੈਲਪ ਕਰਕੇ ਤੁਸੀਂ ਕੋਈ ਦੁੱਧ ਦੇਣ ਵਾਲਾ ਮੈਂ ਦੋਆਂ ਨੇ ਇਕੱਠਾ ਇਕੱਠੇ ਕਰਕੇ ਕੋਈ ਗਿਆਨ ਆਸਰ ਕਰਕੇ ਗਾਹ ਕੁਝ ਬਣਾਇਆ ਉਹ ਤਾਂ ਗੱਲ ਅਲੱਗ ਹੈ ਕੀਤਾ ਉੱਥੇ ਵੀ ਦੋਏ ਕਰ ਜੋੜ ਕੇ ਦੋਏ ਨਵੀਂ ਖੋਜ ਨਿਕਲਦੀ ਹੈ ਜੋੜ ਕੇ ਹੋ ਕਰਕੇ ਹੀ ਕਰਕੇ ਬਿਨਾਂ ਖੋ ਬਿਨਾ ਉਹ ਮੁਮਕਾ ਨੁਗਿਆ ਹੀ ਹੁੰਦਾ ਹੈ ਦਰਗਾ ਜੋ ਹੀ ਜਾਂਦਾ ਹੈ ਇੱਕ ਮਨ ਇੱਕ ਚਿਤ ਹੋ ਕੇ ਰੁਕਦਾ ਜੋ ਮੰਗਾਇਆ ਠਾਪੁਰਾ ਪੜੇ ਤੇ ਸੋਈ ਸੋਈ ਜਿੰਨਾ ਜਨ ਪ੍ਰਵਾਨ ਨਹੀਂ ਹੁੰਦਾ ਉਹ ਹੈ ਤਾਂ ਸਹੀ ਦੋਏ ਘਰ ਜੋੜ ਕਰੂ ਅਰਦਾਸ ਪ੍ਰਭਾਣੇ ਦਾਣੇ ਰਾਸ ਉਹਦੀ ਇੱਛਾ ਨਾਲ ਰਾਸ ਹੈ ਨਹੀਂ ਤਾਂ ਪਹਿਲੇ ਦਿਨ ਕਿਸ ਨੂੰ ਪਹਿਲੇ ਦਿਨ ਮੰਗੇ ਜਾਂਦੇ ਨੂੰ ਖੋਜੀ ਇਹਨੇ ਨਾਲ ਕਿਉਂ ਲਾ ਦਿੰਦੇ ਨੇ ਇਹਨੇ ਨਾਲ ਖੋਜੀ ਕਿਸੇ ਵੀ ਫੀਲਡ ਵਿੱਚ ਟਾਈਮ ਲੱਗਦਾ ਉਹਨਾਂ ਦਾ ਵੀ ਟੈਸਟ ਹੁੰਦਾ ਪਹਿਲ ਫਿਰ ਇਥੋਂ ਇਹ ਸਾਬਤ ਹੁੰਦਾ ਹੈ ਵੀ ਜਦੋਂ ਕੋ ਇਕਮਾਨ ਇੱਕ ਚਿੱਤ ਇਮਾਨਦਾਰੀ ਨਾਲ ਕੋਈ ਕੰਮ ਕਰਦੇ ਨੇ ਫਿਰ ਕੋਈ ਪ੍ਰਾਪਤੀ ਹੁੰਦੀ ਹੈ ਪਰਮਦੇਵ ਪ੍ਰਾਪਤੀ ਇਮਾਨਦਾਰੀ ਬਣਾਦੀ ਹੁੰਦੀ प्राप्ति ਇਮਾਨਦਾਰੀ ਬਿਨਾਂ ਤਾਂ ਕੋਈ ਪ੍ਰਾਪਤੀ ਨਹੀਂ ਬਾੜਾ ਫੇਲ ਨਾ ਬਾੜੀ ਪੜਨ ਨਾ ਪ੍ਰਾਪਤੀ ਮਰ ਜਪਿਆ ਇੱਕ ਮਨ ਇੱਕ ਚਿੱਤ ਤਨ ਰੱਥਾ ਹੋਮੇ ਪਾਰ ਕਿੰਨ ਲੱਥਾ ਹੋਵੇ ਪਾਰ ਉਹਨਾਂ ਦਾ ਹੋਮੇ ਦਾ ਪਾਰ ਹੋਇਆ ਥਾ ਮਨ ਇੱਕ ਚਿੱਤ ਹੋ ਕੇ ਜਪ ਲਿਆ ਇੱਕ ਮਨ ਇੱਕ ਚਿੱਤ ਮਨ ਔਰ ਚਿੱਤ ਨੂੰ ਜਾਣ ਲਿਆ ਮਨੌਰ ਚਤ ਨੂੰ ਜਾਣ ਲਿਆ ਵਿੱਚ ਚਤ ਕਿਹ ਹੈ ਚਤ ਦਾ ਸੁਭਾਅ ਕੀ ਹੈ ਹੁਣ ਦਾ ਸੁਭਾਅ ਕੀ ਦੋਹਾਂ ਰੂਪ ਇਕガル ਇਹ ਦੋਏ ਇਕ ਹੋਏ ਇਹਨਾਂ ਦੀ ਏਕਤਾ ਸਾਡਾ ਟਾਰਗੇਟ ਇਹਨਾਂ ਦੀ ਏਕਤਾ ਕਰਾਉਣਾ ਹੀ ਸਾਡਾ ਟਾਰਗੇਟ ਦਾ ਇਕ ਹੋ ਕੇ ਰਹਿਣਾ ਰਹਿ ਜਾਣਾ ਹੀ ਇਕ ਹੋ ਜਾਣਾ ਹੀ ਸਫਲਤਾ ਦੀ ਕੁੰਜੀ ਸਫਲਤਾ ਉਹੀ ਟਾਰਗੇਟ ਹੈ ਸਰ ਇਹ ਵੇਸ਼ਾ ਵਾਸਤੇ ਫਿੱਕ ਹੋ ਜਾ ਜਾਂ ਹੋ ਗਏ ਇੱਕ ਹੋ ਗਿਆ ਉਹ ਇੱਕ ਦੀ ਗੱਲ ਗੁਰਬਾਣੀ ਦੇ ਇਹ ਕਾ ਜਿਹੜਾ ਲਿਖਿਆ ਹੈ ਉਹ ਉਹ ਫਿਰ ਇੱਕ ਕੀ ਹੋਊਗਾ ਉਹ ਇੱਕ ਦੇ ਵਿੱਚ ਗੁਣ ਉਹ ਸਾਰੀ ਗੁਣ ਨਿਰਮਕਾਰ ਨਿਰਵੈਰ ਤੇ ਸਾਰੀਆਂ ਪ੍ਰਾਪਰਟੀ ਆ ਜਦੋਂ ਇੱਕ ਹੋ ਜੂ ਉਹ ਇੱਕ ਉਹ ਪ੍ਰਾਪਰਟੀਆਂ ਪਹਿਲਾਂ ਹੋਣਗੀਆਂ ਇੱਕ ਬਾਅਦ ਹੋਊਗਾ ਕੁਕਿਆ ਉਹ ਗੁਣਮਨ ਦੇ ਵਿੱਚ ਨਹੀਂ ਬੈਰ ਵਿਰੋਧ ਮੰਨ ਕਰਦਾ ਇਹ ਨਹੀਂ ਹਟਦਾ ਬੈਰ ਜਦੋਂ ਨਿਰਵੈਰਾ ਤਾਂ ਇੱਕ ਹੋ ਦਾ ਸੁਭਾਅ ਉਹ ਇੱਕ ਸੁਭਾਅ ਇੱਕ ਆ ਇੱਕ ਨਿਰਵੈਰਾ ਇੱਕ ਬੈਰ ਵਿਰੋਧ ਇੱਕ ਬੈਰ ਵਿਰੋਧ ਵਾਲਾ ਕਿਹਨੇ ਬੈਰ ਇਹ ਤਾਂ ਨਿਰਵੈਰੇ ਨਾਲ ਬਾਹਰ ਨਹੀਂ ਜਾਂਦਾ ਮਨ ਕੀਹਦੇ ਨੇ ਚੇਤਨ ਨਾਲ ਬਾਹਰ ਦੀ ਗੱਲ ਨਹੀਂ ਇਹ ਵੀ ਅੰਦਰਲੀ ਉਹ ਗੱਲ ਹੈ ਪਹਿਲਾਂ ਤਾਂ ਚੇਤਨ ਵਾਲੇ ਵੈਰ ਨਚਾਉਂਦਾ ਹੈ ਗੁਰਬਾਰੇ ਨਾਲ ਹੈ ਉਹਦੀਉ ਨਹੀਂ ਮੰਦਾ ਉਹਦੀ ਤਰੀ ਹਿੱਟੇ ਰਹਿਣ ਦਿੰਦਾ ਬੈਠ ਜਿਨ ਗੁਰਮੁਖ ਹਰ ਅਰਾਧਿਆ ਤੈਨ ਸੰਤ ਜਨਾ જયਕਾਰ ਜਿਨੇ ਗੁਰਮੁਖ ਗੁਰਮੁਖੀ ਜਿਨੇ ਗੁਰਮੁਖੀ ਹਰ ਅਰਾਧਿਆ ਜਿਨੇ ਗੁਰਮੁਖੀ ਹਰ ਅਰਾਧੇ ਤਨ ਸੋਹਣੇ ਹੋਰ ਆਦੇ ਆ ਬਾਬਾ ਜੀਨਨ ਗੁਰਮਖਾਨੇ ਗੁਰਮਖਣ ਹੁੰਦਾ ਹੈ ਗੁਰਮਖ ਉਹ ਹੈ ਜਿਹੜਾ ਸੰਤੋਖੀ ਹੈ ਸਭ ਤੋਂ ਸਤੋਖੀ ਗੁਰਮਖ ਜਿਹਦਾ ਕਮਨ ਕਰੇ ਤਾਂ ਹੋ ਗਿਆ ਉਹਨੂੰ ਗੱਲਾਂ ਨਹੀਂ ਗੱਲ ਦੱਸ ਬੇ ਤਾਂ ਜਾਣੋ ਤੇ ਜਨਪਦਾਰੀ ਵਾਲ ਰਹੇਗੀ ਨਾਮ ਤਾਂ ਵਿਜੀ ਬੈਠਾ ਹੈ ਉਹ ਜਮਦਾ ਨਹੀਂ ਨਾਨਕ ਉਹ ਤੇ ਜਾ ਕੇ ਛੱਟੇ ਬਾੜ ਦੂਗਾ ਛੱਟੇ ਬਾੜ ਦੂਗਾ ਤਾਂ ਤੇ ਗੱਲ ਹੋ ਉੱਥੇ ਜਾ ਕੇ ਐਸੀ ਅਵਸਥਾ ਤੋਂ ਪਹਿਲਾਂ ਵਾਲੇ ਦਾ ਨਾਮ ਦਾ ਕੋਈ ਮਤਲਬ ਨਹੀਂ ਨਾਮ ਦਾ ਕੋਈ ਮਤਲਬ ਨਹੀਂ ਸੀ ਨਾਨ ਕੋਈ ਟਾਈਮ ਨਹੀਂ ਸੀ ਵੀਰਾਂ ਦਾ ਬੋਝ ਮਾਰੀ ਜਾਂਦਾ ਟਾਈਮ ਵੇਸਟ ਹੋ ਜਾਂਦਾ ਇਹ BC ਪੜਾ ਕੇ ਤਿਆਰ ਕਰਦਾ ਮੈਨੂੰ ਕੋ ਟਾਈਮ ਕਿੱਥੇ ਸੀ ਉਹ ਕਹਿੰਦਾ ਇਹੋ ਜੇ ਬੰਦੇ ਕੋਲ ਲਓ ਉਹਨਾਂ ਨੂੰ ਕਰ ਦੋ ਤਾਂ ਕਿ ਛੇਤੀ ਗੱਲ ਫੈਲ ਸਕੇ ਉਹ ਬੰਦੇ ਛੇਤੀ ਸਮਝ ਲੈਣਗੇ ਛੇਤੀ ਸਮਝ ਕੇ ਇੱਥੇ ਇੱਥੇ ਸਾਰੇ ਸਾਰੇ ਅੱਗ ਲਾ ਦੋ ਚਾਰ ਸ਼ਵੇਰੇ ਆਪੇ ਫਿਰ ਤੇਲੀ ਉਹ ਭਾਮਣ ਦਵਾ ਦੇਣਗੇ ਇਕੱਠੇ ਹੋ ਕੇ ਦੁਸ਼ਮਣ ਨੇ ਇੱਕ ਤਾਂ ਉਹ ਅਗਲਾ ਹੀ ਤਾਂ ਦਵਾ ਦੇਣਗੇ ਸਾਰਿਆਂ ਦੇ ਦੂਰ ਦੂਰ ਬੰਬ ਰੱਖ ਕੇ ਚਲਾ ਦੋ ਡਰ ਡਰ ਡਰ ਡਰ ਇਧਰ ਚਲੇ ਆਇਰੋਂ ਇਧਰ ਭਜਣਾ ਉਧਰ ਚਲ ਗਿਆ ਦੂਹੇ ਪਾਸੇ ਸਵੇਰੇ ਦਾੜ-ਦਾੜ ਹੋਣ ਲੱਗੀ ਨਾਲ ਕਿ ਜਵਨ ਦੀ ਚਾਰ ਸਵੇਰੇ ਦਾੜ-ਦਾੜ ਕਰ ਨਹੀਂ ਹੋ ਸੀ ਬੰਦੇ ਹੀ ਨਹੀਂ ਸੀ ਉਹ ਲੋ ਇਹ ਹੋਇਆ ਸੀ ਵੀ ਸ਼ਾਇਦ ਹੁਣੇ ਹੁਣ ਪਿੱਛੇ ਪਿੱਛੇ ਭਗਤਾ ਨੇ ਬੜੇ ਕੀਤਾ ਹੈ ਬੰਦੇ ਹੋਣ ਕਿਥੇ ਆ ਗਿਆ ਮਿਲਿਆ ਤਾਂ ਫਿਰ ਨਾਮ ਕਰਿਆ ਕਿਆ ਅਸਾਂ ਕਬੂਰ ਅੰਧ ਘੋਰ ਅਸਾਂ ਚੋਰ ਰਾਮ ਰਾਮ ਕੋਰ ਰਾਮ ਕੋਰ ਇਹ ਸਬੂਤ ਹੈ ਇਸ ਗੱਲ ਦਾ ਤੇ ਨਰਾਸ਼ਤਾ ਵਿੱਚ ਲੋਕ ਡੰਗਲ ਕੋ ਜੋ ਸੋਚ ਕੇ ਗਿਆ ਸੀ ਉਹ ਗੱਲ ਨਹੀਂ। ਆ ਦਾ ਇੱਕ ਵੀ ਨਹੀਂ ਮਿਲਿਆ। ਤੇ ਅਸੀਂ ਕਈ ਕਰੋੜ ਸਿੱਖ ਬਣਾਤੇ ਕਿਉਂ ਝੂਠ ਅਸਲ 'ਚ ਆਪੇ ਸਿੱਖ ਨਹੀਂ ਹਨ। ਜਿਹੜੇ ਕਹਿੰਦੇ ਨੇ ਸਿੱਖ ਆਪ ਨਹੀਂ ਹਨ ਉਹਨੂੰ ਪਤਾ ਨਹੀਂ ਸਿੱਖੀ ਕੀ ਹੁੰਦੀ। ਦਸਾਂ ਬਾਸ਼ਾ ਨੇ ਸਬੂਤ ਦਿੱਤਾ 240 ਸਾਲ ਤੇ ਬਾਅਦ 230 ਸਾਲ ਲਾ ਲੋ 40 ਦਾ ਸਹੀ 57 ਸਾਲ ਪਹਿਲਾਂ ਗੈਤੀ ਹੋ ਗਏਗਾ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕਹੂ ਨਾ ਦੇਖੇ ਤਾਂ ਪ੍ਰਾਣਪਤੀ ਇਹ ਤਾਂ ਸਾਡੇ ਕੋਲ ਪਈ ਹੈ ਤਾਂ ਪਤੀ ਤੇ ਝੂਠ ਹੈ ਕਿਉਂਕਿ ਸਾਰੇ ਦੇਖ ਰਹੇ ਨੇ ਬੇਇਜ਼ਤ ਪ੍ਰਾਣਪਤੀ ਦੀ ਮਤ ਕਿਸੇ ਕੋਲ ਦੇ ਸੂਭ ਵੀ ਬਹੁਤ ਪ੍ਰਾਣਪਤੀ ਹੈ ਕੌਣ ਉਹੀ ਜੇ ਤੋ ਜੇ ਤੋ ਬ੍ਰਹਮ ਬ੍ਰਹਮ ਗਿਆਨੀ ਨਹੀਂ ਹੈ ਕੋਈ ਤਤ ਵੇਤਾ ਨਹੀਂ ਹੈ ਕੋਈ ਇਹ ਤਿਸਕੇ ਦਾ ਨਹੀਂ ਹੈ ਕੋਈ ਇਸ ਰਸਤੇ ਜਾਣ ਵਾਲਾ ਨਹੀਂ ਹੈ ਇੱਥੇ ਤਾਂ ਕਬੀਰ ਕੱਲਾ ਹੀ ਛੜਿਆ ਹੋਇਆ ਚੜ ਰਹੇ ਹਾਂ ਕਬੀਰ ਕਬੀਰ ਵੀ ਕਹਿੰਦਾ ਵਾ ਕੱਲਾ ਛੜਨਾ ਮੇਰੇ ਮਨ ਕੋਈ ਜਾ ਰਿਹਾ ਤੇ ਪੰਡਤਾਂ ਨੂੰ ਗੱਲ ਕੱਢ ਰਿਹਾ ਦੋ ਤੋ ਪੜਦੇ ਬੁਰਾਈ ਕਰਨ ਵਾਲੇ ਬਹੁਤ ਨੇ ਐਜੀਪੀਸੀ ਦੀ ਬੁਰਾਈ ਕਰਨ ਵਾਲੇ ਬਹੁਤ ਨੇ ਪਰ ਜੇ ਮਾਤਾ ਹੋਣੀ ਹੈ ਮੂੰਹ ਉਹਨਾਂ ਨੇ ਵੀ ਵੋਟ ਦੇਣਾ ਇਹ ਤਾਂ ਮੂੰਹ ਨਹੀਂ ਕਰ ਰਹਾ ਜਿਹੜੇ ਐਜੀਪੀਸੀ ਦੀ ਬੁਰਾਈ ਬੁਰੀ ਹੈ ਆਓ ਫਿਰ ਆਰਾਏ ਚਲੋ ਚਲੋ ਉਹ ਦੂਏ ਬੁਰਾ ਕਹਿਲੇ ਜਾਣਦੇ ਨੇ बुरा गाना दस वाला जिन्न मर्ज़ी के ही जाओ गल है अपने दरबान में से नीमा करते थोड़ी गलती कही साथ तू इन्हें बुरा करने कह तूया नहीं बुरा ये करते है गल कोई पड़ी तेरी बुराया ढूंढण में चला तो कुछ और पढ़ाई पढ़ाई थी असि तो होरे बड़ी फिरदे ਕਟੜ ਦੋੜੀ ਵਾਲੀ ਵਿਚਾਰ ਕਰ ਰਿਹਾ ਕਟੜ ਦੋੜੀ ਵਾਲੀ ਦਾ ਇੱਕ ਸ਼ਬਦ ਵੀ ਨਹੀਂ ਹੈ ਨਾ ਇਹਨਾਂ ਦੇ ਖਾਲੇ ਜਿ ਬਸਿਆ ਆ ਹਾ ਪਰਲੇ ਨੀ ਪਤਾ ਨਹੀਂ ਬੋਲਾਈ ਤਾਂ ਤੁਸੀਂ ਵੀ ਨਹੀਂ ਬੰਦੇ ਉਹ ਵੀ ਨਹੀਂ ਬੰਦੇ ਚੁੱਪ ਰਹਿਓ ਤੁਸੀਂ ਉਹਨਾਂ ਦੇ ਬਾਅਦ ਬੋਲਾਂਗੇ ਮਨ ਨਹੀਂ ਤੁਸੀਂ ਵੀ ਨਹੀਂ ਬਣਨੀ ਬੋਲੇ ਇਹ ਤੁਹਾਨੂੰ ਗੋਲਕ ਮਿਲ ਗਈ ਜਿੰਨਾ ਚਿਰ ਕਾਮਦਾ ਦਾ ਰਾਜ ਇਹਨਾਂ ਦੂਆ ਬੜਾ ਰੌਲਾ ਪਾਉਂਦੇ ਤੇ ਪਰ ਦੂਆ ਨੇ ਗੱਲ ਤਾਂ ਗੋਲਕ ਦੀ ਇਹ ਸਿੱਖੀ ਦੀ ਗੱਲ ਹੋਵੇ ਸਿੱਖੀ ਤਾਂ ਇੰਡੀਪੈਂਡੈਂਟ ਤੁਸੀਂ ਆਪ ਬੰਨੋ ਤੁਸੀਂ ਕੀ ਲੜੇਗੇ ਅਸੀਂ ਕੀ ਲੜੇਗੇ ਤੁਹਾਨੂੰ ਮਿਲਣ ਕਿਸੇ ਦੇ ਬੰਨੇ ਨਾ ਮੰਨਣ ਤੇ ਸਾਨੂੰ ਦਾ ਕੀ ਲਾਭ ਹੋਣਾ ਕੋਈ ਬੈਨੀਫਿਟ ਹੋਣਾ ਆਪਣੇ ਨਾਮ ਨਾਲ ਆਪਣੇ ਨਾਮ ਨਾਲ ਸਾਨੂੰ ਹੁਣ ਆਪਣੇ ਨਾਮ ਨਾਲ ਬੈਨੀਫਿਟ ਹੋਣਾ ਤੇਰੀ ਜਲਾੜਾੜੀ ਕਿਹੜੀ ਗੱਲ ਹੈ ਤੂੰ ਇਹਨੂੰ ਬੁਰਾ ਬਲਾਕਾ ਹੈ ਕਿਹੜੀ ਗੱਲ ਹਾਂ ਇੱਕ ਕੱਲ ਚ ਬੁਰਾ ਇਹ ਤੁਹਾਨੂੰ ਪਤਾ ਹੈ ਜਿਹੜੇ ਭਲੇਖੇ ਪਏ ਨੇ ਦੱਸ ਦੋ ਵੀ ਭਾਈ ਆਏ ਭਲੇਖੇ ਦੇ ਜੇ ਕਿਸੇ ਨੇ ਦੋਸਤ ਕਰਨੇ ਗੱਲੋਂ ਨਹੀਂ ਕਰਦੇ ਇਹ ਤਾਂ ਉਹ ਹੀ ਗੱਲ ਇਹ ਤੋਂ ਗੁਰਬਾਣੀ ਦੇ ਆਪਾਂ ਗੁਰੂ ਇੱਕ ਹੈ ਪਰ ਇਥੋਂ ਕੁ ਦੇਖੇ ਪਏ ਨੇ ਅਰਥਾ ਦੇ ਜੇ ਦਰਸਤ ਕਰੋਗੇ ਕਰ ਲੋਗੇ ਤਾਂ ਠੀਕ ਹੈ ਨਹੀਂ ਕਰਨਾ ਜੇ ਤੁਹਾਨੂੰ ਜਾਣ ਹੋਰ ਗੱਲਾਂ ਸ਼ੈਤਾਨ ਨਾਲ ਕਨੇ ਰਾਤ ਦੱਸ ਦਿੱਤਾ ਨਾਲ ਕਦੇ ਅਸੂ ਯਾਤਾ ਹੈ ਹੋਰ ਗੱਲਾਂ ਸ਼ੈਤਾਨ ਨੇ ਸ਼ੈਤਾਨੀਆਂ ਨੇ ਪਰ ਇਹ ਨਹੀਂ ਕਿਹਾ ਵੀ ਤੁਸੀਂ ਕਰੋ ਜਾਂ ਕਰੋ ਖੈਦਾਂ ਬੜਨਾ ਦਾ ਤੁਹਾਡੀ ਮਰਜ਼ੀ ਇਨਸਾਨ ਬਣਦੇ ਤਾ ਤੁਹਾਡੀ ਮਰਜ਼ੀ ਹਾਂਜੀ ਜਿਨੇ ਗੁਰਮੁਖੀ ਹਰ ਅਰਾਧਿਆ ਤਿੰਨ ਸੰਤ ਜਨਾ ਜੈਕਾਰ ਤਿੰਨ ਸੰਤ ਜਨਾ ਜੈਕਾਰ ਉਹੀ ਸੰਤ ਜਨ ਉਹਨਾਂ ਨੂੰ ਸ਼ਾਂਤ ਹੋ ਜਾਂਦੇ ਨੇ ਉਹਨਾਂ ਦੀ ਤ੍ਰਿਸ਼ਨਾ ਕੋਪ ਖੁੱਤਰ ਜਾਂਦੀ ਹੈ ਬੁੱਝ ਜਾਂਦੀ ਹੈ ਜਿਹੜੇ ਸੰਤ ਜਨ ਕਿਹਾ ਹੋਇਆ ਜਿਹੜਾ ਜਾਣ ਉਹ ਸੰਤ ਵਰਗੀ ਅਵਸਥਾ ਹੋ ਗਈ ਉਹਦੇ ਅੰਦਰ ਜਿਨੀ ਸੰਤ ਦੇ ਅੰਦਰ ਸ਼ਾਂਤੀ ਸੀ ਜਦੋਂ ਜੀਵ ਅੰਦਰ ਸੰਤ ਬਣ ਜਾਂਦਾ ਸੰਤ ਵਰਗ ਜਨ ਸੰਤ ਦੇ ਵਰਗ ਹੈ ਉਹਦੀ ਅਵਸਥਾ ਅੰਦਰਲੀ ਸੰਤੁਰਕੀ ਹੈ ਦਸਵਾ ਸੰਤੁਰਕ ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਪਰ ਉਸ ਵੇਲੇ ਪੂਰਾ ਸਤਪੁਰੂ ਜੀ ਪੂਰਾ ਗਿਆਨ ਗਿਆਨ ਗੁਰੂ ਹੈ ਉਹ ਦੇਖੋ ਉਸ ਕਹੇ ਹੋਏ ਜੋ ਦੱਸਿਆ ਹੈ ਮਾਰਗ ਹੈ ਦੱਸਿਆ ਹੋਇਆ ਵਿਧੀ ਹੈ ਜਿ ਕਿ ਉਹ ਦੱਸਤਾ ਹੋਇਆ ਗਿਆਨ ਹੈ ਜਿਹੜਾ ਗਿਆਨ ਗੁਰੂ ਹੈ ਜਿਹੜਾ ਇਹ ਗੁਰੂ ਤਾਂ ਸੱਚਾ ਕਹਦਾ ਉਹ ਤਾਂ ਹੈ ਇੱਥੇ ਗਿਆਨ ਗੁਰੂ ਦੀ ਗੱਲ ਕਿ ਉਸ ਗਿਆਨ ਦੀ ਕੋਈ ਨਿੰਦਿਆ ਕਰੇ ਜਿਵੇਂ ਦਾਸ ਨੂੰ ਪੁਰਾ ਹੀ ਕਹਿ ਲਾ ਦੇ। ਕਹ ਕੁ ਵੀ ਇਹ ਤੋ ਕੁੱਤਾ ਕਹਿਣ ਲੱਗੇ ਆ ਹੋਰ ਕੁਝ ਕਹਿਣ ਲੱਗੇ। ਦਾ ਅਰਥ ਗਿਆਨ ਨਹੀਂ ਲਵੋਗੇ ਤੇ ਗਿਆਨ ਗੁਰੂ ਨਹੀਂ ਵੜਾਓਗੇ ਫਿਰ ਗੱਲ ਨਹੀਂ ਬਣਦੀ। ਇੱਥੇ ਕੋਈ ਬੱਪੜਾ ਘੂਸਾ ਬਹੁਤ ਰੌਣਾ ਉੱਥੇ। ਸੰਸਾਰ ਜਿੱਤੇ ਗੁਰੂ ਤੁਸੀਂ ਕਦੇ ਵੀ ਦੱਸਣਾ ਤਾਂ ਗਿਆਨ ਗੁਰੂ ਚੱਲਣਾ। ਇਥੇ ਜਿਹੜੇ ਗੁਰੂ ਨੇ ਗਿਆਨ ਗੁਰੂ ਆਤਮਿਕ ਉਪਦੇਸ਼ ਆਤਮਿਕ ਉਪਦੇਸ਼ ਕਰਨ ਵਾਲਾ ਜਿਹੜਾ ਗਿਆਨ ਹੈ ਗੁਰੂ ਉਹ ਕਹਦੇ ਨੇ ਜਿਹੜਾ ਸਭ ਤੋਂ ਜ਼ਿਆਦਾ ਚਾਨਣ ਕਰਨ ਵਾਲਾ ਹੋਵੇ ਜਿਹਦੇ ਬਰਾਬਰ ਕੋਈ ਚਾਨਣ ਨਹੀਂ ਕਰ ਸਕਦਾ ਜਿਵੇਂ ਸੂਰਜ ਸੂਰਜ ਤੋਂ ਬਰਾਬਰ ਕੋਈ ਜ਼ਿਆਦਾ ਚਾਨਣ ਕਰਨ ਵਾਲੀ ਸਾਡੇ ਕੋਲ ਕੋਈ ਚੀਜ਼ ਨਹੀਂ ਇੱਥੇ ਇਸ ਕਰਕੇ ਗੁਰੂ ਨੂੰ ਸੂਰਜ ਨਾਲ ਤੁਲਨਾ ਕਰਦੇ। ਸੁਰੂਤ ਦਾ ਨਾ ਕਰਦੇ। ਇਸ ਕਰਕੇ ਜਿਹੜਾ ਪ੍ਰਮਾਣ ਗਿਆਨ ਆ ਤੁਹਾਨੂੰ ਕਿਹਾ ਹੈ ਇਹਦੇ ਉੱਪਰ ਕਿਸੇ ਚੈਨਲ ਹੋਰ ਕੋਈ ਨਹੀਂ। ਗੁਰਬਾਣੀ ਦਾ ਗਿਆਨ ਤਾਂ ਉੱਪਰ ਚੈਨਲ ਕੋਈ ਨਹੀਂ ਕਹ ਦੋ। ਇਹ ਤਾਂ ਵੱਡਾ ਚੈਨਲ ਤਾਂ ਹੋ ਨਹੀਂ ਸਕਦਾ ਕਿ ਇਸ ਕਰਕੇ ਇਹ ਜੋ ਗੁਰਬਾਣੀ ਦਾ ਗਿਆਨ ਹੈ ਗੁਰੂ ਦਾ ਗਿਆਨ ਗੁਰੂ ਆਤਮਾ ਨੂੰ ਆਤਮਾ ਦਾ ਜਿਹੜਾ ਆਤਮਾਵਾਰੇ ਗਿਆਨ ਕਰੋਣ ਵਾਲਾ ਜਿਹੜਾ ਪ੍ਰਦੇਸ਼ ਹੈ ਉਹਨੂੰ ਗੁਰੂ ਕਹਿੰਦੇ ਸਾਰੇ ਦੇ ਉੱਤੇ ਹਕਮ ਚਲਾਉਂਦਾ ਰੋਹ ਸਾਰਿਆਂ ਨੂੰ ਰਾਹ ਦਖੋਦਾ ਇਹ ਕਹਿੰਦਾ ਸਾਰਿਆਂ ਨੂੰ ਰਾਹ ਦਖੋੜ ਵਾਲਾ ਗੁਰੂ ਹੈ ਜਿੱਥੇ-ਜਿੱਥੇ ਜਿੱਦਿਆ ਮੱਤਾ ਚੰਦ ਨੇਰਾ ਹੈ ਉੱਥੇ-ਉੱਥੇ ਪਰਮਾਨੰਚਾਂ ਨੂੰ ਵੀ ਨਾ ਜੋਗੀਆਂ ਨੂੰ ਵੀ ਸੜਿਆਸੀ ਨੂੰ ਵੀ ਸਾਰਿਆਂ ਨੂੰ ਦੱਸਦੀ ਹੈ ਇਸਲਾਮ ਵਾਲਿਆਂ ਨੂੰ ਵੀ ਬਸ ਇਸ ਕਰਕੇ ਗੁਰੂ ਹੈ ਸਾਰਿਆਂ ਨੂੰ ਇਚਾਰਾ ਦਿੱਤਾ ਵੀ ਇੱਥੋਂ ਪਾਈਂ ਨਿਕਲ ਜਾਓ ਇੱਥੇ ਫਸ ਗਏ ਤੁਸੀਂ ਤੇ ਇੱਥੇ ਤੁਹਾਡੀ ਗੱਡੀ ਅੜ ਗਈ ਇੱਥੇ ਫਸੀ ਹੋਈ ਐ ਨਹੀਂ ਗੋੜੀ ਦੀ ਮਰਜ਼ੀ ਇੰਡੀਕੇਟਰ ਲੱਗਿਆ ਹੋਇਆ ਉਹਨੇ ਦਿਖਿਆ ਹੋਇਆ ਲੱਗਿਆ ਹੋਇਆ ਪਰ ਕੋਈ ਜਹਾ ਜਾਂਦਾ ਨਹੀਂ ਜਿਉਂ ਨਾ ਤੋੜਿਆ ਕਿਸੇ ਨੂੰ ਉੱਥੇ ਆੜੀ ਰੱਖਣੀ ਆਪਣੀ ਉਹਦੀ ਮਰਜ਼ੀ ਹੈ ਦੱਸ ਦਿੱਤਾ ਵੀ ਇੱਥੋਂ ਬਾਹਰ ਨਿਕਲ ਸਕਦੇ ਹੋ ਤੁਸੀਂ ਇਹੀ ਮਤ ਤੁਹਾਡੀ ਮਤ ਨਾ ਬਦਲੋ ਬਤ ਬਦਲੋ ਨਹੀਂ ਨਾਨਕ ਨੇ ਕਿਹਾ ਅਸੀਂ ਅਸਾਂ ਚ ਮਤ ਬਦਲਦੀ ਗੱਲ ਕਰਦੇ ਕਿਉਂ ਬਤ ਬਦਲੀ ਅਸੀਂ ਕਿਸੇ ਨੂੰ ਇਸਲਾਮ ਧਰਮ ਵਾਲਾ ਮੁਸਲਮਾਨ ਮੁਸਲਮਾਨ ਹੋ ਕੇ ਵੀ ਸੱਚਖੰਡ ਜਾ ਸਕਦਾ ਜੇ ਤੁਹਾਡੀ ਕਮੀਆਂ ਦੂਰ ਕਰਾ ਦੋ ਦੇਵਾ ਜੀ ਮਨ ਮੋਲਾਣਾ ਹਕਾਲ ਇਕਰਮ ਦੀਨ ਸੁਨਤੇ ਸਵੇਰ ਰੋਜ਼ਾ ਹੋ ਮੁਸਲਮਾਨ ਜਿੱਤ ਦੁਆਰੇ ਭਰੇ ਤੇ ਜੀਵਨ ਵਾਲਾ ਸਵਾਲ ਵਿਚਾਰ ਧਾਰਾ ਦਾ ਹੈ ਵਿਚਾਰ ਧਾਰਾ ਦੀ ਲੜਾਈ ਨੇ ਭੇਜਦੀਆਂ ਨੇ ਆੜੜ੍ਹ ਵਰਦੀਆਂ ਨੇ ਹਮੇਸ਼ਾ ਆੜੜ੍ਹ ਜਾਂਦੇ ਲੜਦੇ ਨਾ ਕੋਈ ਰੋਟਾ ਹੁੰਦੀ ਉਹ ਤੇ ਪੇਖ ਦਾ ਕੋਈ ਰੋਲ ਨਹੀਂ ਆਪੇ ਇੱਕ ਕੋਈ ਦਾੜੀਆਂ ਘਾਤੇ ਬੜਦੇ ਨੇ ਦੁਨੀਆ ਪੱਕਾ ਘਾਤੇ ਲਾਉਂਦੇ ਨੇ ਨਹੀਂ ਅਸਲੀ ਵੀ ਵਿੱਚ ਆ ਗਏ ਸਾਰੇ ਵਿੱਚ ਆ ਗਏ ਸਿੱਖ ਆ ਗਏ ਮੁਸਲਮਾਨ ਵੀ ਆ ਗਏ ਸਾਰੇ ਧਰਮ ਆ ਗਏ ਪੇਖ ਇੱਕੋ ਹੁੰਦੇ ਹੋਏ ਵੀ ਲੜਾਈ ਹੈ ਵਿਚਾਰਤਾ ਰਹਤ ਵੀ ਲੜਾਈ ਵਿਚਾਰਤਾ ਰਹੀ ਲੜਾਈ ਪੇਖ ਦੀ ਕਦੇ ਅਹੜਾ ਹੋਲੇ ਭਜਨ ਨੇ ਆਪਣੇ ਮੋਢੇ ਤੇ ਥੱਪੜ ਮਾਰਤਾ ਨਾ ਆਪਣੇ ਦੀ ਮਾਰ ਆਪਣੇ ਦੇ ਨਿਕਲਦਾ ਸੀ ਆਪਣੇ ਦੇ ਖਿਲਾਫ ਖੇਡ ਰਹਿਣ ਨਾਲ ਆਪਣੇ ਦੇ ਖਿਲਾਫ ਉਹਦੇ ਵਾਰ ਤਾਂ ਹੁਣ ਤਾਂ ਬੁਰਾ ਲੱਗਦਾ ਹੁਣ ਕੱਲੋ ਜੰਨਾ ਲੱਗਦਾ ਸੀ ਪਹਿਲਾਂ ਉਹ ਨਾਲ ਸੀ ਜਦੋਂ ਉਹ ਮੇਰੇ ਨਾਲ ਖੇਡਦਾ ਸੀ ਤਾਂ ਇਹ ਦ ਸੰਸਾਰੀ ਦ੍ਰਿਸ਼ਟੀਕੋਣ ਸੰਸਾਰੀ ਦ੍ਰਿਸ਼ਟੀਕੋਣ ਦੇ ਵਿੱਚ ਵਿਚਾਰ ਧਾਰਾ ਦੇਖੋ ਬੁੱਧੂ ਜੀ ਸਾਡੇ ਨਾਲ ਹੱਕ ਚ ਲੜਨਗੇ ਗੈਰ ਦੇ ਹਲਣ ਆ ਆਪਣੀ ਡਰੈਸ 'ਚ ਗਿਆ ਉਹ ਜੈਸਾ ਆਪਣੀ ਗਿਆ ਜਿਹੜੇ ਘਰ ਪਠਾਨ ਪਾੜੇ ਨੇ ਉਹ ਖਿਲਾਫ ਲੜਦੇ ਨੇ ਇੱਕ ਉਦਾਸੀ ਹੈ ਇੱਕ ਬਚ ਗਿਆ ਜਾਇ ਡਰੈਸ ਉਹਦੀ ਹੈ ਹੱਕ ਚ ਲੜਦਾ ਜੈਸਾ ਜਦੋਂ ਗੋਸਵਧਨੀ ਅੰਗਰੇਜ਼ਾਂ ਦੇ ਹੱਕਾ ਦੇ ਵਿੱਚ ਆ ਪਟਿਆਲੇ ਦੀ ਫੌਜਾਂ ਲੜਦੀਆਂ ਨੇ ਉਦਕੀ ਦੀ ਜੰਗ 'ਚ ਨਾਬੇੜ ਵਾਲੇ ਦੀਆਂ ਸਾਰੀਆਂ ਧੱਲੀਆਂ ਉਹਦੇ ਸਿੰਘ ਦੀ ਫੌਜਾਂ ਲੜਦੀਆਂ ਨੇ ਸਿੱਖਾਂ ਸਿੱਖਾਂ ਦੇ ਖਿਲਾਫ ਡਰਦੇ ਨੇ ਉਦਕੀ ਦੀ ਜੰਗ 'ਚ ਤਾਂ ਹੀ ਤਾਂ ਪਟਿਆਲੇ ਵਾਲਿਆਂ ਨੂੰ ਤੋਕ ਕਰਾਤੀ ਜਬੁੱਢਾ ਦਾਲਾ ਅਵੰਗਰਦਨ ਤੇ ਜਾਤੇ ਨੇ ਉਹ ਕੁਦਰਤੀ ਇਧਰ ਆਉਂਦੇ ਸੀ ਮੋਤਕੀ ਦੀ ਜੰਗ ਚ ਉਹਨੇ ਕਿਹਾ ਮੇਰੇ ਪਟਿਆੜੇ ਦੇ ਚੜਾਈ ਕਰਨਾ ਹੁੰਦੇ ਨੇ ਖਲਾਅ ਹਟੇ ਉਹ ਸਿੱਧੇ ਚਲੇ ਇੱਕ ਬਾਬਾ ਖਲਾ ਦਾ ਸੀ ਉਹਨੇ ਤੋਕ ਤੇ ਮੂੰਹ ਗੜਬਾ ਦੇ ਦਿੱਤਾ ਤੋਕ ਜੀ ਫਿਰ ਉਹਨੇ ਇੱਕ ਸੀ ਕੋ ਪਟੜ ਹੋ ਗਿਆ ਕੇ ਉਹ ਉਤੇ ਸੀਧ ਹੋਇਆ ਉਹ ਫੈਵੋਡਾਮੀਟਰ ਉਤੇ ਲਾਇਆ ਫਿਰ ਮੇਰਾ ਹੁਣ ਚੰਡੀਗੜ੍ਹ ਕੋਲ ਫਿਰ ਹਨੂਮਾਨ ਸਿੰਘ ਜੀ ਉਥੇ ਉਹ 2000 ਫਿਰ ਇਹਨਾਂ ਨੇ ਪਟਿਆਲੇ ਦਾ ਪਾਣੀ ਨਹੀਂ ਪੀਤਾ ਕਹਿਣ ਦਾ ਮਤਲਬ ਹੈ ਤਾਂ ਉਹ ਵੀ ਸਿੱਖ ਸੀ ਉਹ ਵੀ ਸਿੱਖ ਸੀ ਸਿਰਫ ਕੋਈ ਨਹੀਂ ਸੀ ਕਿ ਸਿੱਖ ਦੇ ਸੀ ਕੋਈ ਸੀ ਸਿਕੰਦਰ ਜਿੱਕਰ ਲੜਾਈ ਉਹਨਾਂ ਦੀ ਲੜਾਈ ਕਰਦੀ ਸੀ ਸਿੱਖ ਦੀ ਲੜਾਈ ਸਿਰਫ ਕਬੀਰ ਕਹਿੰਦਾ ਹਮਰਾ ਝਗੜਾ ਰਹਾ ਨ ਕੋ ਪੰਡਤ ਮੁੱਲਾ ਛਾੜ ਝਗੜਾ ਪੰਡਤ ਮੁੱਲਾ ਦਾ ਹੋ ਸਕਦਾ ਸਿੱਖ ਦਾ ਨਹੀਂ ਹੋ ਸਕਦਾ ਨਹੀਂ ਇਹ ਭਗਤੀ ਨੂੰ ਕੱਢ ਦੇ ਗੁਰੂ ਜੀ ਸਾਹਿਬ ਅਧਿਕੜ ਦਿਓ ਫਿਰ ਹਮਰਾ ਝਗੜਾ ਰਹਿਣ ਕੋ ਪੰਡਤ ਮੁੱਲਾ ਛਾੜ ਦੇ ਪੰਡਤ ਅਰ ਮੁੱਲਾ ਦੇ ਝਗੜੇ ਕਰਾਇਆ ਹ ਜੀ ਸੋ ਪੜਦਾ ਚੱਕਰ ਚ ਆ ਗਿਆ ਇਹ ਅੰਗਰੇਜ਼ ਬੋਲਣ ਦੇ ਚੱਕਰ ਸੀਗੇ ਡਿਆਲੇ ਵਾਲੇ ਚਾਹੁੰਦਾ ਸੀ ਸਾਰੇ ਨੂੰ ਖਤਮ ਕਰ ਦੇ ਉਹ ਤਾਂ ਪੱਲੀਆਂ ਦਾ ਮਸਲਾ ਹੱਲ ਕਰ ਗਿਆ ਸੀ ਇਹਨਾਂ ਨੂੰ ਵੀ ਚਾਉਦਾ ਸੀ ਹੱਲ ਕਰਨਾ ਇਹਨਾਂ ਦੇਰੇ ਜਾਂਦੇ ਨਾਲ ਸਲਾਹ ਕਰ ਲਈ ਕਾਹਦੋਂ ਕਰ ਜਾਂਦਾ ਤੇ ਇਹਨਾਂ ਸਾਰੇ ਦਲੀਪ ਸਿੰਘ ਵਗੈਰਾ ਸਾਰੇ ਉੱਥੇ ਹੀ ਗਏ ਯੂਰਪ ਚ ਯੂਰਪੀਜਾਂ ਕੋਲ ਗਏ ਨੇ ਅੰਗਰੇਜ਼ਾਂ ਅੰਗਰੇਜ਼ ਹੀ ਇਹਨਾਂ ਨੂੰ ਹਾਈਲਾਈਟ ਕਰ ਰਹੇ ਨੇ ਇਹ ਇਹਨੂੰ ਅੰਗਰੇਜ਼ਾਂ ਦੇ ਉਹ ਡਾਊਟ ਸੀਗੇ ਬਾਅਦ ਵਿੱਚ ਵੱਢ ਗਏ ਸਾਰੇ ਜੋ ਘਰ-ਬਾੜ ਲਏ ਅੰਗਰੇਜ਼ਾਂ ਨੇ ਉਹਨਾਂ ਦਾ ਉੱਥੇ ਰਹਿ ਕੇ ਹਾਲਾਂਕਿ ਇਹ ਡਾਊਟ ਨਹੀਂ ਬੜੇ ਅੰਗਰੇਜ਼ਾਂ ਇਹ ਲੋ ਦੇ ਬਰਾबरी ਸਾੜੀ ਰੂਲ ਲਈ ਹੋਰ ਇਹ ਆਦੀ ਮਦਦ ਨਾਲ ਅੰਗਰੇਜ਼ਾਂ ਦਾ ਰਾਜ ਕੈਮਰੇ ਹੈ ਪਟਿਆਲੇ ਵਗੈਰਾ ਦੀ ਮਦਦ ਨਾਲ ਪਲਾਸੀ ਦੀ ਦੀਆਂ ਲੜਾਈਆਂ ਹੋਈਆਂ ਨੇ 57 ਹੋਏ ਹੈ ਹਾਂਜੀ ਕੋਈ ਨਿੰਦਾ ਕਰੇ ਪੂਰੇ ਸਤਗੁਰੂ ਕੀ ਤਿਸਨੋਂ ਫਿੱਟ ਕਹੇ ਸਭ ਸੰਸਾਰ ਕੋਈ ਨਿੰਦਾ ਕਰੇ ਪੂਰੇ ਸਤਗੁਰੂ ਕੀ ਇਸ ਨੂੰ ਫਿੱਟ ਫਿੱਟ ਕਹੇ ਸਭ ਸੰਸਾਰ ਇਸ ਨੂੰ ਫਿੱਟ ਫਿੱਟ ਕਹੇ ਸਭ ਸੰਸਾਰ ਪੂਰੇ ਸਤਿਗੁਰੂ ਦੀ ਜਗਤ ਦੰਦਾ ਕਰਦਾ ਅਸਲ ਵਿੱਚ ਪਰਮੇਸ਼ਰ ਦੀ ਦੰਦਾ ਕਰਦਾ ਪਰਮੇਸ਼ਰ ਦਾ ਗਿਆਨ ਦੀ ਦੰਦਾ ਕਰਦਾ ਉਹ ਨਹੀਂ ਚਾਹੁੰਦਾ ਕਿ ਹਾਈਲਾਈਟ ਹੋਵੇ ਬਲਕਿ ਉਹ ਦੀ ਰੋਸ਼ਨੀ ਜੋ ਹਾਈਲਾਈਟ ਹੁੰਦੀ ਹੈ ਰੋਸ਼ਨੀ ਤਾਂ ਉਹਦਾ ਆਪਣਾ ਜਿਹੜਾ ਪ੍ਰਚਾਰਿਆ ਹੋਇਆ ਧਰਮ ਹੈ ਆਪਣਾ ਪ੍ਰਚਾਰ ਆਪਣੀ ਦੁਕਾਨੋਂ ਖਤਮ ਮੰਨਦਾ ਬਸਰ ਜੁਰੂਤ ਲਈ ਫੇ। ਦੂਜੀ ਹਵਤਾ ਖਤਮ ਹੁੰਦੀ ਹੈ ਨਾ ਫਿਰ ਸਗਲ ਮਤਾਂ ਤਕੇਵਲ ਹਰ ਰਾਮ ਜਾਂ ਹਰ ਨਾਮ ਪਰ ਉਠੋੰਦਾ ਹੈ ਸਾਰੀਆਂ ਬੱਤਾਂ ਦਾਦ ਹੁੰਦਾ। ਉਹ ਬੱਤਾਂ ਆਪਣੇ ਉਹਨੂੰ ਬਚਾਉਣ ਵਾਸਤੇ ਆਪਣੀਆਂ ਆਪਣੀਆਂ ਮਤਾਂ ਵਿਚਾਰਧਾਰਾ ਨੂੰ ਬਚਾਉਣ ਵਾਸਤੇ ਉਹ ਇਹਦਾ ਵਿਰੋਧ ਕਰ। ਇਹਦੇ ਚ ਡਿਫੈਕਟ ਪਾ ਕੇ ਇਹਦੇ ਅਰਥ ਬਦਲ ਕੇ ਇਹਦੇ ਨਾਲ ਕੋਈ ਝੂਠ ਸਾਕੀਰ ਜੋੜ ਕੇ ਆਪ ਕੁਝ ਵੀ ਕਰਕੇ ਇਹ ਨੂੰ ਹੀ ਇਹਦੇ ਅਰਥ ਬਦਲ ਕੇ ਆਪਣੇ ਨਾਲ ਬੁਲਾ ਲੈਂਦਾ ਅਸੀਂ ਵੀ ਇਹ ਵੀ ਬਾਣੀ ਵੀ ਇਹੀ ਕਹਿੰਦੀ ਅਸੀਂ ਵੀ ਇਹੀ ਕਰਦੇ ਵੀ ਐਵੇਂ ਕਹਿੰਦੀ ਆ ਜੀ ਬਾਣੀ ਅਸੀਂ ਵੀ ਇਦਾਂ ਹੀ ਕਰਦੇ ਆ ਦੇਖੋ ਅਸੀਂ ਵੀ ਨਾਮ ਜਪਦੇ ਨਾਮ ਜਪਣ ਕਹਿੰਦੀ ਹੈ ਬਾਣੀ ਪਰ ਨਾਮ ਕੀ ਹੁੰਦਾ ਹੈ ਇਹਦੋਂ ਨਹੀਂ ਜਾਂਦੇ ਗੁਰਬਾਣੀ ਕਿਹੜੇ ਰੱਬ ਦੀ ਗੱਲ ਕਰਦੀ ਹੈ ਤੁਸੀਂ ਕਿਹੜਾ ਜਪਦੇ ਜਰੂਰ ਜਿਹੜਾ ਕਹਿੰਦਾ ਸੀ ਅਲੱ ਦਾਮਲੀ ਜਪੜਾ ਦਰਸ਼ਨ ਸਿਓ ਨਾਮ ਹੋਰ ਕਿਵੇਂ ਤੇ ਬਿਲ ਮੈਂ ਕਿਹਾ ਜਦੋਂ ਦਸ ਪਾਸ਼ਾ ਨੇ ਕਹਿੰਸੀ ਨਵਸਤੰਗ ਨਰਨਾਮੇ ਸਮਝ ਲੈਣਾ ਚਾਹੀਦਾ ਸੀ ਹੈ ਕਿ ਉਹਦਾ ਕੋਈ ਦੋ ਨਹੀਂ ਹੁੰਦਾ ਤੇਰੇ ਭਾਬੇ ਨੇ ਰੱਖਿਆ ਸੀ ਤਾਂ ਨਾ ਜਮੇ ਅ ਜੀ ਹੁੰਦੇ ਸਾਹਮਣੇ ਇਹਦਾ ਜਮਦਾ ਉਹ ਨੋ ਰੱਖੀਦਾ ਹੁੰਦਾ ਲੋ ਉਹ ਤਾਂ ਰੱਖਿਆ ਕਿਨੇ ਸੀ ਨਵੀਂ ਚੀਜ਼ ਕੋਈ ਬਣਾਈ ਲਿਓ ਨਾ ਨੋ ਰੱਖੀਦਾ ਕੋਈ ਜਮਦਾ ਬੱਚਾ ਨਾ ਹੋਦਾ ਨੋ ਰੱਖੀਦਾ ਜੋਤ ਦਾ ਕੋਈ ਨੋ ਅੰਗਰੇਜ਼ ਸੋਲ ਕਹਿੰਦੇ ਨੇ ਉਹਨੂੰ ਕਿਸੇ ਚੀਜ਼ ਦਾ ਕੋਈ ਨੋ ਨਹੀਂ ਸੰਸਾਰ ਚ ਕਿਸੇ ਚੀਜ਼ ਦਾ ਮੈਨੂੰ ਦੱਸੋ ਵੀਰਾਂ ਨੂੰ ਪਾਣੀ ਨੂੰ ਤੁਸੀਂ ਪਾਣੀ ਕਹਿੰਦੇ ਹੋ ਵਾਟਰ ਕਹਿੰਦੇ ਦੱਸੋ ਇਹਦਾ ਨੋ ਵਾਟਰ ਪਾਣੀ ਹੈ ਇਹਨੂੰ ਫੈਸਲਾ ਕਰ ਲਓ ਉਹ ਗੱਲ ਨਹੀਂ ਆਵੇ ਕੋਈ ਖਸਕਾ ਨਾ ਕੋਈ ਖਸਕਾ ਨਾ ਇਹਦਾ ਨੌਕੀ ਹੋਇਆ ਕੋਈ ਕਿਸੇ ਚੀਜ਼ ਦਾ ਨਾਉ ਨਹੀਂ ਸਭ ਫਰਜ਼ੀ ਹੈ ਰੱਖਿਆ ਹੋਇਆ ਹੁੰਦਾ ਧਰਿਆ ਹੋਇਆ ਹੁੰਦਾ ਹੈ ਸਾਡਾ ਆਪਣੇ ਸੋਝਣ ਵਾਸਤੇ ਹੁਣ ਅਸੀਂ ਕੀ ਕਿਵੇਂ ਸਮਝਾਂਗੇ ਕਿਸੇ ਬੱਚੇ ਨੂੰ ਕਹਾਂਗੇ ਆ ਲਿਆ ਭਾਈ ਪਾਣੀ ਸਾਨੂੰ ਚਾਹੀਦਾ ਕੰਮ ਚਲਾਉਣਾ ਉਹ ਅਸੀਂ ਰੱਖੇ ਨੇ ਅਸੀਂ ਕੁਝ ਹੋਰ ਰੱਖ ਲਿਓ ਉਹਨਾਂ ਨੇ ਕੁਝ ਹੋਰ ਰੱਖ ਲਿਓ ਉਹਨਾਂ ਨੇ ਕੁਝ ਹੋਰ ਰੱਖ ਲਿਓ ਉਹਨਾਂ ਨੇ ਕੁਝ ਹੋਰ ਰੱਖ ਲਿਓ ਕੌਣ ਫੈਸਲਾ ਕਰੂਗਾ ਵੀ ਨੌਕੀ ਹੈ ਅਰੋਜ ਹੋ ਰਹੇ ਨਾ ਬਦਲੇ ਹੁੰਦੇ ਨੇ ਆਦਮੀ ਇਹਦੇ। ਕੋਈ ਬਦਲੇ ਕਹਿੰਦੇ ਜਾਂਦੇ ਨੇ ਨੋਂ ਪੱਕੇ। ਜਾਂਦਾ। ਕਿਸੇ ਚੀਜ਼ ਦਾ ਵੀ ਕੋਈ ਨਾਮ ਨਹੀਂ ਹੈ। ਜੀ ਜਾਤ ਰੰਗਾ ਜੀਆਂ ਦੇ ਜਿਹੜੇ ਅਸੀਂ ਨੋਂ ਰੱਖਦੇ ਉਹਦੀ ਯਾਦ ਕਰਕੇ। ਸ਼ਰੀਰ ਕਰਕੇ। ਪਿਆਰਮ ਕਰਕੇ। ਕਾਲੀ ਵਜ। ਉਹ ਕਾਲਿਆ। ਕੋਈ ਕਹਿੰਦੇ ਨੇ ਆੜੇ ਕਾਲਿਆ। ਉਹ ਨੋਂ ਕਾਲਾ ਹੀ ਰਹਿ ਜਾਂਦੇ ਨੇ। ਆਹ ਦੋਰਾ ਆਹ ਕਾਲੇ ਨੋਬੇ ਦਾ ਆਹ ਗਦਾ ਔ ਕੋੜਾ ਆਕਾਰ ਤੇ ਨੋ ਕੋੜਾ ਕਹਾਂਗੇ ਸਾਨੂੰ ਸਮਝ ਆ ਜਾਊਗਾ ਗਦਾ ਕਹਾਂਗੇ ਕੁੱਤਾ ਕਹਾਂਗੇ ਸਮਝ ਆ ਜਾਊਗਾ ਇਹ ਜਾਂਦਾ ਆਤਮਾ ਸਾਰੇ ਸਰੀਰਾਂ ਦੇ ਵਿੱਚ ਹੀ ਜਨਮ ਲੈਂਦੀ ਰਹੇਗੀ ਕਦੇ ਦਾ ਨੋ ਬਦਾ ਸੀ ਕਦੇ ਘੋੜਾ ਸੀ ਕਦੇ ਅਸੀਕ ਕਦੇ ਕੁੱਤਾ ਸੀ ਕਦੇ ਸੱਪ ਸੀ ਕਦੇ ਹਾਥੀ ਸੀ ਕਦੇ ਮਿਰਗ ਮਨੁੱਖ ਸੀ ਫਿਰ ਇਹਦਾ ਨੋ ਵੀ ਬਖਰਾ ਨੋ ਕੀ ਹੋਇਆ ਨੋ ਕਿੱਥੇ ਹਮੇਸ਼ਾ ਹੀ ਰਹੇ ਨੇ ਫਿਰ ਅਸਲੀ ਕਿਹੜਾ ਹੋਇਆ ਜਨਮ ਬਦਲਦਾ ਲੋ ਫਿਰ ਦਾ ਨੋ ਬਦਲ ਜਾਂਦਾ ਆਤਮਾ ਦਾ ਨੋ ਕੀ ਹੈ ਕਿ ਆਤਮਾ ਦਾ है परमात्मा ਹੈ ਪਰਮਾਤਮਾ ਦਾ ਛੱਡੋ ਆਤਮਾ ਦਾ ਹੀ ਨਾਮ ਨਹੀਂ ਕੋਈ ਸੂਦ ਸੋਕ ਮੈਂ ਤੁਸੀਂ ਪਿਛਲੇ ਜਨਮ ਚੋਂ ਕੀ ਸੀ ਉਹਦਾ ਨਾਮ ਕੀ ਸੀ ਹੁਣ ਕਿਉਂ ਹੋ ਗਿਆ ਨਾ ਆਤਮਾ ਦਾ ਨਾਮ ਹੈ ਨਾ ਪਰਮ ਦਾ ਨਾਮ ਹੈ ਨਾ ਉਹਦਾ ਨਾਮ ਪਰਾਤਮੋ ਕਿਸੇ ਚੀਜ਼ ਨੂੰ ਕਹਿੰਦੇ ਆਂ ਸੀ ਪ੍ਰਾਤਮਾ ਸਭ ਨੂੰ ਪ੍ਰਾਤਮਿਕ ਕਹਿੰਦੇ ਇਸ ਵਿੱਚ ਪਾਣੀ ਹੈ ਸਾਰੇ ਪਾਣੀ ਨੂੰ ਪਾਣੀ ਹੋਣਾ ਹੈ ਪ੍ਰਾਤਮਿਕ ਨਹੀਂ ਹੈ ਇਹ ਪਾਣੀ ਕਿਨੇ ਤੋਂ ਹੈ ਹਰੇਕ ਦੇ ਘਰ ਪੰਪ ਹੈ ਜਿੱਥੇ ਮਰਜ਼ੀ ਜਿੰਨੇ ਬੋਲਾ ਦੇ ਉੱਥੇ ਪਾਣੀ ਪਾਣੀ ਕਹਿੰਦੇ ਪਾਣੀ ਖਾਰਾ ਵੀ ਹੋ ਸਕਦਾ ਪਾਣੀ ਮਿੱਠਾ ਵੀ ਹੋ ਸਕਦਾ ਪਾਣੀ ਸਾਬਣ ਵਾਲਾ ਵੀ ਹੋ ਸਕਦਾ ਪਾਣੀ ਨੂਨ ਵਾਲਾ ਵੀ ਹੋ ਸਕਦਾ ਪਾਣੀ ਕਈ ਕਿਸਮ ਦਾ ਹੋ ਸਕਦਾ ਪਾਣੀ ਕਹਿੰਦੇ ਇਵੇਂ आत्मा कहने ਨੇ ਆਤਮਾ ਦਾ ਮਤਲਬ ਇਹ ਨਹੀਂ ਵੀ ਇੱਕ ਚੀਜ਼ ਇੱਕ ਵਿਦਾਂ ਨੇ ਕਣਕ ਲੈ ਕਿ ਨਿਕਲ ਕਹਿੰਦੇ ਕਿ ਕਿੰਨੇ ਦਾਣੇ ਨਿਕਲਦੇ ਕਿ ਕਣਕ ਵੀ ਜੀ ਇੱਕ ਦਾਣਾ ਬੀਜ ਹੈ ਅਸਲ ਚ ਇੱਕ ਦਾਣੇ ਤੋਂ ਹੀ ਸਾਰੇ ਧਣ ਦੀ ਜੇ ਸੁਬੰਦਰ ਨੂੰ ਸਟੱਡੀ ਕਰਨਾ ਹੈ ਕਬੂਦ ਨੂੰ ਸਟੱਡੀ ਕਰਨਾ ਹੈ ਸਾਰੇ ਸੁਬੰਦਰ ਦੀ ਸਟੱਡੀ ਹੋ ਇਸ ਕਰਕੇ ਆਤਮਾ ਦੀ ਸਟੱਡੀ ਵਾਸਤੇ ਅਸੀਂ ਸਮਾਲੈਸਟ ਪਾਰਟ ਆਫ ਆਤਮਾ ਲੈ ਇੱਕ ਸਟੱਡੀ ਆਤਮਾ ਦੀ ਕਰ ਰਹੇ ਸਾਰੀਆਂ ਅੱਖਾਂ ਦੀ ਸਟੱਡੀ ਤਾਂ ਕੋਈ ਕਰਦਾ ਨਹੀਂ ਸਟੱਡੀ ਤਾਂ ਕਿਸੇ ਇੱਕ ਦੀ ਹੋ ਗਈ ਸਭ ਦੀ ਹੋ ਗਈ ਉਹੋ ਜੇ ਸਾਰੀਆਂ ਕਰਨਾ आत्मा सतो छोटा पीस ले ले पीस छोटा तो छोटा छोटा तो छोटा पी सिक्का है ना हर एक, एक कर, आ एक है जिस पे हम बैठे हो ये आइटमों दी जुड़ बड़ी हुई है आइटम बखरे बकरे ने सारे ते बखरे बकरे कीते जा सकदे भावे हुण जुड़े हुए ने पर अंदर बकरे बकरे ने बस एवही सचखंड ਵਿੱਚ ਆਤਮਾ एवੇ ਨਿਜਵੇਂ ਐਟਮ ਨੇ ਸਾਰੇ ਜੁੜੇ ਹੋਏ ਵੀ ਨੇ ਵੱਖਰੇ ਵੱਖਰੇ ਵੀ ਨੇ ਹਾਂ ਉਹ ਜਪਾਂ ਚਿੱਤੇ ਦੇ ਵੱਖਰੇ ਵੱਖਰੇ ਨਿਕਲਦੇ ਜਪਾਂਦੂ ਰੋ ਬਖਰੇ ਬਖਰੇ ਕੀਤੇ ਸੀ ਕਿੰਨੀ ਤਬahi ਬਚਾਤੀ ਦੀ ਆਹਾਂ ਜਿਵੇਂ ਇਹ ਧਰਤੀ ਦੇ ਐਟਮ ਇੰਨੇ ਨੇ ਕਿ ਕਿੜੇ ਨਹੀਂ ਜਾ ਸਕਦੇ ਇਹ ਸੱਚ ਖਣਦੇ ਗਿਰਤੀ ਨਹੀਂ ਹੋ ਸਕਦੀ ਇੱਥੇ ਡਿਲੀਵਰੀ ਹੋ ਸਕਦੀ ਗਿਰਤੀ ਸੱਚ ਹੋਰ ਦਾ ਛਟੋ ਇੱਥੇ ਕਿੰਨੀ ਆਤਮਾ ਇੱਥੇ ਨਹੀਂ ਗਿਰਦੀ ਆਤਮਾ ਜਿਵੇਂ ਕੱਲਾ ਐਟਮ ਹੈ ਫਿਰ ਤੁਹਾਡੇ ਹੱਥ ਕੁਝ ਨਹੀਂ ਰਹਿਣਾ ਜਾ ਸਕਦਾ ਐਟਮ ਤਾਂ ਕਟਿਆ ਜਾ ਸਕਦਾ ਬੇਟਾ ਪਰ ਜਿਹੜੀ ਆਤਮਾ ਇਹ ਨਹੀਂ ਕੱਟੀ ਜਾ ਸਕਦਾ ਕਿਤਨੀ ਕਟਿਆ ਜਾ ਸਕਦਾ कट्या ਨਹੀਂ ਜਾ ਸਕਦਾ ਸਾਇਬ ਹੰਗਦਾ ਹੈ ਪਰ ਕੋਈ ਨਹੀਂ ਕਟ ਸਕਦਾ ਅਖੰਡ ਹੈ ਇਹ ਗੱਲ ਅਸਲ ਦੇ अखंड। ਆਦ अखंड ਨਹੀਂ ਆਈ ਉਹ ਦਸ ਮਚਾਈ ਹੈ ਅਖੰਡ जा ਗੁਣ ਅਖੰਡ ਖੰਡ ਖੰਡ ਨਾ ਅਖੰਡ ਲਿਖਿਆ ਐ ਆਤਮਾ ਕਟੀ ਆਪਣੇ ਆਪ ਮਨ ਆਰਚੇਤਾ ਡੁੱਬ ਜਾਂਦਾ ਆਪਣਾ ਮਨ ਆਪ ਡੁੱਬ ਜਾਂਦਾ ਕੋਈ ਨਹੀਂ ਕਰ ਸਕਦਾ ਤੇਰੇ ਮਨ ਨੂੰ ਵੜ ਜੇ ਤੂੰ ਨਹੀਂ ਕਰ ਇਸ ਕਰਕੇ ਸੁਆਹ ਪਾਉਂਗੇ ਰੋਲ ਨੂੰ ਆਪਣੇ ਆਪ ਦੋਸਤੋ ਕਰ ਲੈਂਦਾ ਹੈ ਜੀਵ ਕੋਈ ਨਹੀਂ ਕਰ ਸਕਦਾ ਕਿਸੇ ਨੂੰ ਵੀ ਲੋੜਾ ਕਰਨ ਦੇ ਵੇ ਅੰਦਰ ਬੜੂ ਤਾਂ ਹੀ ਹੋਊ ਅੰਦਰ ਬਸੇ ਤਾ ਨੀ ਅੰਦਰ ਅਸੀਂ ਗੱਲਾਂ ਨਾਲ ਉਪਦੇਸ਼ ਨਾਲ ਕਰਦੇ ਹਾਂ ਪਰ ਜਿੰਨਾ ਚਿਰ ਤੂੰ ਉਪਦੇਸ਼ ਨੂੰ ਮੰਨਦਾ ਨਹੀਂ ਹੁੰਦਾ ਬੰਨਣਾ ਤਾਂ ਫੇਰ ਤੇਰੇ ਜੁਬਈ ਅਸੀਂ ਪਾੜ ਦਿਆਂ ਕਿਸੇ ਨੂੰ ਉਪਦੇਸ਼ ਨਾ ਪਾੜ ਦੇ ਗੱਲਾਂ ਕਰਕੇ ਸਮਝਾ ਕੇ ਕੁਛ ਪਰ ਮੰਨਣਾ ਤਾਂ ਤੇਰੇ ਜੇ ਤੈਨ ਮੰਨ ਲਿਆ ਤਾਂ ਪਾੜ ਗਿਆ ਨਹੀਂ ਬਣਿਆ ਇਹਨਾਂ ਦਾ ਅਸਰੇ ਨਹੀਂ ਹੁੰਦਾ ਸੱਤਾ ਦੀ ਗੱਲਾਂ ਦਾ ਉਹ ਵੀ ਤਾਂ ਬੰਦੇ ਹੀ ਨੇ ਇਹਨਾਂ ਤੇ ਨਹੀਂ ਆ ਬੰਦੇ ਨੇ ਉਹਨਾਂ ਨੂੰ ਵੜ ਕੇ ਦੇਖੋ ਇਹ ਕਰਕੇ ਇਹ ਆਪਣੀ ਮਰਜ਼ੀ ਨਾਲੇ ਕਰਦੇ ਆਪਣੀ ਮਰਜ਼ੀ ਨਾਲ ਬੰਨਦਾ ਤੂੰ ਇਹਦੀ ਉਲਟੀ ਸਿੱਖਿਆ ਨੂੰ ਮੰਨੇ ਨਾ ਮੰਨੇ ਇਹਦੀ ਮਰਜ਼ੀ ਸਾਇਬ ਹੰਗੇ ਸਾਇਬ ਨੂੰ ਆਪਣੇ ਹੱਥੋਂ ਗੁੱਸਾ ਕਿਸੇ ਨੇ ਕੋਈ ਗੱਲ ਕਹਿ ਦਿੱਤੀ ਤੇਰੀ ਮਰਜ਼ੀ ਜਦੋਂ ਕਰੇ ਨਾ ਕਰੇ ਉਹਦਾ ਗੁੱਸਾ ਦੱਸੋ ਹੈ ਕਿ ਨਹੀਂ ਤੇਰੀ ਮਰਜ਼ੀ ਹੈ ਹੈ ਜੇ ਕਾਬੂ ਕਰ ਲੈਣਾ ਗੁੱਸੇ ਜੋ ਮਰਜ਼ੀ ਤੈਨੂੰ ਕੋਈ ਦੇਖ ਜਾਵੇ ਇਹ ਤਾਂ ਗੁੱਸਾ ਨਹੀਂ ਕਰਨਾ ਜਦ ਤੈਨੂੰ ਗੁੱਸਾ ਕਰੇ ਬਦਵਾ ਦੂਗਾ ਬਦੂਗਾ ਜਿਆਦਾ ਗੁੱਸਾ ਕਰਨਾ ਤਾਂ ਆਪਣੀ ਮਰਜ਼ੀ ਨਹੀਂ ਜੋ ਮਰਜੀ ਜੋ ਲਾਈ ਜਾ ਉਹ ਕਦੇ ਨਹੀਂ ਗੁੱਸਾ ਕਰਦਾ ਇਹ ਮੋਹ ਲੋਭ ਹੈ ਲੋਭ ਅਸੀਂ ਆਪਣੀ ਮਰਜ਼ੀ ਨਾਲ ਕਰਦੇ ਲੋਭ ਦੇ ਅੱਗੇ ਅਸੀਂ ਬੁੱਢੇ ਟਿਕਦੇ ਨੇ ਇਹ ਕੈ ਸੰਦੇ ਜਿਹੜਾ ਨੇੜੇ ਦਾ ਨਹੀਂ ਕਰਦਾ ਲੋਭ ਇਹ ਕਰੋਧ ਬੁਕਾਰ ਨੇ ਉਹ ਹੈ ਇਹ ਸਿਰਫ ਅਸੀਂ ਆਪਣੀ ਮਰਜ਼ੀ ਨਾਲ ਇਹਨੂੰ ਦੇ ਤਾਂ ਤੁਹਾਨੂੰ ਮੜਾ ਕੋਈ ਨਹੀਂ ਸੰਭਾ। ਆਪਣੇ ਵਰਜੀ ਨਾਲ ਬੰਦੇ ਮਰਦੇ ਫਿਰ ਆਦੀ ਹੋ ਜਾਂਦਾ। ਜੇ ਬੱਚਾ ਖੰਦਾ ਖੰਦਾ ਨੂੰ ਇਹ ਆਦੀ ਹੋ ਜਾਂਦਾ। ਆਦੀ ਹੋਏ ਜਾਂਦੇ ਫਿਰ ਹਟਾਂ ਜਣਾ ਜਾਂਦਾ। ਫਿਰ ਉਹ ਛੱਡ ਲੋ ਖਾ ਜਾਂਦਾ। ਫਿਰ ਉਹ ਕਹਿੰਦਾ ਵੀ ਫਿਰ ਮੂੰਹ ਛੁੱਟਦੀ ਨਹੀਂ। ਪਰ ਜੇ ਛੁੱਟ ਜਾਂਦੀ ਹੈ। ਉਹ ਕਹਿੰਦੇ ਛੁੱਟ ਸਕਦੀ ਨਹੀਂ ਛੁੱਟਣੀ ਔਖੀ ਹੈ ਇਹ ਗੱਲ ਤਾਂ ਗੁਰਬਾਣੀ ਮੰਦੀ ਹੈ ਛੱਡਣੀ ਔਖੀ ਹੈ ਗੱਲ ਤਾਂ ਗੁਰਬਾਣੀ ਮੰਦੀ ਹੈ ਪਰ ਛੁੱਟ ਨਹੀਂ ਸਕਦੀ ਇਹ ਨਹੀਂ ਮੰਦੀ ਕੋਈ ਛੱਡਣ ਵਾਲੇ ਮੌਜੂਦ ਨੇ ਛੱਡਣ ਵਾਲੇ ਨੇ ਛੱਡ ਕੇ ਦਿਖਾਈ ਇਹ ਗੱਲ ਨਹੀਂ ਬਣੀ ਜਾ ਸਕਦੀ ਵੀ ਛੁੱਟਦੀ ਨਹੀਂ ਕਾਰ ਹੈ ਇਹ ਗੱਲ ਮੰਦੀ ਹੈ ਬੜੀ ਗੱਲ ਸੌਖੀ ਨਹੀਂ ਇਹ ਗੱਲ ਬੰਦਦੀ ਹੈ ਪਰ ਗੱਲ ਕਮਾਈ ਨਹੀਂ ਜਾ ਸਕਦੀ ਇਹ ਨਹੀਂ ਬੰਦਦੀ ਇਹ ਗੱਲ ਬੰਦੀ ਹੈ ਪਰ ਕਿਨੂੰ ਗੁਰਮੁਖ ਨਹੀਂ ਜਾ ਸਕਦਾ ਜੇ ਕੋਈ ਕਹੇ ਨਖਤੀ ਹੈ ਕਟਿਓ ਨਹੀਂ ਜਾ ਸਕਦੀ ਇਹ ਨਹੀਂ ਬੰਦਦੀ ਕੋਈ ਸਮਝ ਆ ਗੱਲਾਂ ਆਉਖੀ ਜ਼ਰੂਰ ਹੈ ਇਹ ਗੱਲ ਬੰਦਦੀ ਹੈ पर इम्पॉसिबल ਨਹੀਂ ਇੱਥੇ ਆ ਕੇ ਗੱਲ ਹੈ ਜ਼ਰੂਰ ਹੈ ਪਰ ਵੀ ਵੀ ਕਿੱਡੀ ਹੈ ਵੀ ਕਿ ਡੀਸੀ ਲੱਗਣਾ ਹੋਵੇ ਅ ਸਾਰੇ ਨਹੀਂ ਕਪਾਸ ਕਰ ਸਕਦੇ ਵਿਚਾਰੇ 10% ਪਾਸ ਕਰਦੇ ਨੇ 90% ਵਿਚਾਰੇ ਹੋਗੇ ਰਹਿ ਜਾਂਦੇ ਨੇ ਕੋਸ਼ਿਸ਼ ਕਰਦੇ ਨੇ ਸਾਰੇ ਰਹਿ ਗਏ ਪਾਸ ਕਰਦੇ ਗੁੰਡੇ ਕਿੰਨਾ ਚਿਰ ਮਿਹਨਤ ਕਰਦੇ ਨੇ ਕਿੰਨਾ ਕੁਸ਼ ਕਰਦੇ ਨੇ ਬਟੀ ਜੇ ਵੀ ਐਕਸਪੋਜ਼ਡ ਹੁੰਦੀ ਹੈ ਉਹਦੇ ਖਾਤਰ ਵੱਡਿਓ ਘਾਲਣਾ ਕਰਦੀ ਹੈ ਵਟਾਈ ਕਿਆ ਕਰਨਾ ਪੈਂਦਾ ਕਈਆਂ ਦੇ 100 ਕਰੋੜ ਦੀ ਉਮਰ ਰਗ ਜਾਂਦੀ ਹੈ ਆਈਐਸ ਕਰਦੇ ਕਰਦੇ ਜਦੋਂ ਜਿਗਰੇ ਖਰਾਬ ਹੋ ਗਏ ਉਪਰੋਂ ਬਲੇ ਆਉਂਦਰ ਬਲੇ ਇਹ ਇਧਰ ਵੀ ਜੋਗੀਆਂ ਦੀ ਸਾਰੀ ਉਮਰ ਚਲੀ ਗਈ ਵਾਇਆ ਬੜੀ ਨਰਾਜ਼ ਡੁੱਬਦਾ ਹੋਇ ਦੋ ਲੋਗ ਹੈ ਹਾਂਜੀ ਤੇਰੀ ਗੱਲ ਨਹੀਂ ਕਰਦੇ ਅਸੀਂ ਜੋਗੀ ਦੀ ਕਰਦੇ। ਉਤਾ ਕਰ ਰਹਿੰਦਾ ਹੈ ਜੋਗੀ ਅਦੀ ਕਰਦਾ ਹੈ। ਕੋਈ ਨਿੰਦਾ ਸਤਿਗੁਰੂ ਕੀ। ਚਾਹੇ ਨਾ। ਓਕੇ। ਉਸ ਵੇਲੇ ਚਾਹੇ ਨਾ ਕਹੇ। ਪਰ ਫਿਰ ਬਾਤ ਫਟ-ਫਟ ਕਹੇ ਨਾ ਸਭ ਸੰਸਾਰ। ਹੈ ਨਾ ਉਹਨੇ ਰਹਿਣਾ ਕੂੜ ਨੂੰ ਕਹਿੰਦਾ ਕੂੜ ਦੀ ਕੋਟ ਸਾਬਤ ਹੋ ਜਾਂਦੀ ਹੈ ਕੂੜ ਸੱਚ ਦੀ ਦੰਦਿਆ ਕਰਦਾ ਹੁੰਦਾ ਹੈ ਸਮੇ ਉਸ ਵੇਲੇ ਚਾਹੇ ਕੂੜ ਲੋਕ ਸੱਚ ਸਮਝਦੇ ਹੋਣ ਬਹੁਤੇ ਲੋਕ ਨੂੰ ਫਟਫਟ ਨਾ ਕਹਿਣ ਪਰ ਸਮਾਂ ਆ ਕੇ ਕੂੜ ਦੀ ਜਦ ਫੋਲ ਬਾਹਰ ਆ ਜਾਂਦੀ ਹੈ ਸੱਚ ਸੱਚ ਸਾਬਤ ਹੋ ਜਾਂਦਾ ਉਸ ਵੇਲੇ ਫਿਰ ਸੰਸਾਰ ਬਹੁਤ ਦੇਰ ਤੱਕ ਉਹ ਫਟਫਟ ਫਟਕਦਾ ਰਹਿੰਦਾ ਜੀ ਜੇ ਮੁਗਲਾਂ ਦੀ ਉਹ ਜਿਹੜੀ ਇੱਕ ਔਰਤ ਹੈਗੀ ਰਹਿੰਦੀ ਉਸ ਖਾਨਦਾਨ ਦੀ ਫਰੰਗ ਦੇਵ ਦੇ ਖਾਨਦਾਨ ਦੀ ਕੋਈ ਔਰਤ ਫੈਦ ਨਹੀਂ ਆਜੋ ਨੇ ਉਥੇ ਝਾੜੂ ਦਿੱਤਾ ਪਿਆ ਉਥੇ ਪੌੜੀਆਂ ਧੋਤੀਆਂ ਵਿਚਾਰੀ ਦਰਬਾਰ ਤੋਂ ਦਰਬਾਰ ਕਿਉਂ ਮਨੇ ਵੀ ਸਾਡੇ ਪੁਰੂ ਜਾਨੇ ਚੰਗਾ ਨਹੀਂ ਕੀਤਾ ਚੰਗਾ ਬੜਾ ਇਹ ਦੋ ਹੋਰ ਬਿੱਡੀ ਗੱਲ ਕੀ ਉਹ ਖਾਸ ਖਾਨਦਾਨ ਦੇ ਇੱਕ ਬਹੂ ਹੈ ਦੋ ਉਸ ਖਾਨਦਾਨ ਦੇ ਉਹ ਵੀ ਮਰਦੀ ਆ ਵੀ ਬੁਰਾ ਕੀਤਾ ਇਹਦਾ ਵਲੋਂ ਲੋਕ ਕਹਿੰਦੇ ਹੋਣਗੇ ਬੁਰਾ ਕੀਤਾ ਬਹੁਤ ਪੜਿਆ ਲੱਗਿਆ ਆ ਪੜਿਆ ਵੀ ਹੈ ਕਰੀਵੇਂ ਤੰਗ ਹੋ ਗਏ ਛਾਈ ਠਾਠ ਪਾੜ ਤੇ ਛਾਈ ਰਹਿਣੇ ਰੋਕਦੇ ਪਰ ਤਾਂ ਗੱਲ ਨੇ ਹੋਗੇ ਪੈਸਾ ਉਹਨਾਂ ਕੋਈ ਨਹੀਂ ਕਿਸੇ ਨੇ ਕਿਹਾ ਹੋਵੇ ਤੁਸੀਂ ਦੇ ਮਨ ਚ ਵੀ ਵੀ ਸਭ ਤੋਂ ਮੰਗਿਆ ਸ਼ਾਇਦ ਉਹਦੇ ਨਾਲ ਕੋਈ ਸਿੱਖੇ ਇਹਨੇ ਮਤਲਬ ਪ੍ਰਭਾਵਤ ਹੋ ਗਏ ਸਿੱਖਾਂ ਨੇ ਇਹਨੂੰ ਕਰੋੜਾਂ ਰੁਪਏ ਦੇ ਦੇ ਦੇ ਬੱਸ ਸਿਰਫ ਮਾਫੀ ਮੰਗਣ ਨਾਲ ਇਕ ਤਾਂ ਚੱਕਰ ਵਾਲਾ ਪਤਾ ਹੀ ਨਹੀਂ ਹੁੰਦਾ ਵੀ ਕੌਣ ਨੇ ਕੋਈ ਹੈ ਵੀ ਨਹੀਂ ਹੈ ਬਿਲਕੁਲ ਲੇ ਫਿਰ ਹਰ ਇੱਕ ਦੀ ਹੁੰਦਾ ਦੀ ਉਹਦੇ ਨਾਲ ਜੁੜਿਆ ਜਿਹੜਾ ਸੱਚ ਨੂੰ ਤੂ ਸੱਚ ਨੂੰ ਤੂ ਕਿੱਡੀ ਐਨੀ ਗੱਲ ਕਿੱਡੀ ਹੁੰਦਰਦੀ ਹਾਸਿਲ ਕਰ ਲਈ ਪਰ ਉਹ ਇੱਕ ਛੋਟੀ ਜੀ ਬਿਮਾਰੀ ਸੀ ਗਰੀਬੀ ਤਾਂ ਇੰਨਾ ਦੂਰ ਹੋਇਆ ਦੇਖੋ ਪਰਮੇਸ਼ਰ ਦੀ ਕਲਾ ਉਹਦੀ ਕਲਾ ਪਰਮੇਸ਼ਰ ਦੀ ਹੈ ਰਾਜ ਦੀ ਕੋਈ ਕਲਾ ਨਹੀਂ ਹੈ ਚਾਹ। ਸੱਚ ਦੀ ਕਲਾ। ਕਬੂਲਿਆ ਉਹ ਤਾਂ ਸੱਚ ਨੂੰ। ਅਸੀਂ ਕਹਿੰਦੇ ਅੰਦਰੀਆ ਗੁਰੂ ਤੇਗ ਬਹਾਦਰ ਦੀ ਗੱਲ ਕਰੀਏ ਸੱਚ ਕਬੂਲਿਆ। ਨੇਕ ਨੀਅਤ ਨਾਲ ਸਬੂਲਿਆ। ਨੀਅਤ ਚ ਕੋਈ ਖੋਟ ਨਹੀਂ। ਕਬੂਲਿਆ। ਤੇ ਦਰਗਾਹ ਤੋਂ ਗਾਇ ਨੀ ਬਦਲ ਗਏ ਤੇ ਅਰੇ ਹਾਂ ਸਤਗੁਰ ਵਿੱਚ ਆਪ ਵਰਤਦਾ ਹਰ ਆਪੇ ਰੱਖਣਹਾਰ ਸਤਗੁਰ ਵਿੱਚ ਆਪ ਵਰਤਦਾ ਹਰ ਆਪੇ ਰੱਖਣਹਾਰ ਆਪੇ ਰੱਖਣਹਾਰ ਅਰਥ ਉਹਨਿਕਦਾ ਜਦੋਂ ਮੁਸਲਮਾਨ ਇੱਕ ਦਿਨ ਇਸ ਗੱਲ ਦੀ ਮਾਫੀ ਮੰਗਣ ਜਿਹੜਾ ਕੁਝ ਮੁਸਲਮਾਨ ਸ਼ਾਸਕਾਂ ਨੇ ਸਿੰਮਰ ਰੱਖੀ ਤੇ ਬੰਗਲਾਂ ਨੂੰ ਦੰਗਵਾਲ ਲੈ ਲਵਤੇ ਇਹਨਾਂ ਦੇ ਰੋਸ ਹੈ ਖਤਮ ਹੋ ਗਿਆ ਪਾਰਾ ਦੋਇਆ ਨੇ ਮੁਗਲ ਜਿੰਦੂ ਨੇ ਜਿਹੜੇ ਕਾਰਨ ਤੇ ਕੱਢਦਾ ਬਾਈਦਾਰੀ ਹਾਂ ਜਿਹੜੇ ਕਾਰਨ ਅਸਲੀ ਤੇ ਉਹਨਾਂ ਨੇ ਨਹੀਂ ਮੁਗਲ ਕਿ ਉਹਨਾਂ ਦੇ ਬਤ ਖੋਣ ਹੁਣ ਵੀ ਹੈ ਮੰਗ ਲੈਂਦੇ ਨੇ ਉਹਨਾਂ ਨੂੰ ਪਤਾ ਸਾਡੀ ਧਰਮ ਨਹੀਂ ਰਹਿਣਾ ਖਤਮ ਹੋ ਜਾਣਾ ਜੋ ਬੋਗੇ ਫਿਰ ਖਲੋਗੇ। ਇਹ ਕਰਦੇ ਲੋਕ ਛੱਡ ਜਾਂਦੇ ਜਿｮ। ਬੁਰਦੀ ਮਜਬੂਰੀ ਹੈ। ਇਹਦੇ ਨੂੰ ਨਹੀਂ ਕੋਈ। ਕਿਉਂਕਿ ਇਹਨੇ ਜਹ ਜੁਰਮ ਕੀਤਾ। ਹੋਰ ਇਹ ਹਉਦਾ ਜਿਵੇਂ ਮੰਨਣ ਦਾ ਯਾਰ ਨਹੀਂ ਹੈ ਬਿਲਕੁਲ। ਹਾਂ। ਹੋਰ ਇਹ ਬੁਰਾ। ਅੰਗਰੇਜ਼ਾਂ ਨੇ ਜੋ ਕੋਈ ਡੇਕ ਉੱਠੀ ਤਾਂ ਉਹ ਮਰ ਲੜਦੇ। ਉਸਮਾਨ ਮਰ ਲੜ ਕਦੇ ਨਹੀਂ। ਜੇ ਦੁਨੀਆਂ ਦੇ ਵਿੱਚ ਕੋਈ ਧਰਮ ਸਭ ਤੋਂ ਭੈੜਾ ਹੈ ਜੇ ਦੁਨੀਆਂ ਦੇ ਵਿੱਚ ਕੋਈ ਰਾਖਸ਼ ਹੈ ਤਾਂ ਪੰਡਤ ਕੋਈ ਹੋਰ ਕੋਈ ਰਾਖਸ਼ ਨੂੰ ਸਾਥ ਕਰ ਸਭ ਤੋਂ ਸੱਚ ਦੀ ਮੁਖਾਲਫਤ ਇਹਨੇ ਕੀਤੀ ਹੈ ਇਹਨੇ ਬਾੜ ਪਾੜੀ ਹੋਈ ਹੈ ਬਾਕੀ ਧਰਮ ਵਾਲੇ ਸਭ ਖੋਜੀ ਨੇ ਮੁਸਲਮਾਨ ਨੂੰ ਕਾਣਾ ਕਿਹਾ ਨਾ ਕਿਹਾ ਇਹਨਾਂ ਨੂੰ ਦਲੰਬੀਏ ਨੇ ਹੋ ਕੇ ਕਰਦੇ ਨੇ ਧਰਮਵੀਰ ਨੇ ਹੋ ਕੇ ਵਰਦੇ ਨੇ ਤਰਮਦੇ ਨਾ ਹੋਤੇ ਅਨੇ ਹੋ ਕੇ ਦਲੰਬੀ ਕਰਦੇ ਨਾ ਹੋ ਕੇ ਜੁਗਰ ਨਾ ਹੋ ਕੇ ਹੋ ਕੇ দান ਕਰਨਾ ਹੋ ਕੇ ਜਪ ਕਰਨਾ ਹੋ ਕੇ ਤਰਸਣਾ ਸਭ ਦੇ ਸਪ ਕੋਈ ਭੜ ਕੋਕਟ ਤਰਮ ਕਸ਼ੂ ਫਲ ਨਹੀਂ ਕੁਛ ਵੀ ਤਾਂ ਮੈਂ ਸੰਪਦਾ ਰਹਿ ਗਿਆ ਫਿਰ ਵੀ ਨਹੀਂ ਛੱਡ ਲੋ ਕਹਿੰਦਾ ਬੇਸ਼ੱਕ ਸਭ ਦੁਨੀਆਂ ਤੂਵੇ ਕਹੇ ਕਿ ਮੂਰਤੀ ਮੇਂ ਭਗਵਾਨ ਨਹੀਂ ਪਰ ਆਪ ਮਤ ਮੰਨਨਾ ਇਸ ਬਾਤ ਕੋ ਗੁਰਬਾਣੀ ਘਰੀਏ ਪਾਹਰ ਮੈਂ ਪਰਮੇਸ਼ਰ ਨੂੰ ਕਬੀਰ ਕਹ ਰਿਹਾ ਕੁੱਲੀ ਪਾਲਣੀ ਪਾਨ ਕੋ ਪਾਤੀ ਤੋੜੇ ਜੋ ਕਹਰ ਦਜੀ ਉਹ ਕਹਦੇ ਗੱਲ ਨਹੀਂ ਬੋਲਣੀ ਉਹ ਕਬੀਰ ਮਹਾਨ ਸੰਤ ਹੈ ਬਰਾਬਰੀ ਕੋਈ ਨਹੀਂ ਕਰ ਸਕਦਾ ਹੈ ਹੋਰ ਕੀ ਹੈ ਰਾਮੀ ਪੜਾਣੀ ਤੇ ਹੋਰ ਕੀ ਇਹਦੇ ਚੋਰ ਹਰਾਉਂ ਖੋਰ ਇਹਨਾਂ ਨੂੰ ਨਾਨ ਖੋਚੋਰ ਹਰਾਉਂ ਖੋਰ ਕਹਿੰਦਾ ਮੰਨ ਲੈਣਗੇ ਗੱਲ ਤੇਰੀ ਠੀਕ ਹੈ ਪਰ ਕਰਨੀ ਅਸੀਂ ਕਿਉਂਕਿ ਇਹਨੂੰ ਲੋਕ ਨਹੀਂ ਬੋਲਦੇ ਲੋਕਾਂ ਦੇ ਮਤਲਬ ਦੀ ਗੱਲ ਨਹੀਂ ਉਹ ਕਹਿੰਦੇ ਜਦੋਂ ਉਹ ਖੋਦਾ ਸੀ ਇਹ ਆਪਣੇ ठीक लिख वैसे ही शुरू ले थे थे थे थे थे, पाया रो आर्य ससरा परंतु तुम ऐसे क्यों कर रहे हो भगत तैनू की तकलीफ हुई हो <laughs> हो कर रहे हो तकलीफ तैनू होती <laughs> है नहीं ਬੁਰੀ ਤੋਂ ਨਹੀਂ ਹਟੇ ਲੇਕਨ ਪਬਲਿਕ ਕੇ ਮਤਲਬ ਕਾ ਨਹੀਂ ਕੀ ਕਰੋਗੇ ਇਸ ਕੱਟ ਲੋਗਾ ਜਿਹੜੇ ਝੂਠੇ ਧਰਮ ਨੇ ਨਾ ਉਹਨਾਂ ਨੂੰ ਖੇਲ ਜਿਹੜਾ ਤੁਸੀਂ ਲੋਕਾਂ ਨੂੰ ਬਰਗਲਾਉ ਲਿਓ ਚੰਗੇ ਭਲੇ ਜਿਹਨਾਂ ਦਾ ਰਾਹ ਨਵਾਂ ਬਦਲਦੇ ਜਿਹੜੇ ਬਦਲੇ ਰਹਿਣਗੇ ਜਿਹੜੇ ਚਾਹਦੇ ਨੇ ਤੁਹਾਡੇ ਮਗਰ ਚੱਲਣਾ ਉਹਦਾ ਕੋਈ ਰੌਣਾ ਹੀ ਕੋ ਤਾਂ ਤੁਸੀਂ ਤਾਂ ਵੀ ਤੁਹਾਡੇ ਮਗਰ ਚੱਲਣਗੇ ਪਰ ਜਿਹੜੇ ਵਿਚਾਰੇ ਤੁਹਾਨੂੰ ਠੀਕ ਸਮਝ ਕੇ ਲੱਗ ਜਾਂਦੇ ਨੇ ਬਗੋਂ ਦੋ ਜਾ ਕੇ ਪਛਤਾਉਦੇ ਨੇ ਤੂੰ ਵੀ ਵਰਗੇ ਜਿਵੇਂ ਕੁਰੀਤ ਸੀਗਾ ਉਹ ਤਾਂ ਬੈ ਜਾਣ ਤੇ ਉਹਨਾਂ ਵਾਸਤੇ ਨਹੀਂ ਤੁਹਾਡੇ ਵਾਸਤੇ ਨਹੀਂ ਤੁਹਾਡੇ ਖਿਲਾਫ ਹੈ ਤੁਹਾਡੇ ਪਿੱਛੇ ਤੁਹਾਡੀਆਂ ਸਵਾਰੀਆਂ ਘਟ ਜਾਣਗੀਆਂ ਤੁਹਾਡੀ ਗੱਡੀ 'ਚ ਬੈਠੇ ਰਹਿਣ ਉਹਨਾਂ ਦੀਆਂ ਸਵਾਰੀਆਂ ਘਟਣ ਬਸ ਸਵਾਰੀਆਂ ਸੌ ਚਲਦੀ ਹੈ ਸਵਾਰੀਆਂ ਦੋ ਬਸਾਂ ਗਿਆ ਰਹਿ ਜਾਣ ਉਹਦੇ ਅੰਦਰ ਅੜਚਾਲੀ ਫਿਰ ਦੇਨੇ ਭੁੱਖੇ ਮਰ ਜਾਣਗੇ ਤਨੂ ਜੁਰੂਰ ਹੈ ਤਾਂ ਬਿਲਕੁਲ ਦੱਸਣੀ ਆ ਯਾਰ ਕਹਿੰਦਾ ਲੋਕ ਕੌਨਸੇ ਇਸ ਬਾਤ ਕੋ ਮੰਨ ਦੇਗੇ ਤੇ ਤੁਹਾਾਰੇ ਵਾਲੇ ਕੋ ਵੀ ਨਹੀਂ ਮੰਨਦੇ ਲੋਕ ਤਾਂ ਬਾਤ ਝੂਠੇ ਤਰ ਮਨੂਰੀ ਤੁਹਾਡੇ ਤਰ ਨੂੰ ਸਾਰੇ ਲੋਕ ਮੰਨਦੇ ਨਹੀਂ ਜਦ ਲਈ ਲੋਕਾਂ ਨੇ ਮੰਨਣਾ ਹੀ ਨਹੀਂ ਸੱਚ ਝੂਠੇ ਦੀ ਗੱਲ ਸੱਚਾ ਦੀ ਗੱਲ ਤਾਂ ਗੱਲ ਦੇ ਵੇਚਣ ਦੀ ਕੀ ਲੋੜ ਐ ਭਾਈ ਬੰਦੇ ਤਾਂ ਫੇਰ ਵੀ ਨਹੀਂ ਤੁਸੀਂ ਕਿਉਂ ਬਰਾਦੀ ਬਣਦੇ ਹੋ ਸੱਚ ਵਿੱਚੋਂ ਝੂਠ ਕਿਉਂ ਵੇਚਦੇ ਹੋ ਆਪਣੇ ਆਪ ਦੇ ਤਾਂ ਮੈਂ ਕਹ ਰਿਹਾ ਮਤਲਬ ਕਾ ਹੈ ਨਹੀਂ ਤੂੰ ਸੱਤੋ ਮੇਰੇ ਮਤਲਬ ਕੋ ਤਾਂ ਹੈ ਤੇਰੇ ਵਰਗਿਆਂ ਨੂੰ ਸਹੀ ਚਲੋ ਤੇਰੇ ਵਰਗਿਆਂ ਦੇ ਮਤਲਬ ਲੈ ਜਾਓ ਫਰਕ ਕਿਵੇਂ ਕਹੇ ਮੇਰੇ ਮਤਲਬ ਦਾ ਆਂ ਅੰਦਰੋਂ ਦੁਖੀ ਨੇ ਇਹ ਜੋ ਨਿੰਦਾ ਕਰੇ ਪੂਰੇ ਸਤਗੁਰੂ ਕੀ ਦਿੱਦਾ ਤਾਂ ਕਰ ਨਹੀਂ ਸਕਿਆ ਪਰ ਬਾਹਰ ਜਾ ਕੇ ਨਿੰਦਾ ਕਰਦਾ ਹੁੰਦਾ ਬਾਤ ਹੈ ਹੇਰੋ ਨੇ ਉੱਥੇ ਪ੍ਰੈਸ਼ਰ ਪਾਇਆ ਜਾ ਕੇ ਤਾਂ ਫਿਰ ਉਹ ਜਿਹੜੇ ਲੈਖ ਸੀ ਉਹ ਬੰਦ ਕਰਵਾਇਆ। ਦੇਖ ਹੁੰਦੇ ਸੀ ਉਹਨਾਂ ਦੇ ਵਿੱਚ ਗੁਰੂ ਨਾਨਕ ਪ੍ਰਕਾਰ ਗੁਰੂ ਨਾਨਕ ਆਹ ਉਹਨੇ ਪ੍ਰੈਸਰਪਾ ਹੈ ਲਾ ਕੇ ਆ ਰਿਹਾ ਸਤ ਬਣਾਤੇ ਉਹ ਤੋਂ ਕਿਉਂ ਨਾ ਜਿਹੜੇ ਸੀਗਾ ਅ ਆਪਣਾ ਤਰਵਾੜੇ ਤਰਵਾੜੇ ਹੋਣੀ ਉਹਦਾ ਇਹ ਸਾਰੇ ਵਿਦਵਾਨ ਜਿੰਨੇ ਨੇ ਸਭ ਖਾਣ ਵਾਲੇ ਨੇ ਉਹਨਾਂ ਕਹਿੰਦਾ ਸਾਡਾ ਖਾਣਾ ਮਰਜੀ ਬਦਵਾਨਾਂ ਨੇ ਕਿਹਾ ਵਿੱਚ ਆਪ ਵਰਤਦਾ ਹਰ ਆਪੇ ਰੱਖਣ ਹਾਰ ਸਤਗੁਰ ਵਿੱਚ ਆਪ ਨਾਮ ਵਰਤਦਾ ਸਤਗੁਰ ਵਿੱਚ ਆਪ ਵਰਤਦਾ ਮਤਲਬ ਨਾਮ ਵਰਤਦਾ ਸੰਤ ਜਨਾਂ ਕੇ ਮਨ ਵਿਸ਼ਰਾਮ ਸੰਤ ਜਨਾਂ ਦਾ ਜਿਹੜਾ ਮਨ ਜਿਹੜਾ ਟਿਕਿਆ ਹੋਇਆ ਹੈ ਉਹਦੀ وجہ ਨਾਲ ਨਾਮ ਦੀ وجہ ਆਪ ਦੇ ਮਨ ਵਿੱਚ ਆਪ ਵਰਤਦਾ ਆ ਵਸਿਆ ਹੋਇਆ ਉਹਦੇ ਵਿੱਚ ਗਿਆਨ ਵਸਿਆ ਹੈ ਸ਼ਬਦ ਉੱਤੇ ਪਰਲੋਟਾ ਸੋਚੀ ਪ੍ਰਗਟ ਹੋ ਤੇ ਆਪ ਵਰਤਦਾ ਹਰ ਆਪੇ ਰੱਖਣ ਹਾਰ ਧੰਨ ਧੰਨ ਗੁਰੂ ਗੋਣ ਗਾਵ ਦਾ ਤਿਸ ਨੂੰ ਸਦਾ ਸਦਾ ਨਮਸਕਾਰ ਤਦ ਤਨ ਗੁਰੂ ਗੁਣ ਗਾਵ ਦਾ ਧੰਨ ਧੰਨ ਉਹ ਹੈ ਜਿਹੜਾ ਗੁਰੂ ਵਾਲੇ ਗੁਰੂ ਦਾ ਗੁਰੂ ਪੂਰੀ ਰੋਸ਼ਨੀ ਕਰਨ ਵਾਲੇ ਗੁਰੂ ਉਹ ਗੁਰੂ ਇਹਨਾਂ ਨੂੰ ਵਿਚਾਰੇ ਤੇ ਪੂਰੀ ਰੋਸ਼ਨੀ ਹੁੰਦੀ ਹੈ ਗੁਰੂ ਗੋੜ ਹੁੰਦੇ ਦੇਸ ਨੂੰ ਸਦਾ ਸਦਾ ਗੁਰੂ ਨਹੀਂ ਹੈ ਉਹ ਕੇ ਬੇ ਗੱਲ ਲਾਓਗੇ ਤੁੰਤਨੂ ਗੁਰੂ ਤੁਮਰੀ ਉਸਤ ਤੁਮਤੇ ਹੋਏ ਦੁਆ ਕੇ ਕੇ ਮੈਂ ਗੱਲਾਂਗਾ ਇਹ ਤੁੰਤੀ ਸਮਝ ਲੱਗੀ ਗੱਲ ਦੀ ਤੁਮਰੀ ਉਸਤ ਤੁਮਤੇ ਹੋਏ ਗੁਰੂ ਗੁਣ ਗਾਉਂਦਾ ਜੇ ਕੋਈ ਆਦਮੀ ਗੁਣ ਗਾਉਂਦਾ ਉਹ ਆਪ ਨਹੀਂ ਗਾਉਂਦਾ ਫਿਰ ਬੁਲਾਇਆ ਬੋਲ ਉਹ ਤਨ ਦਾ ਨਾ ਹੈ ਬੰਦਾ ਵੀ ਜਿਹੜਾ ਗੁਰੂ ਦੇ ਗੁਣ ਗਾਇਨ ਕਰਦਾ ਹੈ ਜਿਹੜਾ ਉਹਦੇ ਗੁਣ ਗਾਇਨ ਕਰਦਾ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਚਾਲੂ ਕਰਦਾ ਹੈ ਸਾਰੀਆਂ ਵਤਾਂ ਨੂੰ ਜਾਣਣਾ ਦਿੰਦਾ ਸਦਾ ਸਦਾ ਲੋਕ ਦਾ ਗਿਆਨ ਹੈ ਤੈਨੂੰ ਲੋਕ ਦਾ ਚਾਲਣਾ ਜਿਹਦੇ ਵਿੱਚ ਜਿਹੜਾ ਤੈਨੂੰ ਲੋਕ ਤ੍ਰੈ ਕਾਲ ਦਰਸੀ ਹੈ ਇਹ ਤ੍ਰੈ ਤ੍ਰੈ ਕਾਲ ਦਰਸ਼ੀ ਉਹਨੂੰ ਕਹਿੰਦੇ ਨੇ ਜਿਹੜੇ ਦੁਪਰ ਤ੍ਰੇਤਾ ਤੇ ਕਲਯੁਗ ਤੇਨੇ ਕਾਲ ਲੈਣੋ ਤੇਨੇ ਲੋਕ ਨੇ ਇਹਨਾਂ ਨੂੰ ਸਮਝਦਾ ਹੋਵੇ ਜਾਂਦਾ ਤੇ ਤੇ ਕਿਹ ਲੋ ਤੋਂ ਦੀ ਜੀ ਦੁਪਰ ਕੀ ਹੁੰਦੀ ਹੈ ਕਲਯੁਗ ਕੀ ਹੈ ਇਤਿਹਾਸ